250 ਮੈਂ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ 11:11 ਵਜੇ 14 ਫਰਵਰੀ ਦੇ ਦਿਨ ਹੈ ਬਰਾ 2017 ਦਾ ਮੰਗਲਵਾਰ 3 ਫੱਗਣ ਨਾਨਕ ਸ਼ਹਿ ਸਮਤ 548 ਨਿਗਾਹ ਹਾਰ ਦੇਖ ਸਕਦੇ ਹਾਂ ਅੱਜ ਵੀ ਲੋਕ ਸਭਾ ਦੇ ਵਿੱਚ ਅਮਕਸਾਵਾ ਗੱਲਾਂ ਬਾਤਾਂ ਜੀ ਸੰਗੀਤ ਸੁਰਖ ਦੇ ਮਸਲੇ ਤੇ ਗੱਲਬਾਤ ਹੋਣੀ ਹੈ ਜੀ ਪਹਿਲੇ ਹਿੱਸੇ ਦੇ ਵਿੱਚ ਤੁਹਾਡੇ ਸੰਗ ਖਬਰਾਂ ਕਰਨੀ ਹੈ ਤੁਸੀਂ ਨਾਲ ਸ਼ਾਮਲ ਹੋਇਆ ਕਰੋ ਦੂਸਰੇ ਹਿੱਸੇ ਦੇ ਵਿੱਚ 12 ਤੋਂ ਇੱਕ ਖੁੱਲੀ ਵਿਚਾਰ ਚਰਚਾ 1 ਤੋਂ 2 ਵਜੇ ਤੱਕ ਵੈਲੈਂਟਾਈਨਡੇ ਤੇ ਅੱਜ ਹੋਏਗੀ ਬਹੁਤ ਵੱਡੀ ਇੰਡਸਟਰੀ ਦੇ ਆਲੇ-ਦਾਲੇ ਬਹੁਤ ਕੁਝ ਚੱਲਦਾ ਹੈ ਪਦਾਰਥ ਅਰ ਇਸ ਯੁੱਗ ਦੇ ਵਿੱਚ ਕਾਰਡਾਂ ਦੇ ਨਾਲ ਫੁੱਲਾਂ ਦੇ ਨਾਲ ਚੌਕਲੇਟ ਦੇ ਨਾਲ ਰਾਤ ਦੇ ਖਾਣਿਆਂ ਦੇ ਨਾਲ ਸ਼ੈਂਪਨ ਨਾਲ ਤੇ ਮਹਿੰਗੀਆਂ ਸੁਗਾਤਾਂ ਦੇ ਨਾਲ ਪਿਆਰ ਨੂੰ ਮਿਲਿਆ ਜਾਂਦਾ ਹੈ ਜਿਸ ਦੇ ਬਾਰੇ ਇਹ ਗੱਲਬਾਤ ਕਰਾਂਗਾ ਵੀ ਸ਼ਾਮਲ ਹੋਣਾ ਇੱਥੇ 843 ਤੋਂ ਸੁਪਰੀ ਕੇਆਰਪੀਆਡੀਓ.com ਤੇ ਸਿੱਧਾ ਪ੍ਰਸਾਰਣ ਸੁਣਦੇ ਤੇ ਐਪ ਡਾਊਨਲੋਡ ਕਰ ਸਕਦੇ ਹੋ ਖਬਰਨਾਮਾ ਜਿੱਥੇ ਤੁਹਾਡੀ ਇਹ ਲੋਕ ਸੱਤ ਨੂੰ ਦੇ ਥਲੇ ਪ੍ਰੋਗਰਾਮ ਫੇਰ ਸੇਵ ਹੋਣ ਲੱਗਣਗੇ ਅਗਲੇ ਮਹੀਨੇ ਤੋਂ ਤੇ ਇੱਥੇ ਵੀ ਤੁਸੀਂ ਸੁਣ ਸਕਦੇ ਹੋ ਹਰਜੀਤ ਸਿੰਘ ਗਿੱਲ ਦੇ ਨਾਮ ਦੇ ਨਾਲ ਇਹ ਖਬਰਨਾਮੇ ਤੇ ਤੁਸੀਂ ਪ੍ਰੋਗਰਾਮ ਕੱਲ ਦਾ ਸੁਣ ਸਕਦੇ ਖਾਸ ਤੌਰ ਤੇ ਕਹਾਣੀ ਨੂੰ ਅਲੱਗ ਕਰਕੇ ਮੁੰਡੇ ਇਸ ਚੈਨਲ ਤੇ ਪਾਉਂਦੇ ਨੇ ਸੁਣ ਲਿਆ ਕਰੋ ਅਲਦ ਵਾਲੇ ਰੇਡੀਓ ਤੇ ਵਧੀਆ ਗੱਲ ਹੁੰਦੀ ਹੈ ਜਿਸ ਦਾ ਸਾਧਾਨੇ ਵਾਲੀ ਪ੍ਰੋਗਰਾਮ ਹੈ ਬਠਿੰਡੇੋਂ ਬਖਤਾਵਰ ਸਿੰਘ ਸਿੱਧੂ ਆਉਣੀ ਬਹੁਤ ਕਿੱਲ ਠੋਕਦੇ 11 12 ਮਿੰਟ ਇਹਤ ਬਾਤ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਉਸ ਖਿੱਤੇ ਦੇ ਵਿੱਚੋਂ ਉਹਨਾਂ ਨੇ ਗੱਲਾਂ ਕੀਤੀਆਂ ਉਹਦੇ ਬਾਰੇ ਵੀ ਤੁਹਾਡੇ ਨਾਲ ਮੈਂ ਗੱਲਬਾਤ ਕਰਾਂਗਾ ਕਿ ਕਿੱਥੋਂ ਜ਼ਿੰਦਗੀ 1957 ਤੋਂ ਕਿੱਥੇ ਤੱਕ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਕੀ ਅਖੀਰ ਦੇ ਵਿੱਚ ਆ ਕੇ ਕੀ ਗੱਲਾਂ ਹੋਈਆਂ 18442471550 on air ਨੰਬਰ ਹੈ ਨਿਮੀ ਨਮੀ ਡੌਲਾ ਜੀ ਦਾ ਇਹ ਈਮੇਲ ਹੈ ਹਰਜੀਤ ਸਿੰਘਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਤੇ ਨਾਲ ਨਾਲ harjeet.g@krpiaradio.com ਫੇਸਬੁੱਕ ਵਾਲਿਆਂ ਦੇ ਬਾਰੇ ਨਿਆਰੇ ਜਦ ਫਟੇ ਬੁਲਾਈਦੀ ਹੈ ਬਾਈ ਜੱਗੀ ਇਹ ਹੁੰਨ ਲੱਗਦਾ ਨਾਲ ਹੀ ਬੈਠੇ ਹੈ ਇਹ ਜੋ ਚੰਨ ਦੀ ਚਾਨਣੀ ਹੈ ਜੋ ਦੀ ਲੋ ਹੈ ਪੜੀਏ ਤਾਂ ਤੇਰਾ ਖਤ ਹੈ ਸੁਣੀਏ ਤੇਰੀ ਸੋਹ ਹੈ ਤੂੰ ਜੋ ਉਮਰ ਪਰ ਜਗਾਏ ਤੇ ਦਰੀ ਘਰੀ ਟਕਾਏ ਅੱਜ ਚਿਹਰੇ ਤੇਰੇ ਚਿਹਰੇ ਉੱਤੇ ਅੱਜ ਵੀ ਉਹਨਾਂ ਦੀਵਿਆਂ ਦੀ ਲੋ ਹੈ ਤੇਰੇ ਲਫ਼ਜ਼ ਨੇ ਲਹੂ ਵਿੱਚ ਤੇਰੇ ਰਾਗ ਹੈ ਰਗਾਂ ਵਿੱਚ ਐ ਗਜ਼ਲ ਵਸੇ ਤੋਂ ਕੀ ਲਕੋ ਹੈ ਇਹ ਜੋ ਬਾਤ ਤੂੰ ਕਹੀ ਹੈ ਸੱਜਰੀ ਹਵਾ ਜਹੀ ਹੈ ਇਹ ਬਹਾਰ ਦਾ ਸਨੇਹਾ ਤੇ ਸਵੇਰਿਆਂ ਦੀ ਸੋ ਹੈ ਸੀ ਉਹਨੇ ਇੱਕ ਵਕਤ ਸੂਰਜ ਉਹ ਜੋ ਹੋਇਆ ਅਸਤ ਸੂਰਜ ਇਹ ਦੇਖ ਕੇ ਉਸ ਦੇ ਜਾਇਆਂ 'ਚ ਉਸ ਦੀ ਲੋ ਹੈ ਇਹ ਚੰਨ ਦੀ ਚਾਨਣੀ ਵੀ ਧੁੱਪ ਦਾ ਹੀ ਤਰਜਮਾ ਹੈ ਤੇ ਧੁੱਪ ਵੀ ਔੜ ਕਾਂ ਨੂੰ ਕਿਸੇ ਬੜ ਰਹੇ ਦੀ ਲੋ ਹੈ ਨਫ਼ਰਤ ਦੇ ਤੀਰ ਚੱਲਦੇ ਮੈਨੂੰ ਸੱਲ ਦੇ ਮੇਰੀ ਆਤਮਾ ਦੁਆਲੇ ਤੇਰੇ ਪਿਆਰ ਦੀ ਸੰਜੋ ਹੈ ਜੋ ਜਾਣਦੇ ਨੇ ਉਸ ਨੂੰ ਉਹ ਜਾਣਦੇ ਨੇ ਜੋ ਜਾਣਦੇ ਨਾ ਉਸ ਨੂੰ ਖਾਕ ਜਾਣਦੇ ਨੇ ਜੋ ਜਾਣਦੇ ਉਹਨਾਂ ਲਈ ਉਦਾਰਿਆਂ ਦੀ ਲੋ ਹੈ ਸਾਗਰ ਦੇ ਵਿੱਚ ਉਤਰ ਕੇ ਸਭ ਰੰਗ ਜਲ ਚ ਕੇ ਖੁਦ ਨੂੰ ਨਮਾਨਿਆ ਕਰਕੇ ਵੀ ਬੁਝ ਜਾਣ ਵਿੱਚ ਹੀ ਲੋ ਹੈ ਇਹ ਚੰਨ ਦੀ ਚੰਨਣੀ ਹੈ ਜੋ ਤਾਰਿਆਂ ਦੀ ਲੋ ਹੈ ਪੜੀਏ ਤਾਂ ਤੇਰਾ ਖਤ ਹੈ ਸੁਣੀਏ ਤੇਰੀ ਸੋਹ ਹੈ ਸਰਜੀਤ ਪਾਤਰ ਸਾਹਿਬ ਬਹੁਤ ਵਧੀਆ ਲਿਖਦੇ ਨੇ ਜਿੱਤੇ ਵੀ ਤੁਸੀਂ ਬੈਠੇ ਹੋ ਸਾਰਿਆਂ ਦਾ ਧੰਨਵਾਦ ਹੈ ਕੈਲੀਫੋਰਨੀਆ ਤੋਂ ਖਬਰਾਂ ਜਿਹੜੀਆਂ ਆ ਰਹੀਆਂ ਡੈਮ ਦੇ ਬਾਰੇ ਔਰ ਵੈਲ ਦੇ ਵਿੱਚ ਹਲੇ ਵੀ ਪਾਣੀ ਆ ਜਿਹੜਾ ਐਮਰਜੈਂਸੀ ਸਪਿਲ ਵੇ ਤੋਂ ਛੱਡਿਆ ਜਾ ਰਿਹਾ ਹੈ ਕੱਲ ਤੋਂ ਮੀਂਹ ਬਹੁਤ ਸ਼ੁਰੂ ਹੋਣਾ ਤੁਹਾਡੇ ਇੱਥੇ ਵੀ ਮੀਂਹ ਦੀ ਵਾਰਨਿੰਗ ਦਿੱਤੀ ਹੋਈ ਹੈ ਕਿ ਕੱਲ ਨੂੰ ਬਹੁਤ ਜ਼ਿਆਦਾ ਮੀਂਹ ਪੈਣਾ ਉਧਰੋਂ ਤਾਂ برف ਪਈ ਹੈ ਸਨੋ ਉਹ ਖੁਰ ਜਾਣੀਆਂ ਖਿਆਲ ਰੱਖਿਓ ਕਾਰਨਰਾਂ ਤੇ ਇੰਟਰਸੈਕਸ਼ਨ ਦੇ ਨਾਲ ਪਾਣੀ ਜਿਹੜਾ ਬਹੁਤ ਖੜਾ ਹੁੰਦਾ ਪਰ ਫੇਰ ਵੀ ਬਹੁਤ ਵਧੀਆ ਸਿਸਟਮ ਹੈ ਸਟਾਰਮ ਸਿਸਟਮ ਹੈ ਮੀਂਹ ਦਾ ਪਾਣੀ ਜਿਹੜਾ ਉਹਦੇ ਵਿੱਚ ਜਾ ਵਰਦਾ ਬਹੁਤ ਵਧੀਆ ਪਲਾਨਿੰਗ ਹੈ ਨਹੀਂ ਤਾਂ ਜਿੰਨਾ ਇੱਥੇ ਪੈਂਦਾ ਔਖਾ ਪਾਣੀ ਖੜਨ ਲੱਗ ਜਾ ਗੱਲ ਕੈਲੀਫੋਰਨੀਆ ਦੇ ਇਸ ਮੁਸ਼ਕਲ ਦੇ ਸਮੇਂ ਦੇ ਵਿੱਚ ਆਈ ਕਿ ਗੁਰੂ ਘਰ ਜਿਹੜੇ ਸਾਰੇ ਕੈਲੀਫੋਰਨੀਆ ਦੇ ਉਲੇ ਬੰਨੇ ਦੇ ਨਾਰਥਰਨ ਪਾਰਟ ਦੇ ਖੁੱਲੇ ਨੇ ਤੇ ਲੋਕ ਉੱਥੇ ਜਾ ਕੇ ਪ੍ਰਸ਼ਾਦੇ ਸ਼ਕਰਨ ਰਹੇ ਕੌਮ ਨੇ ਖਾਸ ਤੌਰ ਤੇ ਵੱਡੇ ਜਿਹੜੇ ਸਾਡੇ ਤੇ ਬਹੁਤ ਤੇਜ਼ੀ ਦੇ ਨਾਲ ਲੋਕਾਂ ਨੂੰ ਇਹ ਖਬਰ ਮਿਲੀ ਤੇ ਲੋਕਾਂ ਨੇ ਅੱਜ ਸ੍ਰੀ ਨਰਿੰਦਰ ਸਿੰਘ ਗਿਆਤ ਉਹਨਾਂ ਨੇ ਲਿਖ ਕੇ ਪਾਇਆ ਕਿ ਕੋਈ ਦਿਨ ਸਨ ਅਸੀਂ ਰੋਜੀ ਰੋਟੀ ਦੀ ਭਾਲ ਦੇ ਵਿੱਚ ਇੱਕ ਡੰਗ ਦੀ ਰੋਟੀ ਵੀ ਨਾ ਹੁੰਦੀ ਜਿਹੜੇ ਮੁੰਡੇ ਟਪ ਕੇ ਆਏ ਰਿਫਿਊਜੀ ਆਏ ਕਿਹੜੇ ਹਾਲਾਤਾਂ ਚਾਏ ਕਿਸ ਤਰ੍ਹਾਂ ਚੌਲ ਤੇ ਭੁੰਨੇ ਹੋਏ ਚੌਲ ਖਾ ਖੁਕੇ ਵਿਚਾਰੇ ਔਖੇ ਸਮੇਂ 'ਚ ਅੱਜ ਗੁਰੂ ਦੇ ਉਹਨਾਂ ਲੰਗਰਾਂ ਦੇ ਵਿੱਚੋਂ ਸੇਵਾਵਾਂ ਦੇ ਰਹੇ ਜਿਸ ਮਨੁੱਖਤਾ ਆ ਕੇ ਪ੍ਰਸ਼ਾਦੇ ਸ਼ਕਰੇ ਦੁਨੀਆ ਕੋ ਮੈ ਆਇਓ ਮਰਜੀ ਧਰਮ ਦਾ ਜਿਹੜੇ ਮਰਜੀ ਧਰਮ ਨੂੰ ਪੜ ਲਿਓ ਪਰ ਢਿੱਡ ਦੀ ਭੁੱਖ ਤੇ ਆਤਮਾ ਦੀ ਭੁੱਖ ਇੱਕੋ ਜਗ੍ਹਾ ਤੇ ਮਿਲਦੀ ਹੈ ਉਸ ਸਿੱਖ ਕੌਮ ਦੇ ਗੁਰਦੁਆਰੇ ਨੇ ਵਪਾਰਕ ਸੰਦੇਸ਼ 11:23 ਹੋਇਆ ਜੀ ਦੇ ਵਿੱਚ ਇੱਕ ਸੋਗਮਈ ਸੂਚਨਾ ਮੈਂ ਦੇਣੀ ਚਾਹੁੰਦਾ ਕਿਉਂਕਿ ਫਿਊਨਲ ਹੈ ਜੀ ਇਹ ਕਾਮਰੇਡ ਸਰਦਾਰ ਤਾਰਾ ਸਿੰਘ ਪਿਛਲਾ ਪਿੰਡ RAMDASPUR ਜ਼ਿਲ੍ਹਾ ਹੁਸ਼ਿਆਰਪੁਰ ਏਰੀਆ ਗੜਦੀ ਵਾਲਾ ਉਹਨਾਂ ਦਾ ਅੱਜ ਸੰਸਕਾਰ ਹੈ ਪਿਛਲੇ ਦਿਨ ਸੁਰਗਵਾਸ ਹੋ ਗਿਆ ਅੱਜ ਸੰਸਕਾਰ ਹੈ ਉਹਦਾ ਫਾਈਵ ਰਿਵਰ ਡੈਲਟਾ ਦੇ ਵਿੱਚ 1 ਵਜੇ ਤੇ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਕੰਗ 778 846 2040 ਰਣਵੀਰ ਸਿੰਘ ਕੰਗ 604 418 252 ਕਮਲ ਕੰਗ ਔਰ ਰਾਜ ਕੰਗ 604 818 15 38 ਇਹ ਨੰਬਰ ਨੇ ਤੇ ਕਾਮਰੇਡ ਸਾਰਾ ਸਿੰਘ ਜੀ ਸਵਰਗਵਾਸ ਹੋ ਗਏ ਤੇ ਅੱਜ ਸਸ਼ਕਾਰ ਹੈ ਵਜੇ ਅ ਫਾਈਬਰ ਰਿਵਰ ਜਿਹੜਾ ਫਿਊਨਰ ਹਾਲ ਆਸਾ ਦਾ ਡੈਲਟਾ 14 ਸੰਗ ਪਰਿਵਾਰ ਹੁਣ ਮੈਨੂੰ ਦਚਿੱਤੀ ਚ ਮੈਂ ਇੱਕ ਕੰਗ ਪਰਿਵਾਰ ਆਪਣੇ ਬਹੁਤ ਸਨੇਹੀ ਨੇ ਗੁਰਦਾਸ ਸਿੰਘ ਔਣੀ ਪਰ ਉਹ ਇਹ ਹੋਰ ਪਰਿਵਾਰ ਲੱਗਦਾ ਹੈ। ਅ ਨਾਮ ਜਿਹੜੇ ਨੇ ਉਹ ਉਹਨਾਂ ਦੇ ਬੇਟਿਆਂ ਸ਼ਮਸ਼ੇਸ਼ ਕੰਗ 778 846 2040 ਰਣਵੀਰ ਸਿੰਘ ਕੰਗ 604 418 252 ਤੇ ਅੱਜ ਸੰਸਕਾਰ ਹੈ ਜੀ 1 ਵਜੇ। 11:25 ਹੋਏ ਆ ਜੀ। ਖਬਰਾਂ ਜਿਹੜੀਆਂ ਵਾਸ਼ਿੰਗਟਨ ਦੀਆਂ ਜਸਟ ਕੰਟਰੂਡ ਹੋਈ ਕੱਲ ਵਧੀਆ ਗੱਲਬਾਤ ਹੋਈ ਏ ਔਰਤਾਂ ਦੀ ਰੌਂਡ ਟੇਬਲ ਮੀਟਿੰਗ ਵੀ ਇਕ ਹੋਈ ਪਰ ਇੱਕ ਵੱਡੀ ਜਿਹੜੀ ਖਬਰ ਇਹ ਹੈ ਕਿ ਨੈਸ਼ਨਲ ਸਕਿਉਰਿਟੀ ਸਕਿਉਰਿਟੀ ਐਡਵਾਈਜ਼ਰ ਲੈਫਟੀਨੈਂਟ ਜਨਰਲ ਫਲਨ ਨੇ ਰਿਜ਼ਾਈਨ ਕੀਤਾ ਦੇਖੋ ਇਹ ਜਿਹੜੇ ਅ ਰਸ਼ੀਆ ਦੇ ਨਾਲ ਨਰਮ ਹੋਣ ਦੀਆਂ ਗੱਲਾਂ ਜਿਹੜੀਆਂ ਬਾਹਰ ਚੱਲ ਰਹੀਆਂ ਨੇ ਉਹ ਸੱਚੀਆਂ ਨੇ ਜਨੋ ਫਲਨ ਤੇ ਮਾਈਕਲ ਫਲਨ ਜੇਰਾ ਉਹਦੇ ਤੇ ਇਹ ਦੋਸ਼ ਲੱਗੇ ਨੈਸ਼ਨ ਆਫ ਜਸਟਿਸ ਨੇ ਵਾਈਟ ਹਾਊਸ ਨੂੰ ਦੱਸਿਆ ਕਿ ਤੁਹਾਡਾ ਬੰਦਾ ਏ ਗੱਲਾਂ ਬਾਤਾਂ ਕਰਨ ਲੱਗਾ ਜਿਹੜਾ ਐਮਬੈਸਡਰ ਆ ਰਸ਼ੀਆ ਦਾ ਪਰ ਇਹਦੇ ਵਿੱਚ ਇਸ ਗੱਲ ਦੀ ट्रांजिशन ਦੇ ਸਮੇਂ ਉਹ ਦਿਨਾਂ ਦੇ ਬਜਾ ਸੋਚਕਾਈ ਜਾ ਰਹੀ ਸੀ ਬਰਾਕ ਓਬਾਮਾ ਨੇ ਆਖਰੀ ਦਿਨਾਂ ਦੇ ਵਿੱਚ ਬੰਦਸ਼ਾਂ ਲਾਈਆਂ ਰੂਸ਼ੀਆ ਤੇ ਕਿਉਂਕਿ ਡੈਮੋਕ੍ਰੇਟਸ ਨੇ ਸਰਵਰ ਨੂੰ ਹੈਕ ਕੀਤੇ ਇਹ ਗੱਲ ਬਹੁਤ ਰੌਲਾ ਪਿਆ ਕਿ ਰਿਪਬਲਿਕਨ ਦੀ ਮਦਦ ਕੀਤੀ ਬੁਲਾਦਮੀਰ ਪੋਪਨ ਦੀ ਮਸ਼ੀਨਰੀ ਨੇ ਜਾਨ ਵੇਲੇ ਬਰਾਕ ਓਬਾਮਾ ਨੇ ਬੰਦਸ਼ਾਂ ਲਾਈਆਂ ਉਹ ਦਿਨਾਂ ਦੇ ਵਿੱਚ ਜਿਆਦਾ ਹੁਣ ट्रांजिशन ਹੋ ਰਹੀ ਸੀ ਟੀਮ ਚੁਣੀ ਜਾ ਰਹੀ ਸੀ ਅ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਮਾਈਕਲ ਫਲੈਨ ਗੱਲਬਾਤ ਕਰ ਰਿਹਾ ਸੀ ਅੰਬੈਸਡਰ ਜਿਹੜਾ ਹੈ ਰਸ਼ੀਆ ਦਾ ਇਸਤੇ ਡਿਪਾਰਟਮੈਂਟ ਆਫ ਡਿਪਾਰਟਮੈਂਟ ਆਫ ਜਸਟਸ ਨੇ ਜਿਹੜਾ ਵਾਈਟ ਹਾਊਸ ਨੂੰ ਦੱਸਿਆ ਬਿਨਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਨੂੰ ਭਰੋਸੇ ਚ ਲਾਏ ਬਿਨਾ ਇਸ ਤਰ੍ਹਾਂ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਗੱਲ ਨਹੀਂ ਕਰ ਸਕਦਾ ਨੈਸ਼ਨਲ ਸਕਿਉਰਿਟੀ ਤੇ ਹਰ ਰੋਜ਼ ਅੱਧੇ ਘੰਟੇ ਦੀ ਬਰੀਫਿੰਗ ਸਭ ਤੋਂ ਪਹਿਲਾਂ 10:30 ਵਜੇ ਹੁੰਦੀ ਹੈ ਵੈਸਟ ਬਲਾਕ ਦੇ ਵਿੱਚ ਦਫ਼ਤਰ ਨੈਸ਼ਨਲ ਸਕਿਉਰਿਟੀ ਦਾ ਕਾਫੀ ਵੱਡੀ ਨੈਸ਼ਨਲ ਸਕਿਉਰਿਟੀ ਕੌਂਸਲ ਤੇ ਵੀ ਐਡਵਾਈਜ਼ਰ ਬਹਿੰਦਾ ਇਸ ਗੱਲ ਦੀ ਜਸਟਿਸ ਡਿਪਾਰਟਮੈਂਟ ਨੇ 트ੰਪ ਐਡਮਿਨਿਸਟ੍ਰੇਸ਼ਨ ਨੂੰ ਹਫ਼ਤੇ ਪਹਿਲਾਂ ਇਹ ਗੱਲ ਦੱਸੀ ਸੀ ਕਿ ਇਹ ਗੱਲ ਠੀਕ ਨਹੀਂ ਹੋ ਰਹੀ ਜ਼ਿਆਦਾ ਗੱਲਾਂਬੱਤਾਂ ਹੋ ਰਹੀਆਂ ਨੇ ਤੇ ਜਦ ਇਹਦੇ ਤੇ ਮਾਈਕ ਪੈਂਸ ਨੇ ਗੁੱਸਾ ਪ੍ਰਗਟ ਕੀਤਾ ਕਿ ਸਾਨੂੰ ਕਿਵੇਂ ਨਹੀਂ ਪਤਾ ਸਾਡੇ ਤੋਂ ਬਿਨਾਂ ਹੀ ਇਹ ਗੱਲ ਕਿਵੇਂ ਹੋ ਰਹੀ ਹੈ ਇਹ ਇਹਨਾਂ ਪੇਪਰ ਦੇ ਵਿੱਚ ਵਾਸ਼ਿੰਗਟਨ ਟਾਈਮਸ ਦੇ ਵਿੱਚ ਵਾਸ਼ਿੰਗਟਨ ਪੋਸਟ ਦੇ ਵਿੱਚ ਇਹ ਗੱਲ ਛਪੀ ਕਿਤੋਂ ਨਾ ਕਿਤੋਂ ਉਹਨਾਂ ਦੇ ਸੋਰਸਸ ਸੀ ਵਾਈਟ ਹਾਊਸ ਨੂੰ ਜਸਟਿਸ ਡਿਪਾਰਟਮੈਂਟ ਦੇ ਲਿਖਣ ਤੇ ਵਾਸ਼ਿੰਗਟਨ ਪੋਸਟ ਤੇ ਵੀ ਇਹ ਗੱਲ ਜਿਹੜੀ ਬਾਹਰ ਨਿਕਲੀ ਤੇ ਹੁਣ ਬਾਈ ਮੈਂ 24 ਮਿੰਟ ਦੇ ਨਹੀਂ ਇੱਕ ਐਡੀ ਵੱਡੀ ਪੋਸਟ ਤੋਂ ਜਿਹੜਾ ਹੱਥ ਧੋਣੇ ਪੈਗੇ ਤੇ ਮੈਨੂੰ ਲੱਗਦਾ ਏ ਥੋੜਾ ਜਿਹਾ ਖਲਾਰ ਹੈ ਉੱਥੇ ਹੁਣ ਰਿਟਾਇਰਡ ਲੈਫਟੇਨੈਂਟ ਜਨਰਲ ਕੀਪ ਜਗ੍ਹਾ ਜਿਹੜੀ ਹੈ ਉਹ ਵਕਤੀ ਤੌਰ ਤੇ ਸਾਂਭਣਗੇ ਫਿਰ ਦੇਖਦੇ ਹਾਂ ਕਹਿੰਦੇ ਦਾਵੇਦਾਰ ਵੀ ਨੇ ਇਲੈਕਸ਼ਨ ਦੇ ਵਿੱਚ ਹੈਕਿੰਗ ਤੇ ਸੈਂਕਸ਼ਨ ਦੇ ਸਮੇਂ ਜਾਂ ਉਦੋਂ ਸੈਂਕਸ਼ਨ ਰਹੀਆਂ ਸੀ ਤੇ ਉਹ ਦਿਨਾਂ 'ਚ ਗੱਲ ਕਰਨੀ ਮਿਸਟਰ ਫਲੈਂਦੀ ਉਹ ਇਹ ਗੱਲ ਦਰ ਰਹੀ ਹੈ ਕਿ ਵਿਧਾਨਾ ਫਿਕਰ ਨਾ ਕਰੋ ਇਹਨੂੰ ਕਰ ਲੈਣ ਤੋਂ ਬਾਅਦ ਮਾਨੂੰ ਜਿਹੜਾ ਕੁਝ ਕਰਦਾ ਇਹ ਫਿਰ ਅਸੀਂ ਕਰਾਂਗੇ ਇਹ ਗੱਲ ਜਿਹੜੀ ਹੈ ਉਹ ਬਾਹਰ ਨਿਕਲੀ ਹੈ ਏਡੀ ਜਿਹੜੀ ਗੱਲਬਾਤ ਇਹ ਚੰਗੀ ਦੀ ਗੱਲ ਹੋਵੇਗੀ ਦੂਸਰੇ ਪਾਸੇ ਜਿਹੜਾ ਬੈਨ ਲਾਇਆ ਉਹ ਬੈਨ کورٹ ਦੇ ਵਿੱਚ ਅਪੀਲ ਹੋ ਗਈ ਉਹ ਵੀ ਜਿਹੜਾ ਜ਼ੋਰ ਦੇ ਨਾਲ ਕੱਚੇ ਪੈਰੀ ਹੱਥ ਪਾਈ ਚੀਜ਼ ਸੀ ਉਹ ਬਿਨਾਂ ਕਿਸੇ ਕਦੇ ਕਾਨੂੰਨ ਦੇ ੱਤੇ ਨਾਲ ਐਗਜ਼ੀਕਟਿਵ ਸਾਈਨ ਕੀਤੇ ਉਹਦੀ ਪਿਛਟ ਭੂਮੀ ਨਾਲ ਵੇਖੀ ਗਈ ਵੀ ਸਾਨੂੰ ਅੜਚਣੇ ਪੈ ਸਕਦੀ ਹੈ ਜੇ ਪੱਕੇ ਤੌਰ ਤੇ ਨੈਬਿਆ ਹੁੰਦਾ ਕੰਮ ਤੇ ਬੈਨ ਹੋਣ ਨੂੰ ਲੱਗਿਆ ਸੱਚੇ ਪਹਿਲੀ ਤੇਜ਼ੀ ਨਾਲ ਕੀਤੀਆਂ ਗੱਲਾਂ ਕਾਨੂੰਨ ਦੇ ਵਾਲੇ ਪਾਸਿਓਂ ਜਿਹੜੇ ਆਮ ਐਮਨੈਸਟੀ ਵਾਲੇ ਲੋਕ ਮਨੁੱਖੀ ਹੱਕਾਂ ਦੇ ਲੋਕੋ ਅੱਗੇ ਆ ਗਏ ਏਅਰਪੋਰਟ ਤੇ ਫ੍ਰੀ ਪਿਕਸ ਜਿਹੜੀਆਂ ਫ੍ਰੀ ਬੈਂਚ ਜਿਹੜੇ ਨੇ ਔਲਾਦस्ते ਲੋਕ ਬਹਿਣ ਲੱਗੇ ਜੱਜ ਆਪਣੇ ਵਕੀਲ ਆ ਕੇ ਵੀ ਆਓ ਤੁਹਾਨੂੰ ਫ੍ਰੀ ਇਨਫੋਰਮੇਸ਼ਨ ਦਈਏ ਮਦਦ ਕਰੀਏ ਇਹ ਵੀ ਗੱਲ ਹੋਈ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਸੀ ਜਿਹੜੇ ਆ ਰਹੇ ਸੀ ਰਿਫਿਊਜੀ ਸੀ ਵਿਜ਼ਿਟ ਵਾਲੇ ਸੀ ਉਹ ਸਾਰੇ ਰੋਕ ਤੇ ਹੁਣ ਧੜਾ ਧੜਾ ਲੋਕ ਆ ਰਹੇ ਹਨ ਜੋ ਕਿ ਸੁਪਰੀਮ ਕੋਰਟ ਦੀ ਅਪੀਲ ਖਾਸਾ ਕੰਮ ਆਏ ਇੰਨਾ ਛੇਤੀ ਕੀਤੇ ਹੋਣਾ ਕਾਨੂੰਨ ਦੇ ਕੀਤੀ ਹੁੰਦੀ ਤਾਂ ਪਹਿਲਾਂ ਕਾਨੂੰਨ ਨੂੰ ਹੱਕ ਚ ਲੈ ਕੇ ਕੁਝ ਜਿਹਾ ਕਰਕੇ ਕੋਈ ਚੀਜ਼ ਹੁੰਦੀ ਹੁਣ ਤਿੰਨ ਸੈਨ ਫਰਾਂਸਿਸਕੋ ਦੇ ਵਿੱਚ ਸਰਕਾਰ ਨੂੰ ਨਾ ਤੁਹਾਡੀ ਗੱਲ ਇਹ ਗਲਤ ਹੈ ਜੱਜਾਂ ਨੂੰ ਖੋਲਣ ਦੀ ਗੱਲ ਹੈ ਜਿਹੜੀ ਉਹ ਗਲਤ ਹੈ ਸਾਰੇ ਪਾਸਿਓਂ ਜਦ ਤੁਸੀਂ ਖੋਲ ਕੇ ਬੈਦਨ ਦਰਵਾਜੇ ਫਿਰ ਆਲੇ-ਦਾਲਿਓਂ ਬੰਦੇ ਆਵੜਦੇ ਅੰਦਰ ਠੀਕ ਹੈ ਵੋਟਰ ਜਿਨ੍ਹਾਂ ਨੂੰ ਕਹਿ ਕੇ ਵੋਟਾਂ ਲਈਆਂ ਉਹਨਾਂ ਨੂੰ ਖੁਸ਼ ਰੱਖਣਾ ਉਹਨਾਂ ਦੀਆਂ ਕੀਤੇ ਵਾਦੇ ਪੂਰੇ ਕਰਨੇ ਵਧੀਆ ਰਾਜਨੀਤਿਕ ਚਾਹੇ ਚੰਗੇ ਹੋਣ ਚਾਹੇ ਮਾੜੇ ਹੋਣ ਜਿਹੜੀ ਗੱਲ ਕਹਿਤੀ ਉਹ ਕਰਨੀ ਹੈ ਜਿਹੜੀ ਉਹ ਗੁੱਡ ਅਜਿਹੇ ਬੈਨ ਸੱਤੇ ਦੇਸ਼ਾਂ 'ਚ ਲੱਗੇ ਸੀ ਲੋਕ ਹੁਣ ਆ ਜਾਣਾ ਉਹਨਾਂ ਨੇ ਆਗੇ ਰਾਦਰ ਜਦ ਤੱਕ ਸੁਪਰੀਮ ਕੋਰਟ ਸੁਣਵਾਈ ਹੋਣੀ ਅਪੀਲ ਹੋਣੀ ਜਦ ਤੱਕ ਸਭ ਨੇ ਹੁਣ ਤਾਂ ਤੇਜ਼ੀ ਹੋ ਰਹੀ ਹੈ ਜਿਹਨੇ اٹਕ ਕੇ ਆਉਣਾ ਸੀ ਉਹ ਕਹਿੰਦਾ ਟਰੈਕਟਰ ਲਾਓ ਤੇ ਚੱਲੀਏ। ਦੋ ਚੀਜ਼ਾਂ ਐ ਪੁੱਠੀਆਂ ਜਿਹੜੀਆਂ ਪਈਆਂ ਤੇ ਬੰਦਾ ਇੱਕ ਨੈਸ਼ਨਲ ਸਿਕਿਉਰਿਟੀ ਵੱਡੀ ਜਗ੍ਹਾ ਤੇ ਉਹਦਾ ਇੰਨੇ ਤਿੰਨ ਹਫ਼ਤਿਆਂ ਚਾਰ ਹਫ਼ਤਿਆਂ ਤੋਂ ਜਾਣਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਮੀ ਐ ਕਿਤਨਾ ਕਿਤ। ਉਹ ਲੈਫਟਨੈਂਟ ਜਨਰਲ ਫਲਨ ਨੇ ਕੋਡ ਰੈਜ਼ੀਗਨੇਸ਼ਨ ਦਿੱਤਾ ਤੇ ਗੱਲ ਨੂੰ ਮੰਨੇ ਤੇ ਫਨ ਲੱਗਿਆ ਦੂਜੇ ਪਾਸੇ ਅਮਰੀਕਾ ਵਾਲੇ ਪਾਸੇ ਜਿਹੜੇ ਰਿਫਿਊਜੀ ਸੀ ਲੋਕ ਇਧਰ ਨੂੰ ਫਾਰਗੋ ਦੇ ਕੋਲੋਂ ਆ ਸੜਕ ਜਿਹੜੀ ਨਾਰਥ ਕੋਟਾ ਦੇ ਵਿੱਚ ਕੱਟਦੀ ਹੈ ਤੇ ਸਿੱਧੀ ਐਮਰਸਨ ਦੇ ਬਾਰਡਰ ਤੇ ਲੋਕ ਜਿਹੜਾ ਨੇ ਤੇ ਕਿਊਬੈਕ ਵਾਲੇ ਤਾਨੂੰ ਪਤਾ ਜਿਹੜੇ ਜਾਂਦੇ ਨੇ ਕਲੀਵਲੈਂਡ ਉਹ ਆਇਓ ਵਗੈਰਾ ਲੋਡ ਮਾਂਟਰੀਅਲ ਤੋਂ ਚੱਕਣ ਜਿਹੜਾ ਆ ਪਰਲੇ ਪਾਸੇ ਬਾਰਡਰ ਟੱਪਦੇ ਜਿੱਥੇ ਛੋਟੀਆਂ ਤੇ ਜ਼ਖਮੀ ਹੋਏ ਹੋ ਗਈ ਉਂਗਲਾਂ ਦੜ ਗਈਆਂ ਐਮਰਸਨ ਵਾਲੇ ਪਾਸੇ 425 ਜਣੇ ਜਨਵਰੀ ਜਨਵਰੀ ਦੇ ਵਿੱਚ ਹੀ ਆ ਬੜੇ ਕੈਨੇਡਾ ਵਾਲੇ ਪਾਸੇ ਹੁਣ ਇੱਥੇ ਕਿਹੜਾ ਭੂਆ ਦੇ ਮੰਝੇ ਪਛਾਇਆ ਭਤੀਜੇ ਆ ਕੇ ਸੁੱਤੇ ਰਹਿਣ ਇਹ ਸਰਕਾਰ ਆ ਜਿਹੜੀ ਇਹ ਜਮਈ ਕੋ ਗੜਕ ਨਹੀਂ ਬਣਿਆ ਵੀ ਆਜੋ ਇੱਧਰ ਨੂੰ ਜਿਹੜਾ ਮਰਜੀ ਇਹਨਾਂ ਨੂੰ ਵੀ ਕੁਝ ਚਾਹੀਦਾ ਵੀ ਕੌਣ ਆ ਰਿਹਾ ਕਿ ਇਹਨੂੰ ਰੋਕਿਆ ਜਾਵੇ ਕੀਤਾ ਬਾਰਡਰ ਟੱਪ ਪਉਂਦੇ ਸੀ ਪੈਟਰੋਲਿੰਗ ਨਾ ਉੱਥੇ ਬਾਰਡਰ ਦੀ ਜਗ੍ਹਾ ਸਿਰਫ ਗੁਰਦਿਆਂ ਲਾਈਆਂ ਵੀ ਅਮਰੀਕਾ ਤੇ ਇੱਧਰੋਂ ਉੱਧਰੋਂ ਟੱਪ ਜਾਂਦੇ ਉਹ ਤੇ ਗਾਂ ਚਾਹ ਦੀ ਦੁਕਾਨ ਹੈ ਤੇ ਪੀ ਕੇ ਕਹਿੰਦੇ ਚਲੋ ਜੀ ਹੁਣ ਮੈਨੀਟੋਬਾ ਗਾਂ ਵਿਨੀ ਤੇ ਸੁਸਾਇਟੀਆਂ ਨੇ ਬਥੇਰੀਆਂ ਜਿਨ੍ਹਾਂ ਨੂੰ ਫੰਡਿੰਗ ਦਾ ਤੋਂ ਇਹਨਾ ਕਰਕੇ ਗੱਲਾਂ ਗੁੱਲਾਂ ਜਿਹੜੀਆਂ ਹੁੰਦੀਆਂ ਤੇ ਉਹਦੇ ਥੱਲੇ ਫਿਰ ਚਿਹਤੇ ਆ ਹੋ ਜਾਂਦੇ ਆ ਬਹੁਤ ਰਾਹ ਨੇ ਇੱਥੇ ਵੀ ਸਰਕਾਰਾਂ ਤੋਂ ਪੈਸਾ ਤੇ ਲੈਣ ਦੇ ਕਿਉਂਕਿ ਜਦ ਤੁਸੀਂ ਅਰਗੇਨਾਈਜੇਸ਼ਨ ਅਸੀਂ ਸੈੱਟ ਕਰੀ ਤੇ ਉਹਦੇ ਵਿੱਚ ਫੰਡਿੰਗ ਆ ਗਈ ਫਿਰ ਤਾਂ ਤੁਹਾਡਾ ਹੀ ਖਾੜਜ ਖੇਤਰ ਹੈ ਇਹ ਨਹਿਾਰੇ ਨੂੰ ਕੌਣ ਪੁੱਛਦਾ ਨੇ ਦੇ ਉੱਪਰ ਪਤਾ ਨਹੀਂ ਹੁਣ ਸਰਕਾਰ ਕਿਹੜੇ ਪਾਸੇ ਇਹ ਚੱਲ ਰਹੀ ਹੈ ਕਿ ਜਿਹੜਾ ਮਰਜ਼ੀ ਆ ਜਾਏ ਇਹਦੀਆਂ ਰਿਪੋਰਟਸ ਐਮਰਸਨ ਵਾਲਾ ਬਾਰਡਰ ਬਹੁਤ ਟੱਪਿਆ ਲੋਕਾਂ ਨੌਟ ਕੋਟ ਵਾਲੇ ਪਾਸੇ 94 ਤੋਂ ਟੱਪ ਕੇ ਕੋਈ ਰੋਕੇ ਹੈ ਨਹੀਂ ਕੇ ਦਿਖਾਓ ਸਾਊਥ ਵਾਲੇ ਪਾਸੇ ਨੂੰ ਬਖਰ ਚ ਗੋਲੀ ਮਾਰਦੇ ਅਗਲੇ ਇੱਕ ਗੀਤ ਸੁਣੋ ਨਮਾ ਵਰਲਡ ਪ੍ਰੈਸ ਫੋਟੋ ਜਿਹੜੇ ਸਾਲ ਦੇ ਉਹਨਾਂ ਦੇ ਵਿੱਚ ਪਿਕਚਰਸ ਨੇ ਜਿਹੜੀਆਂ ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਅਲੱਗ-ਅਲੱਗ ਕਿਸਮ ਦੀਆਂ ਕੁਦਰਤ ਦੀਆਂ ਕਿਸੇ ਤਰਾਸ ਦੀਆਂ ਫੇਸ ਆਫ ਹੇਟਡ ਜਿਹੜੀ ਹੈ ਨਫ਼ਰਤ ਵਾਲਾ ਜਿਹੜਾ ਫੋਟੋ ਆ ਉਹ ਇੱਕ ਪੁਲਿਸ ਅਫਸਰ ਤੁਰਕੀ ਦਾ ਜਿਸ ਦਾ ਨਾਮ ਮੇਲਤ ਸੀ ਤੇ ਜਿਸ ਆ ਕੇ ਰਸ਼ੀਅਨ ਐਂਬੈਸਡਰ ਨੂੰ ਗੋਲੀ ਮਾਰੀ ਉਹਦੇ ਹੱਥ ਵਿੱਚ ਬਲੌਕ ਦਾ ਪਿਸਤਲ ਹੈ ਤੇ ਉਹਨੇ ਬਾ ਚੱਕੀ ਹੋਈ ਹੈ ਇੱਕ ਉਂਗਲ ਸਿੱਧੀ ਕੀਤੀ ਹੋਈ ਹੈ ਤੇ ਉਸਨੇ ਬਹੁਤ ਗੁੱਸੇ ਦੇ ਨਾਲ ਗੋਲੀ ਮਾਰ ਕੇ ਡਿਗਿਆ ਹੈ ਬੰਦਾ ਥੱਲੇ ਤੋਂ ਦੇ ਉੱਪਰ ਖੜਾ ਹੱਥ ਚ ਹੱਥ ਦੇ ਵਿੱਚ ਉਹਨੇ ਜਿਹੜਾ ਪਿਸਤਲ ਫੜਿਆ ਉਸ ਨੂੰ ਸਭ ਤੋਂ ਜਿਹੜੀ ਨਸਰਤ ਵਾਲੀ ਉਸ ਦਾ ਇਨਾਮ ਮਿਲਿਆ ਇਸ ਤੋਂ ਅਗਲਾ ਕੁਦਰਤ ਨਾਲ ਛੇੜਛਾੜ ਵਾਲੇ ਸਬੰਧ ਦੇ ਵਿੱਚ ਲੋਕਾਂ ਦਾ ਜਿਹੜਾ ਵਿਦਰੋਹ ਕੁਇਆ ਸਟੈਂਡਿੰਗ ਰੌਕ ਨਾਟ ਡਕੋਟਾ ਦੇ ਵਿੱਚ ਡਕੋਟਾ ਐਕਸੈਸ ਪਾਈਪਲਾਈਨ ਦੇ ਵਿੱਚ ਉੱਥੇ ਇੱਕ ਪ੍ਰੋਸ਼ੰਕਾਰੀ 10 ਮਹੀਨੇ ਬੈਠ ਰਿਹਾ ਜਿਹਦੇ ਤੇ ਮਿਰਚਾਂ ਵਾਲੀ ਸਪਰੇ ਆ ਜਿਹੜੀ ਉਹ ਪੁਲਿਸ ਨੇ ਕਰਤੀ ਉਹਦਾ ਮੂੰਹ ਧੋ ਰਹੇ ਨੇ ਇਹ ਪਿਕਚਰ ਜਿਹੜੀ ਹੈ ਜਨਰਲ ਨਿਊਜ਼ ਦਾ ਪਹਿਲਾ ਜਿਹੜਾ ਪ੍ਰਾਈਜ਼ ਹੈ ਮਨੀਲਾ ਪੁਲਿਸ ਸਟੇਸ਼ਨ ਦੇ ਵਿੱਚ ਫਿਲੀਪੀਨਜ਼ ਦੇ ਵਿੱਚ ਨਿਊਯਾਰਕ ਟਾਈਮਜ਼ ਦੀ ਇੱਕ ਫੋਟੋ ਹੈ ਜਿਸ ਦੇ ਵਿੱਚ ਨੇ ਉਹਨਾਂ ਦੇ ਨੇ ਜਿਹੜੇ ਉਹ ਸ਼ਾਂਟਣੇ ਪ੍ਰੈਜ਼ੈਂਟ ਰੋਡਰੀਗੋ ਨੇ ਸਬੰਧੀ ਬਹੁਤ ਉਦਾਸੇ ਚਿਹਰੇ ਨੇ ਸੜੀਆਂ ਦੇ ਵਿੱਚ ਬਾਹਾਂ ਕੱਢੀਆਂ ਮੁੰਡਿਆਂ ਨੇ ਝਾਕਦੇ ਆ ਵੀ ਕੀ ਦੀ ਕੀ ਦੀ ਵਾਰੀ ਹੈ ਸਪੌਟ ਨਿਊਜ਼ ਤੀਜਾ ਪ੍ਰਾਈਜ਼ ਜਿਹੜਾ ਹੈ ਸਕਾਟਿਸ਼ ਇੱਕ ਫੋਟੋਗ੍ਰਾਫਰ ਬਿਲਕਾਕ ਬਿਲਕਾਕ ਉਸਨੇ ਲਿਬੀਅਨ ਫਿਸ਼ਰਮੈਨ ਜਿਹੜੇ ਐ ਮਛੇਰਿਆਂ ਦੀ ਇੱਕ ਕਿਸ਼ਤੀ ਐ ਤੇ ਨਾਲ ਹਵਾ ਭਰੀ ਹੋਈ ਟਿਊਬ ਦੇ ਉੱਪਰ ਟਟੋ ਘਟ 100 ਬੰਦਾ ਬੈਠਾ ਜਿਹੜੇ ਹਮਦ ਸਾਗਰ ਦੇ ਅਫਰੀਕਨ ਲੋਕ ਨੇ ਉਹਨਾਂ ਵੱਲ ਉਹ ਲਾਈਫ ਜੈਕਟਸ ਨੇ ਜੜੀਆਂ ਜ਼ਿੰਦਗੀ ਬਚਾਉਣ ਵਾਲੀਆਂ ਜੈਕਟਾਂ ਜਿਹੜੀਆਂ ਲਾਲ ਪਾ ਕੇ ਉਹਨਾਂ ਨੂੰ ਸੈਟ ਰਹੇ ਇੱਕ ਸੈਟ ਰਹੇ ਨੇ ਤੇ 7 ਬਾਹਾਂ ਬਾਹਰ ਨੂੰ 8 ਬਾਹਾਂ ਬਾਹਰ ਨੂੰ ਨਿਕਲੀਆਂ ਹੋਈਆਂ ਇਹ ਪਿਛੇ ਸਮੁੰਦਰ ਹੈ ਸ਼ਲਾ ਮੈਂ ਬਦਲ ਨੇ ਇਸ ਤੋਂ ਅਗਲਾ ਡੇਲੀ ਲਾਈਫ ਦਾ ਪਹਿਲਾ ਪ੍ਰਾਈਜ਼ ਹੈ ਜਿਹੜਾ ਮੋਨੀਟਾ ਨੂੰ ਮਿਲਿਆ ਹੈ ਫੋਟੋਗ੍ਰਾਫਰ ਹੈ ਜਿਸ ਨੇ ਦੇ ਵਿੱਚ ਚੇਂਜਿੰਗ ਫੇਸ ਆਫ ਕਿਊਬਾ ਨਿਊਯਾਰਕ ਟਾਈਂਡ ਵਿਦ ਸੀਸੀ ਮੋਨੀਟਾ ਨੇ ਕਿਊਬਾ ਨੂੰ ਵਿਜ਼ਿਟ ਕੀਤਾ ਤੇ ਉੱਥੇ ਇੱਕ ਦੀ ਹਜਾਮਤ ਹੋ ਰਹੀ ਹੈ ਸਲੂਨ ਨਹੀਂ ਹੈ ਤੰਦ ਨਾਲ ਸ਼ੀਸ਼ਾ ਦੇ ਵਿੱਚ ਤੁਸੀਂ ਦੇਖਿਆ ਸੜਕਾਂ ਤੇ ਚੀਜ਼ ਖਤਮ ਹੋ ਗਈ ਹੁ ਕਾਲੀ ਨਾਲ ਸ਼ੀਸ਼ਾ ਬੰਨਣ ਦੇ ਕੁਰਸੀ ਹੁੰਦੀ ਸੀ ਬਾ ਉੱਥੇ ਮਨਾਈ ਕਰ ਦਿੰਦੇ ਤੇ ਉਸ ਤਰ੍ਹਾਂ ਫੇਮ ਲੱਗਿਆ ਕਿ ਉੱਚੀ ਕੁਰਸੀ ਤੇ ਗਾਹ ਬਿਠਾਏ ਉਦੋਂ ਤੂੰ ਜਿਹੜਾ ਪਹਿਲਾ ਇਨਾਮ ਫੋਟੋ ਦੇ ਵਿੱਚ ਇੱਕ ਬਹੁਤ ਵੱਡਾ ਸਪੇਨ ਦੀ ਕੇਨਰੀ ਆਈਲੈਂਡ ਦੇ ਵਿੱਚ ਕਛੂ কুমਮਾ ਬਹੁਤ ਵੱਡਾ ਹੈ ਸੀ ਟਰਟਲ ਜਿਹੜਾ ਕਿ ਮਸ਼ੇਰਿਆਂ ਦੇ ਜਿਹੜਾ ਜਾਲ ਸਿੱਟਿਆ ਉਹਦੇ ਵਿੱਚੋਂ ਫਸਿਆ ਹੋਇਆ ਵੇਲ ਜਿਹੜੀਆਂ ਮੱਛੀਆਂ ਬਹੁਤ ਇਸ ਨੈਟ ਦੇ ਵਿੱਚ ਫਸ ਜਾਂਦੀਆਂ ਸਪੋਰਟ ਸੀਰੀ ਦੇ ਵਿੱਚ ਹੈਲੀਫਰਸ ਤੇ ਦਾ ਇੱਕ ਫੋਟੋਗ੍ਰਾਫਰ ਹੈ ਲਿੰਜ਼ੇ ਹਿਲਟ ਉਸਨੇ ਰੱਖ ਵੀ ਦੀ ਇੱਕ ਲੜਕੀਆਂ ਦੀ ਪਿਕਚਰ ਜਿਹੜੀ ਹੈ ਫੋਟੋ ਖਿੱਚੀ ਤੇ ਹੈਰਾਨੀ ਦੀ ਗੱਲ ਹੈ ਕਿ ਇਹ ਜਿਹੜਾ ਫੋਟੋਗ੍ਰਾਫਰ ਹੈ ਨਾ ਉਹਦੇ ਬਾਹਮਾ ਨੇ ਨਾ ਉਹਦੇ ਲੱਤਾਂ ਨੇ ਜਿਹੜਾ ਉਸ ਤੋਂ ਬਿਨਾ ਚੱਪਿਆ ਹੁਣ ਫੋਟੋ ਕਿਵੇਂ ਖਿੱਚਦਾ ਉਹ ਉਸਦੇ ਫੋਟੋ ਜਦ ਖਿੱਚੀ ਜਿਹੜੀ ਰਗਬੀ ਦੀ ਪਲੇਅਰ ਐ ਐਕਚੁਅਲੀ ਲਿੰਜ਼ੀ ਹੇਲਟਨ ਸੌਰੀ ਉਸਨੇ ਉਸਵੀ ਫੋਟੋ ਖਿੱਚੀ ਉਸਨੇ ਇੱਕ ਰਗਬੀ ਦੀ ਪਲੇਅਰ ਦੀ ਲੱਤ ਫੜੀ ਹੋਈ ਹੈ ਦੋ ਬਾਹਾਂ ਦੇ ਨਾਲ ਕੂਣੀਆਂ ਤੋਂ ਥੱਲੇ ਉਹਦੀਆਂ ਬਾਹਾਂ ਨਹੀਂ ਹੈ ਗੋਡਿਆਂ ਤੋਂ ਥੱਲੇ ਲੱਤਾਂ ਫੋਟੋ ਖਿੱਚੀ ਹੋਈ ਹੈ ਉਸਨੇ ਰਗਬੀ ਦੀ ਇੱਕ ਪਲੇਅਰ ਦੀ ਖੁੱਚ ਫੜੀ ਹੋਈ ਹੈ ਦੋਨੇ ਬਾਹਾਂ ਦੇ ਨਾਲ ਜਿਹੜੀਆਂ ਸਿਰਫ ਸਿਰਫ ਕੂਣੀਆਂ ਤੱਕ ਰਹਿਣੀ ਹੋ ਅਗਲੀ ਸਪੋਰਟ ਸਿੰਗਲ ਦਾ ਤੇ ਨਤੀਜਾ ਰਾਇਜ਼ਾ ਉਹ ਮਿਲਿਆ ਹੋਇਆ ਅੰਡਰ ਮੀਟਰ ਦੇ ਸੈਮੀ ਫਾਈਨਲ ਦੇ ਵਿੱਚ ਰੀਓ ਓਲੰਪਿਕਸ ਦੇ ਵਿੱਚ ਯੂਸੇਨ ਬੋਲਟ ਪਿੱਛੇ ਤੇ ਤੇ ਉੱਡਿਆ ਜਾਂਦਾ ਤੇ ਝਾਕ ਰਿਹਾ ਪਿੱਛੇ ਨੂੰ ਉਸ ਦੀ ਯਾਦ ਹੋਣੀ ਤੁਹਾਨੂੰ ਹਾਸੇ ਦੀ ਫੋਟੋ ਇੱਕ ਤੋਂ ਇਸ ਤਰ੍ਹਾਂ ਦੇ ਇਨਾਮ ਪਿਕਚਰਾਂ ਦੇ ਬੈਸ ਤੇ ਹਰ ਸਾਲ ਦੇ ਇਹਦੇ ਵਿੱਚ ਇਸ ਸਾਲ ਦੇ ਜਿਹੜੇ ਇਨਾਮ ਨੇ ਉਹ ਜਿਹੜੀ ਹੇਟਡ ਵਾਲੀ ਹੈ ਉਹ ਹੈਰਾਨੀ ਹੋਗੀ ਅਗਲੀ ਖਬਰ ਦੱਸਾਂ ਨਿਊਜ਼ਪੀਓਕ ਸੌਰੀ ਨੌਰਕੀਆ ਲੀਡਰ ਹੈ ਉਸ ਦਾ ਮਤਰਿਆ ਭਰਾ ਮਾਮਾ ਦੋ ਤੇ ਪਿਓ ਇੱਕ ਕਿਮ ਜੋਂਗ ਨੇ ਉਹ ਨੌਰਕੀਆ ਦੇ ਵਿੱਚੋਂ ਭੱਜਿਆ ਹੋਇਆ ਸੀ ਉਸ ਨੂੰ ਦੇ ਵਿੱਚੋਂ ਸੇ ਜਹਾਜ਼ ਚੜ੍ਹਨਾ ਦੇ ਲਈ ਕਿਰਲਿੰਗ ਦਾ ਬੋਸ ਕੀਨਾ ਸਿੰਗਾਪੁਰ ਮੱਕਾਓ ਦੇ ਖਿਲਾਫ ਸੀ ਉਹਦੇ ਦੋ ਇਸਤਰੀਆਂ ਨੇ ਆ ਕੇ ਸਪਰੇਅ ਕੀਤੀ ਜਦੋਂ ਸ਼ਾਪਿੰਗ ਕਰ ਰਿਹਾ ਸੀ ਹਾਂਗਕਾਂਗ ਆਪਣੇ ਮਲੇਸ਼ੀਆ ਦੇ 에어ਪੋਰਟ ਤੇ ਤੇ ਉਸ ਦੀ ਮੌਤ ਹੋ ਗਈ ਜ਼ਹਿਰ ਦੀ ਸਪਰੇਅ ਉਸ ਕਰ ਗਏ ਜਿਹੜਾ ਜੋਂਗ ਆਪਣਾ ਚਾਚਾ ਜਿਹੜਾ ਪਿਛਲੇ ਦਿਨੀ ਮਾਰਿਆ ਸੀ ਜਿਹੜਾ ਲੀਡਰ ਨੇ ਜੈਂਕਸੋਂਗ ਉਹ ਇਸ ਲੜਕੇ ਦੇ ਬਹੁਤ ਨੇੜੇ ਸੀ ਜਿਹੜਾ ਇਹ ਮਾਰਿਆ ਇਸ ਗੱਲ ਤੋਂ ਇਹਦਾ ਕਿੰਜੋਂਗ ਉਹ ਜਿਹੜਾ ਲੀਡਰ ਆਇਆ ਗੁੱਸੇ ਸੀ ਕਿ ਇਹ ਜਾ ਕੇ ਮੇਰੇ ਦੇਸ਼ ਦੇ ਖਿਲਾਫ ਬੋਲਦਾ ਉਹ ਇਸ ਗੱਲ ਨੂੰ ਕਹਿ ਰਿਹਾ ਸੀ ਕਿ ਠੀਕ ਨਹੀਂ ਹੈ ਮੇਰਾ ਜਿਹੜਾ ਭਾਈ ਹੈ ਉਹ ਠੀਕ ਨਹੀਂ ਕਰ ਰਿਹਾ ਤੁਹਾਨੂੰ ਪਤਾ ਹੈ ਜਿਹੜੀਆਂ ਮਿਸਰਦਗੀਆਂ ਉਹਨੇ ਉਹਦੇ ਲਈ ਯੂਨਾਈਟਡ ਨੇਸ਼ਨਸ 'ਚ ਗੱਲਾਂਬਾਤਾਂ ਹੋ ਰਹੀਆਂ ਕਿ ਕੀ ਕੀਤਾ ਜਾਵੇ ਕਿ ਨਾ ਕੀਤਾ ਜਾਵੇ ਹਲੇ ਤੱਕ ਕੋਈ ਵੀ ਸੈਂਕਸ਼ਨਸ ਅਪੈਨ ਨਹੀਂ ਆ ਕੁਛ ਨਹੀਂ ਕੀਤਾ ਜਾ ਰਿਹਾ ਤੇ ਯੂਨਾਈਟਡ ਨੇਸ਼ਨ ਸਕਿਉਰਿਟੀ ਕੌਂਸਲ ਬੈਠੀ ਹੈ ਕੱਲ ਨਿਕੀ ਹੇਲ ਦੇ ਬਿਆਨ ਸਨ ਕਿ ਹੁਣ ਉਸਨੇ ਸ਼ਬਦ ਜਿਹੜੇ ਸਖਤ ਸਨ ਤੇ ਗੱਲਾਂ-ਬਾਤਾਂ ਨਾਲ ਹੁਣ ਕਹਾਣੀ ਨਿਬੜਣੀ ਮਿਲਟਰੀ ਸੋਲੂਸ਼ਨ ਹੈ ਇਹਦਾ ਰੱਬ ਸੁੱਖ ਰੱਖੇ ਬਪਾਲਕ ਫੰਡਿਸ਼ ਇੱਕ ਵਾਇਰਕਾ ਪੰਜਾਬ ਕਾਂਟੈਸਟ ਚੱਲਦਾ ਹੈ ਤੁਸੀਂ ਉਸ ਨੂੰ ਵੇਖਦੇ ਹੋ ਸਾਰੇ ਆਥ ਨੇ ਆਉਂਦਾ ਹੁੰਦਾ ਸੀ ਤੇ ਬਹੁਤ ਗੌਣ ਵਾਲੇ ਲੜਕੇ ਲੜਕੀਆਂ ਉਹਦੇ ਵਿੱਚ ਗ੍ਰੈਂਡ ਦੇ ਵਿੱਚ ਅਖੀਰ ਦੇ ਵਿੱਚ ਅਮਰਜੀਤ ਸਿੰਘ ਹਿੰਮਤ ਸਿੰਘ ਸ਼ਖਸ਼ੀ ਰਤੀ ਯਾਸਮਿਨ ਤੇ ਮਾਨ ਰੋਹਲ ਤੇ ਸ਼ਬਨ ਮੋ ਪਹੁੰਚੇ ਪਰ ਜਦ ਰਾਹੁਲ ਨੂੰ ਅਤੇ ਸ਼ਬਨਮ ਨੂੰ ਉਹਦੇ ਵਿੱਚੋਂ ਕੱਢਿਆ ਗਿਆ ਤਾਂ ਬਹੁਤ ਜਿੰਨੇ ਵੀ ਵੇਖਣ ਵਾਲੇ ਸੀ ਆਪਸ ਵਿੱਚ ਗੱਲਾਂ ਕਰ ਰਹੇ ਸੀ ਉਹ ਕਹਿੰਦੇ ਯਾਰ ਇਹ ਤਾਂ ਸਭ ਤੋਂ ਵਧੀਆ ਦੋਨੇ ਗਾਉਂਦੇ ਆ ਪੱਕੀ ਤਾਂ ਗਾਉਣ ਵਾਲੇ ਜਿਹੜਾ ਚੈੱਕ ਕਰਨ ਵਾਲਿਆਂ ਦੀ ਜਿਹੜੀ ਉਹਨਾਂ ਨੂੰ ਪਤਾ ਹੋਊ ਬਈ ਸੁਰਾ ਕਿੱਥੇ ਲੱਗਦੀਆਂ ਕਿਵੇਂ ਸਲੀਮ ਤੇ ਗਰਮੀਤ ਹੁਣੀ ਦੋਨੇ ਰਾਹੁਲ ਤੇ ਗਰੀਬ ਕਰਦਾ ਮੁੰਡਾ ਵਧੀਆ ਗਾਉਂਦਾ ਬਹੁਤ ਉਦੇ ਤੇ ਉਹਨਾਂ ਦਾ ਝਗੜਾ ਹੋ ਗਿਆ ਈਗੋ ਸਿਰ ਤੇ ਚੜ ਕੇ ਸਲੀਮ ਕਹਿੰਦਾ ਮੈਨੂੰ 35 ਸਾਲ ਹੋ ਗਏ ਉਹ ਜਾ ਗਾਉਣਾ ਕੀ ਹੈ ਜੇ ਜੇ ਈਗੋ ਹੀ ਹੈ ਨਹੀਂ ਖੜੇ ਹੋ ਕੇ ਕਦੇ ਤਾੜੀਆਂ ਮਾਰਤੀਆਂ ਕਦੇ ਜੱਫੀਆਂ ਪਾਲੀਆਂ ਤੇ ਕੁਛ ਗਰਮੀ ਅੰਗਰੇਜ਼ੀ ਉਹ ਬੋਲੀ ਜਾਂਦਾ ਵੈਰੀ ਗੁੱਡ ਵੈਰੀ ਗੁੱਡ ਪਤਾ ਹੀ ਨਹੀਂ ਕੀ ਅਲੱਗ ਜਿਹਾ ਸਿਸਟਮ ਹੈ ਪਰ ਇਹਨਾਂ ਦੇ ਅੰਮਾ ਅਮਰਜੀਤ ਸਿੰਘ ਜਿਹੜਾ ਇੱਕ ਮੁੰਡਾ ਹੈ ਉਸ ਨੂੰ ਪਹਿਲਾ ਤੇ ਜਸਮੀਨ ਤਮਾਨ ਦੂਸਰਾ ਤੇ ਹਿੰਮਤ ਸਿੰਘ ਤੀਸਰਾ ਸਿੱਧਾ ਬਿਲਕੁਲ ਅਮਰਜੀਤ ਤੇ ਜਿਹੜਾ ਹਿੰਮਤ ਸਿੰਘ ਹਿੰਮਤ ਲਖੀਮਪੁਰ ਖੀਰੀ ਦਾ ਤੇ ਅਮਰਜੀਤ ਤੇ ਜਸਮੀਨ ਤਮਾਨ ਦੋਨੇ ਲੁਧਿਆਣੇ ਦੇ ਨੇ ਅਮੀਰ ਪਰਿਵਾਰਾਂ ਦੇ ਦੋਨੇ ਬੱਚੇ ਆ ਰਾਹੁਲ ਤੇ ਸ਼ਬਨਮ ਦੋਨੇ ਸ਼ਬਨਮ ਮੁਸਲਮ ਲੜਕੀ ਹੈ ਤੇ ਬਲੇ ਕੋਟ ਲੈ ਤੇ ਦੋਨਾਂ ਨੂੰ ਤੁਸੀਂ ਗਾਉਂਦਿਆਂ ਨੂੰ ਉਹਨਾਂ ਨੂੰ ਵੇਖਿਆ ਬਹੁਤ ਜ਼ਿਆਦਾ ਵਧੀਆ ਦੋਨੇ ਆਉਂਦੇ। ਇਹ ਪੱਖਪਾਤ ਦੀਆਂ ਜਿਹੜੀਆਂ ਗੱਲਾਂ ਜਾਂ ਰੱਬ ਜਾਣੇ ਕੀ ਹੈ ਬਾਕੀ ਮੈਂ ਆਪਣੇ ਤੌਰ ਤੇ ਵੇਖਣ ਨੂੰ ਜਿਹੜੇ ਦੋਨੇ ਵਧੀਆ ਗਾਉਂਦੇ ਸੀ ਉਹਨਾਂ ਨੂੰ ਪਹਿਲਾਂ ਹੀ ਕੱਢ ਦਿੱਤਾ। ਬਾਕੀ ਤਾਂ ਗਾਉਣ ਵਾਲੇ ਜਿਨ੍ਹਾਂ ਨੂੰ ਗਿਆਨ ਹੈ ਉਹ ਦੱਸ ਸਕਦੇ ਐ। ਪਰ ਇੱਕ ਬਹੁਤ ਸੀਨੀਅਰ ਆਰਟਿਸਟ ਨਾਲ ਮੈਂ ਗੱਲ ਕਰਦਾ ਉਹ ਬਿਲਕੁਲ ਕਰਤ ਹੋਇਆ। ਵੀ ਇਸ ਤਰ੍ਹਾਂ ਦੀ ਨਹੀਂ ਇਹ ਜਿਹੜਾ ਸਾਡੇ ਵੀ ਹਿਸਾਬ ਨਾਲ ਇਹ ਦੋਨੇ ਬੱਚੇ ਕੱਢਣ ਵਾਲੇ ਨਹੀਂ ਸੀ ਸ਼ਬਲਮ ਵਾਕਿਆ ਬਹੁਤ ਜ਼ਿਆਦਾ ਵਧੀਆ ਕਾਉਂਦਾ ਸੀ ਗਾਉਂਦੀ ਸੀ ਇਹਨਾਂ ਦੇ ਘਰ ਦੇ ਵਿੱਚ ਘਰ ਦੇ ਵਿੱਚ ਗਾਉਣ ਵਾਲੇ ਨੇ ਪਰਿਵਾਰਾਂ ਨੂੰ ਇਹਨਾਂ ਦੇ ਖਾਨਦਾਨ ਦੇ ਵਿੱਚ ਮੁਸਲਮਾਨ ਪਰਿਵਾਰਾਂ ਦੇ ਵਿੱਚ ਵੈਕੀ ਬਹੁਤ ਜ਼ਿਆਦਾ ਵਧੀਆ ਦੇਖ ਲਓ ਗਾਉਣ ਵਾਲੇ ਕਿੰਨੇ ਵਧੀਆ ਉਹਨਾਂ ਦੇ ਮੁਕਾਬਲੇ ਅਮਰਜੀਤ ਸਿੰਘ ਜਾਂ ਜਸਮੀਨ ਜਾਂ ਹਿੰਮਤ ਸਿੰਘ ਉਹਨਾਂ ਵਧੀਆ ਨਹੀਂ ਗਾਉਂਦੇ ਜਿੰਨੇ ਉਹ ਗਾਉਂਦੇ ਆ ਮਦੋਹ ਕਰਾਏ। ਬਾਕੀ ਚੈਨਲ ਨੂੰ ਪਤਾ ਪਤਾ ਹੋਊ। ਵੀ ਵੇਖੀ ਜਿਨ੍ਹਾਂ ਨੇ ਬਹੁਤ ਲੰਮੇ ਸਮੇਂ ਤੋਂ ਉਹਨਾਂ ਨੂੰ ਹਰ ਵੀਕ ਗਾਉਂਦੇ ਆ ਹਰ ਰੋਜ਼ ਅਥਨੇ ਉਹ ਪ੍ਰੋਗਰਾਮ ਹੁੰਦੇ ਤੇ ਰੌਹਲ ਬਹੁਤ ਵਧੀਆ ਗਾਉਂਦੇ ਸੀ। ਗਲਤੀਆਂ ਸਾਰਿਆਂ ਨੇ ਕਰ ਸਾਰੇ ਕਰਦੇ ਸੀ। ਔਰ ਉਹਨਾਂ ਦਾ ਫਾਈਨਲ ਦੇ ਵਿੱਚ ਉਹਨਾਂ ਨੂੰ ਕੱਢਣਾ ਜਿਹੜਾ ਉਹ ਕਾਫੀ ਦੇਖਣ ਵਾਲਿਆਂ ਨੂੰ ਚੁਭ ਰਿਹਾ ਹੈ ਕੋਸ਼ਿਸ਼ ਕਰਾਂਗੇ ਕਿਸੇ ਨੂੰ ਜੇ ਕਿਸੇ ਵਧੀਆ ਗਾਇਕ ਨੂ ਏਅਰ ਤੇ ਲੈ ਕੇ ਵੀ ਗਾਇਕ ਡਰਦੇ ਆ ਡਰਦੇ ਕੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਚੈਨਲਾਂ ਦੀ ਗੀਤ ਗਰੁੱਪ ਚਲਾਉਣ ਲਈ ਪਰ ਆਮ ਅੱਖ ਵੇਖਣ ਵਾਲੀ ਗੁਰਾਂ ਸੁਰਾਂ ਦਾ ਗਿਆਨ ਵੀ ਹੈ ਨਹੀਂ ਵੇਖਣ ਤੇ ਸੁਣਨ ਤੋਂ ਪਤਾ ਲੱਗਦਾ ਨਾ ਵੀ ਕੰਠ ਹੈ ਜਿਹੜਾ ਗਾਉਂਦਾ ਹੈ ਉਹ ਇੰਨਾ ਵਧੀਆ ਤੇ ਰਿਦਮ ਹੈ ਜਿਹੜਾ ਉਹ ਇੰਨਾ ਵਧੀਆ ਉਹ ਦੋਨਾਂ ਦਾ ਆਪਸ ਵਿੱਚ ਜਦੋਂ ਉਹਨਾਂ ਨੂੰ ਸਟੇਜ ਤੋਂ ਉੱਤਰੀਆ ਵੀ ਗਿਆ ਜਦ ਵੀ ਉਹਨਾਂ ਨੇ ਆਪਸ ਵਿੱਚ ਵੇਖਿਆ ਜਿਵੇਂ ਪਤਾ ਹੋਵੇ ਰੌਹਲ ਤੇ ਸ਼ਬਨ ਮੁਹਾਵਸ ਵਿੱਚ ਇੱਕ ਦੂਸਰੇ ਵੱਲ ਉਹਨਾਂ ਨੇ ਵੇਖਿਆ ਇਹ ਗੱਲ ਜਿਹੜੀ ਅਮਰਜੀਤ ਸਿੰਘ ਤੇ ਹਮਦ ਸਿੰਘ ਉੱਚੀ ਆਵਾਜ਼ ਢਗਾਉਂਦੇ ਆ ਜੇ ਉਹਨਾਂ ਨੂੰ ਰਾਗਾਂ ਦੇ ਵਿੱਚ ਕਲਾਸਿਕਲ ਇਸ ਤਰ੍ਹਾਂ ਸੁਣੋ ਪਰਿਵਾਰਾਂ ਨੂੰ ਦਿਖਾਇਆ ਉਹਦਾ ਦੇ ਤੇ ਹਾਰ ਖਾਸਾ ਕੁਸ਼ ਕੀਤਾ ਸੀ ਦੂਸਰੇ ਬੰਨ ਜਦੋਂ ਉਹ ਪਰਿਵਾਰ ਦਿਖਾਏ ਗਏ ਸ਼ਬਨਮ ਤੇ ਰਾਹੁਲ ਉਹ ਗਰੀਬ ਪਰਿਵਾਰਾਂ ਦੇ ਵਿੱਚੋਂ ਬੱਚੇ ਸਨ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਕ ਬਸ ਡਰਾਈਵਰ ਨੂੰ ਰਾਤ 2 ਵਜੇ ਕਿਸ ਨੇ ਚਾਕੂ ਮਾਰਤਾ ਤੇ ਜਿਹੜਾ ਦੋਸ਼ੀ ਹੈ ਉਹ ਫੜ ਵੀ ਲਿਆ ਰਾਤ ਦੇ 2 ਵਜੇ ਜਿਹੜੇ ਪੈਟ ਦਾ ਡਰਾਈਵਰ ਅਜਿਹਾ ਉਹਨੂੰ ਕੰਮ ਤੇ ਜੋਬ ਤੇ ਹੀ ਚਾਕੂ ਮਾਰਿਆ ਗਿਆ ਬਹੁਤ ਮਾੜੀ ਖਬਰ ਹੈ 52 ਸਾਲ ਦਾ ਫਾਈਨ ਫ੍ਰਿਜ਼ਰ ਤੇ ਪਰ ਇਸ ਗੱਲ ਵੀ ਵਧੀਆ ਸਕੂਲ ਦੇ ਵਿੱਚ ਸਟੂਡੈਂਟਸ ਜਿੱਥੇ ਆਮ ਲੋਕ ਬਹੁਤ ਜ਼ਿਆਦਾ ਸਟੂਡੈਂਟਸ ਜਿਹੜੇ ਬੱਚੇ ਵਧੀਆ ਨੇ ਉੱਥੇ ਇਹ じゃ ਕੀ ਹੋਇਆ ਇਹ ਸਾਰਾ ਭਾਈਚਾਰਾ ਜਿੰਨੇ ਵੀ ਡਰਾਈਵਰ ਨੇ ਉਹ ਬਹੁਤ ਅੱਜ ਦੁੱਖ ਦੇ ਵਿੱਚ ਨੇ ਇਸ ਕੰਮ ਤੇ ਸਾਡਾ ਭਾਈਚਾਰਾ ਵੀ ਬਹੁਤ ਕੰਮ ਕਰਦਾ ਹੈ ਡਰਾਈਵਰ ਇਥੇ ਵੀ ਬਹੁਤ ਨੇ ਤੇ ਸਾਰਿਆਂ ਸ਼ਹਿਰਾਂ ਦੇ ਵਿੱਚ ਖਾਸਾ ਉੱਤੇ ਲੋਕਲ ਸਾਡਾ ਬੀਸੀ ਟ੍ਰਾਂਜਿਟ ਦੇ ਵਿੱਚ ਬਹੁਤ ਸਾਡੇ ਡਰਾਈਵਰ ਨੇ ਉਸ ਜਗ੍ਹਾ ਤੇ ਜਿੱਥੇ ਜ਼ਿੰਦਗੀ ਬਣਾਉਣ ਬੱਚੇ ਆਉਂਦੇ ਆ ਉਹ ਜੀ ਜਗ੍ਹਾ ਤੇ ਇਹ ਜਿਆ ਕੁਝ ਜਦ ਹੁੰਦਾ ਅ ਫੜਤਾ ਲਿਆ ਬੰਦਾ ਉਸ ਦਾ ਨੌ ਹਲੇ ਪੁਲਿਸ ਨੇ ਦੱਸਿਆ ਯੂਨੀਵਰਸਿਟੀ ਦੇ ਵਿੱਚ ਜਿੱਥੇ ਇਹ ਜਿਆ ਕੁਝ ਜੇ ਤੁਸੀਂ ਦੇਖੋ ਟ੍ਰਾਂਜਿਟ ਦਾ ਸਿਸਟਮ ਕਦੇ ਯੂਵੀਸੀ ਤੇ ਐਸਐਫਯੂ ਜਾ ਵੇਖੋ ਕਿੰਨੀਆਂ ਸਹੂਲਤਾਂ ਬੱਚਨ ਬੀ ਲਾਈਨ ਕਿਵੇਂ ਭੱਜੀਆਂ ਆਉਂਦੀਆਂ ਬਰੌਡਵੇ ਤੇ ਉਧਰੋਂ ਬਾਅਦ 41st ਹੋ ਕੇ ਕਿੱਧਰ ਦੀ ਕਿੱਧਰ ਕਿੱਧਰ ਕਿੱਧਰ ਬਸਾਂ ਲਈ ਤੁਰੀਆਂ ਫਿਰਦੀਆਂ ਨੇ ਬੱਚਿਆਂ ਨੂੰ ਕਿੰਨੀ ਆ ਸਹੂਲਤ ਹੈ ਤਾਂ ਇਹਦਾ ਸਿਸਟਮ ਸਪੈਸ਼ਲੀ ਉਹਨਾਂ ਦੇ ਲਈ ਬੜਾ ਵਧੀਆ ਇਸ ਗੱਲ ਨੇ ਬੜਾ ਦੁੱਖ ਜਿਹੜਾ ਦੇ ਵਿੱਚ ਵੀ ਕਈ ਜਿਹੜੇ ਮੈਸੇਜ ਉੱਥੋਂ ਆਏ ਤੇ ਉਹਦੇ ਵਿੱਚ ਇਹੀ ਦਿਖਾਇਆ ਗਿਆ ਦੱਸਿਆ ਕਿ ਇਹ ਬਹੁਤ ਅੱਜ ਦੁੱਖ ਦੀ ਖਬਰ ਲੋਕਲ ਖਬਰਾਂ ਦੇ ਵਿੱਚੋਂ ਕਹਿੰਦਾ ਵੀ ਸੈਂਟਰੀ ਜਿਹੜੀ ਸੁੱਖੇ ਵਾਲੀ ਇੰਡਸਟਰੀ ਆ ਹੋ ਜਾਣੀ ਹੈ ਉਸ ਨੂੰ ਪ੍ਰਮੋਟ ਕਰਨ ਦੇ ਲਈ ਕੀ ਕੀ ਕੀਤਾ ਜਾਵੇ ਇਸ ਦੀਆਂ ਗੱਲਾਂ ਚੱਲ ਰਹੀਆਂ ਕਿ ਸੁੱਖਾ ਪ੍ਰਚਾਰਿਆ ਕਿਵੇਂ ਜਾਊ ਫਿਰ ਜਿਵੇਂ ਸਿਗਰਟ ਤੇ ਥੱਲੇ ਇਹ ਨੂੰ ਪੀਣ ਦੇ ਨਾਲ ਕੈਂਸਰ ਹੁੰਦਾ ਹੈ ਜਾਂ ਕੁਝ ਲਿਖਿਆ ਜਾਂਦਾ ਇਹਦੇ ਲਈ ਕੀ ਲਿਖਿਆ ਜਾਂਦਾ ਇਹਦੀ ਵਕਾਲਤ ਕਰਦੇ ਇਹਦੇ ਹੱਕ 'ਚ ਬੋਲਣ ਵਾਲੇ ਲੋਕ ਜਿਹੜੇ ਇਸ ਦੀ ਵਰਤੋਂ ਕਰਦੇ ਉਹ ਕਹਿੰਦੇ ਅਸੀਂ ਕਿੰਨੀਆਂ ਮੁਸ਼ਕਲਾਂ ਤੋਂ ਬਚ ਗਏ ਇਹਦਾ ਖਰਚਾ ਵੱਧ ਨਹੀਂ ਨਾਲ ਸੱਟ ਪੇਟ ਨਹੀਂ ਓਵਰਡੋਜ਼ ਹੁੰਦੇ ਅਸੀਂ ਅਸੀਂ ਮੌਜਾਂ ਕਰਦੇ ਹਾਂ 24 ਘੰਟੇ 'ਚ ਇੱਕ ਵਾਰ ਸਮੋਕ ਕਰਦੇ ਹਾਂ ਸਾਨੂੰ ਕੋਈ ਚੰਗੀ ਨਹੀਂ ਲੋ ਵੀ ਹੈ ਐਪ ਵਾਲਾ ਵੀ ਹੈ ਅਲੱਗ-ਅਲੱਗ ਕਿਸਮ ਦਾ ਸੁੱਖਾ ਤੇ ਅਲੱਗ-ਅਲੱਗ ਕੰਪਨੀਆਂ ਬਣਾਉਂਦੀਆਂ ਬਹੁਤ ਵੱਡੀ ਇੱਕ ਇੰਡਸਟਰੀ ਬਣਨ ਜਾ ਰਿਹਾ ਹੈ ਇਹ ਕੈਨਾਬਿਸ ਤੁਸੀਂ ਯਾਦ ਰੱਖੇ ਸੈਲਫੀ ਦਾ ਇੱਕ ਜਮਾਨਾ ਜਿਹੜਾ ਇੰਨਾ ਚੱਲ ਰਿਹਾ ਹੈ ਹਰਾਨੀ ਹੋ ਗਈ ਕਿ ਕਾਮਾ ਵਿਸਲਰ ਤੋਂ ਵੈਨਕੂਵਰ ਨੂੰ ਆਉਂਦਾ ਇੱਕ ਦੋ ਜਣੇ ਆ ਉਹ ਬਹੁਤ ਸਪੀਡ ਗੱਡੀ ਹੈ ਬਹੁਤ ਤੇ ਵੈਸਟ ਵੈਨਕੂਵਰ ਦਾ ਪੁਲਿਸ ਹੈ ਜਿਹੜਾ ਪੁਲਿਸਮੈਨ ਆ ਜਿਹੜਾ ਉਹ ਸਿਵਿਲਿਅਨ ਜਿਹੜੀ ਗੱਡੀ ਹੈ ਅੰਡਰ ਕਵਰ ਗੱਡੀ ਹੈ ਤੇ ਉਹਰ ਸਪੀਡ ਗੱਡੀ ਦੇ ਫੋਲ ਕੇ ਉਪਰੋਂ ਨਾ ਸਨਰੂਫ ਬਾਹਰ ਨਿਕਲ ਕੇ ਇੱਕ ਖੜਕੇ ਬੰਦਾ ਸੈਲਫੀ ਲੈਣ ਨੇ ਬ੍ਰੇਕ ਮਾਰਤੇ ਤੇ ਉੱਪਰ ਵਾਲਾ ਡਿਗਣੋਂ ਬਚਿਆ ਅੱਧਾ ਮੂਹਰੇ ਨੂੰ ਅੱਧਾ ਪਿੱਛੇ ਨੂੰ 196 ਡਾਲਰ ਦੀ ਸਪੀਡਿਕ ਵੀ ਜਿਹੜਾ ਬੈਲਟ ਖੋਲੀ ਬੈਠਾ ਦੋਨੇ ਹੀ ਤੇ ਕੂਕਿਆਂ ਦੇ ਡੋਲਾਂ ਕੋ ਸੱਚੇ ਹੋਰ ਸੈਲਫੀ ਪ੍ਰਵਾਦ ਸਾਹਿਬ ਦੇ ਦਰਸ਼ਨਾਂ ਦੇ ਵਿੱਚ ਵੀ ਮੈਨੂੰ ਕਦੇ ਕਦੇ ਪਿਛਲੀ ਵਾਰ ਮੈਨੂੰ ਇਓਂ ਲੱਗਿਆ ਕਿ ਕਿਤੇ ਜਾ ਸਾਡਾ ਮੁਕੱਦਸ ਹਾਨ ਟੂਰਿਜ਼ਮ ਸਪੋਰਟ ਨਾ ਬਣ ਕੇ ਰਹਿ ਜਾ ਭਾਰਤ ਦੇ ਵਿੱਚੋਂ ਟੂਰ ਦੀਆਂ ਬੱਸਾਂ ਤੇ ਨਾਲ ਲੋਕ ਆ ਰਹੇ ਨੇ ਤੇ ਦਰਬਾਰ ਸਾਹਿਬ ਦੇ ਆਲੇ-ਦਾਲੇ ਜਿਹੜਾ ਦੇਖੋ ਸੈਲਫੀ ਜਿਹੜਾ ਦੇਖੋ ਸੈਲਫੀ ਜਿਹੜਾ ਦੇਖੋ ਸੈਲਫੀ ਸਰਕਾਰ ਉੱਤੇ ਬੁਆਇਆ ਜਾ ਰਿਹਾ ਜੇ ਤੁਸੀਂ ਅੰਦਰ ਦੀ ਸ਼ਕਤ ਤੇ ਦਰਬਾਰ ਸਾਹਿਬ ਦੇ ਚਲੇ ਜਾਂਦੇ ਹੋ ਛੱਤ ਤੇ ਵੀ ਹੁਣ ਗੁਰੂ ਮਹਾਰਾਜ ਨੇ ਜਿਹੜੇ ਉਹ ਪ੍ਰਕਾਸ਼ ਚਕਰਤ ਉਥੇ ਵੀ ਹਨ ਪਰ ਤੇ ਸੈਲਫੀਆਂ ਲੈਣ ਲੱਗੇ ਪਿੱਛੇ ਸਰੋਵਰ ਦੀਆਂ ਤੇ ਸਾਰਾ ਖੁਸ਼ ਆ ਰਿਹਾ ਹਰ ਇੱਕ ਸੈਲਫੀ ਕੋਈ ਫੋਟੋ ਖਿੱਚ ਰਿਹਾ ਕੋਈ ਸੈਲਫੀ ਕੋਈ ਫੋਟੋ ਖਿੱਚ ਰਿਹਾ ਅੰਦਰ ਵੀ ਉੱਪਰ ਵੀ ਕੋਈ ਉਹ ਵਾਰਨਿੰਗ ਨਹੀਂ ਪੜ ਰਿਹਾ ਤੇ ਉੱਪਰਲੇ ਬੰਨੇ ਅੰਦਰਲੀਆ ਪੌੜੀਆਂ ਚੜ੍ਹ ਕੇ ਖਿੱਚ ਬੈਠੇ ਨੇ ਕੋਈ ਪਾਣੀ ਦਾ ਚੂਲਾ ਲੈਣ ਵੇਲੇ ਖਿੱਚ ਰਿਹਾ ਕੋਈ ਬਾਹਰ ਪ੍ਰਕਰਮਾਂ ਚ ਤੇ ਲੇਟਲੀ ਸਾਰੇ ਪਾਸੋਂ ਟੂਰ ਬਹੁਤ ਆਉਂਦੇ ਆ ਦੇਖੋ ਆਉਣਾ ਕੋਈ ਪ੍ਰੋਬਲਮ ਨਹੀਂ ਪਰ ਅਸਲ ਸਨੇਹਾ ਪੜਾਟ ਕੇ ਫੋਆ ਹੀ ਖਿੱਚੀ ਜਾਣੀਆਂ ਉੱਥੇ ਉਹ ਗੱਲ ਹੋਰ ਹੈ ਟਿਕਾੜ ਦੇ ਵਿੱਚ ਤਾਂ ਕੋਈ ਹੈ ਨਹੀਂ ਜਦ ਪੌੜੀਆਂ ਉੱਤਰ ਜਾਂਦੇ ਹੋ 12 14 ਉੱਥੇ ਤੱਕ ਟਿਕਾੜ ਇੰਨਾ ਆਉਂਦਾ ਵੀ ਮਰਜੀ ਬਹਿ ਜਾ ਤੇ ਆਰਾਮੇਰਾ ਜਿੱਧਰ ਨੂੰ ਨਿਗਾ ਮਾਰ ਫੋਟੋ ਜਿੱਧਰ ਨੂੰ ਨਿਗਾ ਮਾਰ ਫੋਟੋ ਹਰਾਨੀ ਨਹੀਂ ਇਹ ਕਿਸੇ ਨੇ ਲਿਖਿਆ ਵੀ ਸੀ ਪਿਛਲੇ ਦਿਨੀ ਇੱਕ ਸਿੱਖ ਪੱਤਰਕਾਰ ਨੇ ਵੀ ਮੈਨੂੰ ਇਹ ਡਰ ਹੈ ਜਿਹੜਾ ਸੁੰਦਰੀਕਰਨ ਹੋ ਰਿਹਾ ਜੀ ਤੇ ਕਿਲੇ ਬਦਲੇ ਜਾ ਰਹੇ ਨੇ ਦਰਬਾਰ ਸਾਹਿਬ ਨੂੰ ਕਨਵਰਟ ਕਰਨ ਲੋ ਔਰ ਹੋ ਹੁਣ ਜਾ ਕੇ ਵੇਖਿਓ ਅਲੱਗ ਕਿਸਮ ਦੀ ਸੰਗਤ ਉੱਥੇ ਆਉਂਦੀ ਹੈ ਤੇ ਪੰਜਾਬੀ ਜਾਂ ਨੌਨ ਸਿੱਖ ਨੇ ਆਉਣ ਸਾਰੇ ਮਰਨਾਂ ਦਾ ਸਾਂਝਾ ਜਗ੍ਹਾ ਪਰ ਉੱਥੇ ਦਾ ਕੋਈ ਕਾਇਦਾ ਕਾਨੂੰਨ ਹੈ ਉੱਥੇ یوں ਉਹ ਨਹੀਂ ਵੀ ਸੈਲਫੀਆਂ ਤੁਸੀਂ ਕੋਠੇ ਤੇ ਉੱਪਰ ਛੱਤ ਤੇ ਜਾ ਕੇ ਦਰਬਾਰ ਸਾਹਿਬ ਦੀ ਛੱਤ ਉੱਥੇ ਤੁਸੀਂ ਸੈਲਫੀਆਂ ਖਿੱਚ ਰਹੇ ਹੋ ਪਾਣੀ ਚ ਖੜਗੇ ਸੈਲਫੀ ਬਾਹਰ ਖੜਗੇ ਫਿਰਦੇ ਆ ਉਹ ਪਤਾ ਕਿਹੜਾ ਲਈ ਵਰਸ਼ੇ ਲਈ ਫਿਰ ਉੱਥੇ ਇਹ ਚੀਜ਼ ਨਹੀਂ ਮਨਾਹੀ ਹੋਣੀ ਚਾਹੀਦੀ ਖਾਸ ਤੌਰ ਤੇ ਦਰਬਾਰ ਸਾਹਿਬ ਦੇ ਅੰਦਰ ਜਾਂ ਉੱਪਰ ਵੀ ਬਿਲਕੁਲ ਫੋਟੋ ਨਹੀਂ ਕੋਈ ਖਿੱਚ ਸਕਦੇ ਤੁਸੀਂ ਉਸ ਜਗਾ ਦੀ ਦਾ ਸਤਕਾਰ ਘਟਾ ਰਹੇ ਹਾਂ ਜੇ ਉੱਤੇ ਪੜੀ ਰਹੀ ਬਾਣੀ ਤੇ ਗੁਰੂ ਮਹਾਰਾਜ ਦੇ ਸਰੂਪਾਂ ਤੋਂ ਸਿੱਟ ਕਰ ਖੜ ਖੜ ਕੇ ਫੋਟੋ ਆ ਖਿਚਣ ਚ ਲੱਗਿਓ ਤੁਹਾਨੂੰ ਪਤਾ ਹੀ ਨਹੀਂ ਵੀ ਇੱਕ ਤੇ ਪਾਰਕ ਥੋੜਾ ਕੋਈ ਜਾਂ ਪੰਜੌਰ ਗਾਰਡਨ ਚ ਥੋੜਾ ਖੜਿਆ ਹਾਂ ਤੁਸੀਂ ਵੀ ਪਾਣੀ ਚ ਗਿੱਟੇ ਗਿੱਟੇ ਖੜ ਕੇ ਫੋਟੋਆਂ ਖਿਚਾਉਂਦੇ ਹੋ ਬਹੁਤ ਵੱਡ ਰਿਫਾਰਮ ਲੋਡ ਹੈ ਤੇ ਦਾਤਾ ਸੁਣੇ ਪੰਥਕ ਲੋਕ ਨੇ ਜਿਹੜੇ ਜਿਨ੍ਹਾਂ ਦੇ ਦਿਲ ਚ ਕੌਮ ਦਾ ਦਰਦ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਸੇਵਾ ਆਵੇ ਤੇ ਕੁਝ ਉੱਥੇ ਬਣੇ ਸਭ ਤੋਂ ਵੱਡੀ ਜ਼ਰੂਰਤ ਵਕਤ ਦੀ ਇਹ ਹੈ ਕਿ ਜਿਹੜਾ ਉੱਥੇ ਦਾ ਸੁਧਾਰ ਹੈ ਅਸਲ ਪਹਿਲਾਂ ਤਾਂ ਸੁਧਾਰ ਹੋਣ ਦੀ ਐਸ ਜੀ ਪੀ ਸਥਿਤੀ ਦੇ ਵਿੱਚ ਬਹੁਤ ਵੱਡੀ ਜ਼ਰੂਰਤ ਹੈ ਪਰ ਕੋਈ ਉਹ ਆਉਣ ਜਿਹੜੇ ਬਿਨਾਂ ਸਵਾਰਥ ਤੋਂ ਸਵਾਰਥ ਤੋਂ ਉੱਪਰ ਉੱਠ ਕੇ ਕੌਮ ਦੀ ਸੇਵਾ ਕਰਨ ਬਹੁਤ ਵੱਡਾ ਬਜਟ ਹੈ ਬਹੁਤ ਕੁਝ ਕਰ ਰਿਹਾ ਉਹਨਾਂ ਤੇਲ ਫੂਕਦੇ ਫਰੀਜਣ ਮੱਕੜੋਂ ਨਾ ਔਂ ਕਰੇ ਕਿਸੇ ਕਾਨਫਰੈਂਸ ਕਰੇ ਕਿਸੇ ਕਿਸੇ ਕਾਨਫਰੈਂਸ ਤੇ ਰੇਲੇ ਬਣਾਤੀ ਕਾਰ ਕਾਦੀ ਸੀ ਕਰੋੜਾਂ ਦਾ ਕੈਮਰੀ ਉਹ ਤੇਲ ਖਾ ਗਈ ਇੱਕ ਜਿਪਸੀ ਅੱਗੇ ਇੱਕ ਜਿਪਸੀ ਪਿੱਛੇ ਪਤਾ ਨਹੀਂ ਇੰਨੀ 10 ਗਨ ਦੀ ਪ੍ਰਧਾਨ ਨੂੰ ਕੀ ਲੋੜ ਹੈ ਰੱਬ ਜਾਣਦਾ ਸਕੂਟਰ ਲੱਗੇ ਹੋਏ ਨੇ ਜਿੱਥੋਂ ਜ਼ਿੰਦਗੀ ਜਿਉਣੀ ਸਿਖਾਉਣੀ ਹੈ ਜਿੱਥੇ ਨਿਮਰਤਾ ਚ ਆਉਣਾ ਹੈ ਜਦੋਂ ਉੱਥੇ ਹਾਲ ਨੇ ਈ ਕਹਾ ਗਨਮੈਨ ਕੋਈ ਚਾਹੀਦਾ ਹੈ ਉਹ ਗੱਡੀ ਚਾਹੀਦੀ ਹੈ ਤੇ ਜੇ ਸਿਕਿਉਰਿਟੀ ਆ ਉਹ ਵੀ ਚਾਹੀਦੀ ਆ ਪਰ ਮੈਨੂੰ ਲੱਗਦਾ ਲੋਕਾਂ ਦਾ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਵੀ ਕਲਚਰ ਜਿੱਤੋਂ ਲੋਕ ਦੁਖੀ ਨੇ ਰਹੀ ਗੱਲ ਨਸ਼ੇ ਦੀ ਇਹ ਗੱਲ ਬਹੁਤ ਵੱਡਾ ਵਿਸ਼ਾ ਰਿਹਾ ਕਿ ਲੋਕ ਨਸ਼ਾ ਕਹਿ ਰਹੇ ਨੇ ਹੈ ਤੇ ਸਰਕਾਰ ਕਹਿ ਰਹੀ ਹੈ ਨਸ਼ਾ ਇਸ ਜਗ੍ਹਾ ਤੇ ਹੈ ਨਹੀਂ ਕਮਾਲ ਪੂਰਾ ਪਿੰਡ ਰਾਜਾ ਗਰਾਉਂ ਤੋਂ ਕੋਸ ਤੋਂ ਜੱਜ ਸੈਕੋਲਜ ਉਹ ਪਿੰਡ ਦੀ ਵੀਡੀਓ ਮੈਂ ਫੇਸਬੁੱਕ ਤੇ ਪਾਈ ਹੈ ਪਿੰਡ ਇਕੱਠਾ ਹੋਇਆ ਹੈ ਪਿੰਡ ਦੇ ਵਿੱਚੋਂ 35 ਮੁੰਡਿਆਂ ਸਪੀਕਰ ਤੇ ਪਿੰਡ ਨੇ ਵੀ ਆ ਬੰਦੇ ਨੇ ਜਿਹੜੇ ਚਿੱਟਾ ਪੀਂਦੇ ਆ ਇਹਨਾਂ ਨੂੰ ਨਾ ਠਾਣਿਓ ਛੜਾ ਕੇ ਲਿਉਣਾ ਜਿੰਨਾ ਛੜਾਖਿਆ ਉਹਦਾ ਹੋ ਸੂਚਨਾ ਦੇ ਕੇ ਇਹਨਾਂ ਨੂੰ ਜ਼ਿੰਦਗੀ 'ਚ ਵਾਪਸ ਲੈ ਕੇ ਆਉਣਾ 35 ਜਣੇ ਇੱਕ ਪਿੰਡ 'ਚ ਔਰ ਸਰਕਾਰ ਇਹ ਮੰਨਣ ਨੂੰ ਤਿਆਰ ਨਹੀਂ ਕਿ ਸਾਡੇ ਮੈਂ ਔਰ ਉਹਦੀ ਤਸਵੀਹਾਂ ਉਹਨੂੰ ਬਚਾਉਣ ਵਾਲੇ ਸਰਕਾਰ ਦੇ ਦੁਨੀਆ 'ਚ ਨਸ਼ਾ ਉਹਦੇ ਦੁਨੀਆ 'ਚ ਨਸ਼ਾ ਦਾ ਪੰਜਾਬ 'ਚ ਹੋਣਾ ਲਾਜ਼ਮ ਹੈ ਜਿਹੜੀਆਂ ਚੀਜ਼ਾਂ ਦੇ ਨਾਂ ਨਹੀਂ ਸੁਣੇਦੇ ਸੀ ਉਹ ਚੀਜ਼ਾਂ ਨਮੀਆਂ ਪੰਜਾਬ 'ਚ ਆਈ 35 ਜਣੇ ਇੱਕ ਪਿੰਡ 'ਚ ਕਮਾਲਪੁਰੇ ਲਾਈਨ ਨੰਬਰ 2 ਮਿਸਟਰ ਸੋਢੀ ਜੀ ਲਿਆਂਦੇ ਆਪਣਾ ਹਰਮੰਦਰ ਸਾਹਿਬ ਵਾਲਾ ਨਾ ਉਹਦੇ ਤੇ ਇੱਕ ਮਿੰਟ ਗੱਲ ਕਰਨੀ ਚਾਹਾਂਗਾ ਕਰੋ ਜੀ ਗਿਲ ਸਾਹਿਬ ਗੱਲ ਇਹ ਆ ਵੀ ਕਿਸੇ ਕ੍ਰੈਡ ਸਾਈਜ਼ ਵਾਲੀ ਜਾਂ ਕਿਸੇ ਉਹ ਗੱਲ ਨਹੀਂ ਕਿਉਂਕਿ ਬਹੁਤ ਥਾਰੀ ਵਾਰੀ ਨਾ ਮਤਲਬ ਇਹ ਹੁੰਦਾ ਵੀ ਗੱਲ ਕਰੀਏ ਤੇ ਕਈ ਲੋਕ ਨੇ ਇਹਨੂੰ ਪਾਰਟੀ ਬਾਜ਼ੀ ਨਾਲ ਜੋੜ ਲੈਂਦੇ ਆ ਤੇ ਘਟੂ ਘਟੇ ਦਰਬਾਰ ਸਾਹਿਬ ਤੱਕ ਨੂੰ ਜਾਂ ਉਹਦੀ ਜਿਹੜੀ ਸੁੰਦਰਤਾ ਵਾ ਜਾਂ ਬਲਖਣਤਾ ਵਾ ਜਾਂ ਜੋ ਵੀ ਇੱਕ ਰੋਹਾਨੀਅਤ ਦਾ ਕੇਂਦਰ ਆ ਵਰਲਡ ਵਾਈਡ ਉਹਦੇ ਵਾਸਤੇ ਜਿਹੜੀਆਂ ਜ਼ਰੂਰੀ ਥੀਜਾਂ ਨੇ ਨਾ ਉਹ ਜਿਹੜੇ ਵੀ ਪ੍ਰਬੰਧਕ ਆ ਉਹਨਾਂ ਨੂੰ ਕਰਦੇ ਰਹਿਣਾ ਚਾਹੀਦਾ ਜਦੋਂ ਉਹ ਉਸ ਚੀਜ਼ ਤੋਂ ਆਕੀ ਹੁੰਦੇ ਆ ਫਿਰ ਬੋਲਣਾ ਕਿਸੇ ਨੂੰ ਤਾਂ ਬੋਲਣਾ ਪੈਗਾ ਜੀ ਔਰ ਵੇਖੋ ਤੁਸੀਂ ਗੱਲ ਕੀਤੀ ਮੇਰਾ ਦਿਲ ਕੀਤਾ ਹੋ ਸਕਦਾ ਹੋਰ ਚਾਂਸ ਜਣ ਵੀ ਬੋਲਣ ਕੋਈ ਲਿਖੇ ਵੀ ਇਹਨੂੰ ਇਹਦੇ ਤੇ ਕਈ ਲਿਖਦੇ ਵੀ ਆਲਰੇਡੀ ਇਹ ਚੰਗੀ ਤਰ੍ਹਾਂ ਯਾਦ ਆ ਕਿ ਸਰਬਾਰ ਸਾਹਿਬ ਦੇ ਜਿਹੜੇ ਤਿੰਨ ਪਾਸੇ ਮੇਨ ਗੁਰਾਂ ਦਾ ਸਰਾਂ ਵਾਲਾ ਤੇ ਇਧਰੋਂ ਜਲੇ ਵਾਲੇ ਸਾਈਡ ਤੋਂ ਤੇ ਦੂਜੇ ਪਾਸੇ ਮਿਸ਼ਰੀ ਬਾਜ਼ਾਰ ਵਾਲਾ ਤਿੰਨ ਮੁਖ ਲੰਘੇ ਵੈਸੇ ਹੈ ਤਾਂ ਇਧਰੋਂ ਕੱਲ ਤੱਕ ਤਾਂਲੇ ਪਾਸੇ ਵੀ ਆ ਪਰ ਉਧਰ ਮੈਂ ਨਹੀਂ ਵੇਖਿਆ ਝੂਠ ਨਹੀਂ ਬੋਲਣਾ ਤੇ ਇਹਨਾਂ ਤਿੰਨਾਂ ਸਾਈਡਾਂ ਤੇ ਨਾ ਬੋਰਡ ਲੱਗੇ ਹੁੰਦੇ ਸੀ ਵੀ ਪਵਿੱਤਰ ਸਰੋਵਰ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਜਿਨ੍ਹਾਂ ਸ੍ਰੀਨਾ ਨੇ ਇਸ਼ਨਾਨ ਕਰਨਾ ਘਰੋਂ ਜਾਂ ਇਸ਼ਨਾਨ ਕਰਕੇ ਆਓ ਤੇ ਇੱਥੇ ਗੁਰਰਾਮ ਦਾਸ ਰਾਂਧ ਵੀ ਟੂਟੀਆਂ ਲੱਗੀਆਂ ਜਾਂ ਪਹਿਲਾਂ ਉੱਥੇ ਇਸ਼ਨਾਨ ਕਰੋ ਫਿਰ ਕਈਆਂ ਥਾਵਾਂ ਤੇ ਲਿਖਿਆ ਹੁੰਦਾ ਸੀ ਵੀ ਰੋਮਾਂ ਦੀ ਜਿਹੜੀ ਪਤਿਤਤਾ ਹੈਗੀ ਆ ਇਹਨੂੰ ਰੋਮਾਂ ਦੀ ਬੇਅਦਬੀ ਗੁਰੂ ਦੀ ਕਰੋਪੀ ਨਾਲ ਖੇੜੋ ਖਾਸ ਕਰਕੇ ਪਰਵੱਤੇ ਇਹ ਉਹ मतलब ਚਲੋ ਇਹ ਗੱਲਾਂ ਤੇ ਸਿੱਖ ਸੰਗਤ ਵਾਸਤੇ ਨੇ ਆਪਾਂ ਉਹ ਉੱਥੇ ਸਾਰੇ ਜਾਂਦੇ ਆਪਾਂ ਕਿਸੇ ਤੇ ਨਹੀਂ ਗੱਲ ਸਕਦੇ ਫਿਰ ਇਹ ਵੀ ਲਿਖਿਆ ਹੁੰਦਾ ਸੀ ਵੀ ਪੜਕੀਲੇ ਕੱਪੜੇ ਪਹਿਨ ਕੇ ਨਾ ਆਓ ਹੁਣ ਵੇਖੋ ਚਲੋ ਆਪਾਂ ਇਹ ਮਤਲਬ ਦੋ ਚੀਜ਼ਾਂ ਪਰਖੀ ਲੈ ਕਪੜੇ ਵਾਲੀਆਂ ਜਾਂ ਦੂਜੀ ਆ ਰੋਮਾਂ ਦੀ ਵਿਦਬੀ ਵਾਲੀ ਇਸ ਬੰਨੇ ਛੱਡਦੇ ਨੇ ਸਾਰੇ ਸਿਆਣੇ ਸਭ ਨੂੰ ਚਾਹੀਦਾ ਆਪਣੇ ਹਿਸਾਬ ਨਾਲ ਜਿਹੜਾ ਸਿੱਖਾ ਉਹਨੂੰ ਆਪਣੀ ਉਹਨਾਂ ਚੀਜ਼ਾਂ ਦੇ ਉੱਤੇ ਧਿਆਨ ਕਰੇ ਪਰ ਜਿਹੜਾ ਲੜਉਣ ਵਾਲੀ ਗੱਲ ਆ ईसाई ਕਿਸੇ ਦਾ ਕੋਈ ਦੋਸਤ ਨਹੀਂ ਕਿਸੇ ਦਾ ਕੋਈ ਵਖਰੇਵਾ ਨਹੀਂ ਜਿਹਨੇ ਵੀ ਇਨਾਨ ਕਰਨਾ ਸਰੋਵਰ ਚ ਉਹ ਬੰਦਾ ਜਾਂ ਤੇ ਘਰੋਂ ਫੇਰੇ ਨਾ ਆ ਕੇ ਗਿਆ ਹੋਵੇ ਤੇ ਜੇ ਘਰੋਂ ਨਹੀਂ ਨਾ ਆ ਕੇ ਗਿਆ ਤੇ ਉੱਥੇ ਆਪਣਾ ਪਰਨੇ ਕੇਸ਼ਾਰੇ ਜਿਹਦੇ ਨਾਲ ਇਸ਼ਨਾਨ ਕਰਨਾ ਪਹਿਲਾਂ ਟੂਟੀਆਂ ਦੇ ਅੰਦਰ ਜਾ ਕੇ ਇਸ਼ਨਾਨ ਕਰ ਲਵੇ ਲੇਕਿਨ ਹੁਣ ਪਹਿਲਾਂ ਮਤਲਬ ਗੇਟਾਂ ਦੇ ਨਾਲ ਨਾਲ ਅੰਦਰ ਵੀ ਪ੍ਰਕਰਮਾਂ 'ਚ ਵੀ 1-2 ਥਾਵਾਂ ਤੇ ਲਿਖਿਆ ਹੁੰਦਾ ਸੀ ਹੁਣ ਉੱਥੇ ਕੋਈ ਹੈ ਹੀ ਨਹੀਂਗਾ ਔਰ ਲੋਕੀ ਉਹਦੇ ਜਿਹੇ ਇਸ਼ਨਾਨ ਇਸ ਤਰ੍ਹਾਂ ਕਰਦੇ ਆ ਵੀ ਜਦੋਂ ਨਹਾਈਦਾ ਮਤਲਬ ਮੈਂ ਆਪਣੀ ਕੰਨੀ ਸੁਣੀ ਤੇ ਅੱਖੀ ਵੇਖੀ ਗੱਲ ਦੱਸਦਾ ਇਹ 8-10 ਸਾਲ ਪੁਰਾਣੀ ਆ ਕੋਈ ਵੈਜਨੂ ਦੇਵੀ ਸਾਈਡ ਤੋਂ ਬੱਸ ਆਈ ਉਹ ਯਾਂ ਬੱਸ ਮਤਲਬ ਮਹਾਰਾਸ਼ਟਰ ਦੀ ਸੀ ਯਾਂ ਗੁਜਰਾਤ ਦੀ ਸੀ ਉਹਨਾਂ ਦੀ ਗੱਲਬਾਤ ਤੋਂ ਲੱਗਦਾ ਏ ਸੀ ਵੀ ਵਾਲੇ ਪਾਸੇ ਹੋਏ ਔਰ ਉਹਨਾਂ ਨੇ ਕਿਹਾ ਆਪਸ ਵਿੱਚ ਗੱਲ ਕਰਦੇ ਸੀ ਵੀ ਕਿਤਨਾ ਸਵੱਛ ਹੈ ਯਹਾਂ ਨਹਾਤੇ ਹੈ 4 ਦਿਨ ਹੋ ਗਏ ਕੋ ਮਤਲਬ ਪੂਰੇ ਆਲ ਓਵਰ ਇੰਡੀਆ ਯਾਂ ਇੱਧਰ ਨਾਰਥਰਨ ਏਰੀਆ ਦਾ ਟੂਰ ਸੀਗਾ ਤੇ ਉਹ ਸੰਗਤ ਉਥੋਂ ਨਿਕਲੀ ਤੇ ਚਾਰ ਦਿਨ ਤੋਂ ਨਹਾਤੇ ਨਹੀਂ ਤੇ ਉਹ ਮੈਂ ਉਹਨਾਂ ਨੂੰ ਇੱਕ ਦੋ ਸਿਆਣੇ ਬੰਦਿਆਂ ਨੂੰ ਕਿਹਾ ਮੈਂ ਕਿਹਾ ਯਾਰ ਨਹਾਉਣ ਤੋਂ ਪਹਿਲਾਂ ਤੁਸੀਂ ਘਰ ਤੋਂ ਕਹਿੰਦੇ ਦੀ ਕਹਾਣਾ ਹੈ ਉਹ ਸਾਹਮਣੇ ਨਾਤੇ ਮਤਲਬ ਉੱਥੇ ਪਵਿੱਤਰਤਾ ਕਿੱਥੇ ਰਹਿ ਜਾਂਦੀ ਹੈ ਜਦੋਂ ਅਸੀਂ ਫਾਲੋ ਨਹੀਂ ਕਰਦੇ ਫਿਰ ਉੱਥੋਂ ਅਸੀਂ ਬੋਤਲਾਂ ਭਰ ਫੜ ਕੇ ਜਲਦੀਆਂ ਲਿਆਉਣੇ ਆ ਚੂਲੇ ਲੈਣੇ ਆ ਸਾਰਾ ਕੁਝ ਕਰਦੇ ਆ ਤੇ ਚਾਰ ਦਿਨ ਦਾ ਬੰਦਾ ਨਹਾਤਾ ਹੀ ਨਹੀਂ ਉਹਦੇ ਵਿੱਚ ਇਸ਼ਨਾਨ ਕਰ ਰਿਹਾ ਇਹ ਗੱਲ ਵੀ ਵੇਖੋ ਮੈਂ ਉਹਨਾਂ ਦੇ ਜਿਹੜੇ ਸ਼ਰਧਾਵਾਣ ਹੈ ਉਹਨਾਂ ਦੀ ਸ਼ਰਧਾ ਤੇ ਕਿੰਤੂ ਨਹੀਂ ਕਰਦਾ ਮੈਨੂੰ ਭਾਵ ਦਾ ਭਾਗੀ ਬਣਨ ਦੀ ਲੋੜ ਨਹੀਂ ਪਰ ਜਿਹੜੇ ਪ੍ਰਬੰਧਕ ਬੈਠੇ ਆ 11 ਅਰਬ ਦਾ ਉਹਨਾਂ ਦਾ ਬਜਟ ਹੈ ਤੇ ਉਹ ਚਾਰ ਬੋਰਡ ਦੀ ਲਿਖਾ ਕੇ ला ਸਕਦੇ ਜਾਂ ਇਹੋ ਜਿਹੇ ਮਤਲਬ ਬੰਦੇ ਆਪ ਜਿਹੜੇ ਬਹੁਭਾਸ਼ੀ ਲੋਕ ਹੈ ਇੰਗਲਿਸ਼ ਜਾਂ ਹਿੰਦੀ ਜਾਂ ਬੋਲ ਸਕਦੇ ਤੇ ਉਹੋ ਜਿਹੇ ਬੰਦਿਆਂ ਨੂੰ ਚਾਹ ਭਰਤੀ ਨਹੀਂ ਕਰ ਸਕਦੇ ਵੀ ਜਿਹੜੀ ਸੰਗਤ ਆਉਂਦੀ ਆ ਉਥੇ ਅਨਾਉਂਸ ਕਰੀ ਜਾਓ ਵੀ ਜਿਹੜੇ ਘਰੋਂ ਨਹੀਂ ਨਾ ਕੇ ਆਏ ਉਹਨਾਂ ਪਹਿਲਾਂ ਨਾ ਕੇ ਆਓ ਪਰ ਇਹ ਪੋਸਟਰ ਤਾਂ ਫੋਟੋਆਂ ਵਾਲਾ ਵੀ ਠੀਕ ਆ ਤੁਹਾਡੀ ਗੱਲ ਵੀ ਕੰਮ ਗਲਤ ਪਰ ਇਹ ਜਿਹੜਾ ਨਾ ਪੋਸਟਰ ਤਾਂ ਸਰੋਵਰ ਕਰਨੀ ਆ ਤੇ ਮੈਨੂੰ ਬਹੁਤ ਬੁਰੀ ਲੱਗਦੀ ਆ ਧੰਨਵਾਦ ਤੁਹਾਡਾ ਜਿਹੜਾ ਸੁਣ ਰਿਹਾ ਹੋਵੇ ਕੋਈ ਅਮਲ ਕਰੇ ਥੈਂਕ ਕਮਲ ਸਿੰਘ ਜੀ ਲਾਈਨ ਨੰਬਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਮੈਂ ਨਾ ਅਡੀਸਟਰ ਜਦ ਅਲੀਸਾ ਕੋਲ ਸਟੇਟ ਆਂਡਿਆ ਦੇ ਵਿੱਚ ਉੱਥੇ ਮੰਦਿਰ ਹੈਗਾ ਵੱਡਾ ਜਗਨਨਾਥ ਪੂਰੀ ਸਾਰੇ ਜਾਣਦੇ ਹਨ ਜੀ ਆ ਨਾ ਕੋਈ ਵੀਡੀਓ ਕੈਮਰਾਜ ਨਾ ਕੋਈ ਸਟੈਲ ਕੈਮਰਾ ਕੋਈ ਤੇ ਇਹ ਆਪਣੇ ਪੈਣੀ ਕੱਪ ਨਹੀਂ ਹੋ ਸਕਦੀ ਉੱਥੇ ਜੋ ਕੋਈ ਦਰਸ਼ਨ ਕਰਨੇ ਕਰੋ ਪਰ ਜਿਹੜੀ ਸਾਡੀ ਗਾਈਡਲਾਈਨਸ ਚੀਜ਼ਾਂ ਅਸੀਂ ਨਹੀਂ ਲਿਜਾਉਣ ਦੇਣੀ ਆ ਦੇਣੀ ਆ ਉੱਥੇ ਤੋਂ ਤੋਂ ਆਪਣੇ ਪਾਡੇ ਘਰੇ ਗੇਤੇ ਸੁਈ ਤੇ ਕਿਸੇ ਦਾ ਨਹੀਂ ਕਿਸੇ ਵੀ ਨਹੀਂ ਲਿਜਾਂਦੇ ਬਿਲਕੁਲ ਜਾਈਨ ਟੂ ਅਪਲੋਡ ਕਰ ਲੋ ਅਵੇਖਿਆ ਯਾ थैंक यू ਫੜੀਸਾ ਦਾ ਬਹੁਤ ਮਸ਼ਹੂਰ ਰੋ ਜਗਨਨਾਥਪੁਰੀ ਮੰਦਿਰ ਹੈ ਗੋਲ ਤੋਂ ਕੋਡ ਆਫ ਜਾਣ ਦਿੰਦੇ ਉਹ ਤਾਂ ਹੁਣ ਤੁਸੀਂ ਪਿਛਲੇ ਸਾਲ ਫਰਵਰੀ ਦੇ ਵਿੱਚ ਉਪਰ ਜਿਹੜਾ ਦਰਵਾਜ਼ਾ ਆਧਿਆ ਕੀ ਆਪੀ ਹੈ ਪੌੜੀਆਂ ਚੱਲ ਜਾਂਦੇ ਉੱਪਰ ਵੀ ਇੱਕ ਛੋਟੀ ਜਿਹੀ ਜਗ੍ਹਾ ਬਣਾ ਕੇ ਉੱਥੇ ਗੁਰੂ ਮਹਾਰਾਜ ਪ੍ਰਕਾਸ਼ ਨੇ ਉਹ ਜਗ੍ਹਾ ਛੋਟੀ ਤੋਂ ਆਲੇ-ਦਾਲੇ ਸਾਡੀ ਛੱਤ ਜਿਹੜੀ ਹੈ ਸ਼ੁਕਰਵਾਦ ਦੇ ਦੀ ਭਰੀ ਹੋਈ ਸੀ ਤੇ ਉੱਥੇ ਪਿਕਚਰਾਂ ਤੇ ਪਿਕਚਰਾਂ ਕੋਈ ਸੈਲਫੀ ਕੋਈ ਇਕੱਠੇ ਖੜਕੇ ਕੋਈ ਵਿੰਗਾ ਖੜਕੇ ਕੋਈ ਟੇਟਾ ਖੜਕੇ ਕੋਈ ਉਹਨਾਂ ਨੂੰ ਪੁੱਛਣ ਵਾਲਾ ਦੇਖੋ ਕਿ ਆਪੇ ਇਹ ਲੀਟ ਕੱਲ ਤਾਂ ਕੀਤੀ ਜਾ ਸਕਦੀ ਕਿ ਦੇਖੋ ਜਿਹੜੇ ਸਟੇਸ਼ਨ ਹੈ ਕਿ లైਫ ਆਈ ਨਾ ਲਾਈ ਜਾਵੇ ਬਿਲਕੁਲ ਹੋ ਸਕਦੀ ਯਸ ਮਹਾਰਾਜ ਦੇ ਦਰਵਾਜ਼ਾ ਸਾਹਿਬ ਦੀ ਤੁਸੀਂ ਦੂਰੋਂ ਫੋਟੋ ਖਿੱਚ ਪਰ ਇਹ ਕੀ ਗੱਲ ਗਿੱਤੇ ਕਿਤੇ ਪਾਣੀ ਜੀ ਤੁਸੀਂ ਮਾੜ ਜੀ ਚੱਕੀ ਪੈਂਟ ਤੇ ਪਾਣੀ ਚ ਖੜ ਗਏ ਤੇ ਉੱਪਰੋਂ ਫੋਟੋਆਂ ਖਿੱਚ ਲਿਆ ਤੇ ਉੱਥੋਂ ਬਾਹਰ ਨਿਕਲੇ ਇਹ ਗੱਲ ਜਿਹੜੀ ਛੋਟੀ ਉਹਨਾਂ ਨੇ ਕਹੀ ਹੈ ਇਹ ਵੇਖਣ ਨੂੰ ਬਸਾਂ ਜਿਹੜੀਆਂ ਬਣੀਆਂ ਬਣਾਈਆਂ ਭਰੀਆਂ ਆ ਰਹੀਆਂ ਨੇ ਪਰ ਉਹ ਆਉਣ ਦੇਖਣ ਸਭੇ ਧਰਮਾਂ ਦਾ ਸਾਂਝਾ ਸਥਾਨ ਹੈ ਉੱਥੇ ਜਿੱਥੇ ਕਿਹਾ ਵੀ ਕੋਈ ਵੀ ਆਜੋ ਪਰ ਉਹਨਾਂ ਨੂੰ ਮਹੱਤਤਾ ਤੋਂ ਦੱਸੀ ਜਾਵੇ ਵੀ ਹੈ ਕਿ ਇਹ ਚਾਰ ਦਿਨਾਂ ਦੇ ਨਾਤਿਆਂ ਲਈ ਨਹਾਉਣ ਲਈ ਸਵੱਛ ਪਾਣੀ ਨਹੀਂ ਹੈ ਇਹ ਉਹ ਜਗ੍ਹਾ ਜਿੱਥੇ ਪਿੰਗਲੇ ਆ ਜਿਹੜੇ ਉਹ ਠੀਕ ਹੁੰਦੇ ਆ ਇਹ ਉਹ ਜਗ੍ਹਾ ਜਿੱਦੇ ਜਿੱਦੇ ਚ ਲਾਉਣ ਲਈ ਸਿੰਘਾਂ ਨੇ 18ਵੀਂ ਸਦੀ ਦੇ ਵਿੱਚ ਇੱਕ ਇਹਦੀ ਚੂਲੀ ਲੈਣ ਲਈ ਗਰਦਣਾ ਜਿਹੜੀਆਂ ਖੰਡਿਆਂ ਦੇ ਮੂਹਰੇ ਕੀਤੀਆਂ ਪੁਰਾਣੇ ਲਿਖਤਕਾਰਾਂ ਨੇ ਲਿਖਿਆ ਕਿ ਨੇਰੀ ਅੰਗੂ ਸਿਰਫ ਤੇ ਸਿਰਫ ਉਸ ਜਗ੍ਹਾ ਦੇ ਉੱਪਰ ਆ ਕੇ ਚੂਲੀ ਲੈਣ ਲੈ ਇਹ ਸਾਡਾ ਸਰੋਵਰ ਹੈ ਸ਼ਹੀਦیاں ਇੱਕ ਇੱਕ ਦੇ ਥਲੇ 100 100 ਸਿਹਰਾ ਉੱਥੇ ਲੋਕ ਉੱਥੇ ਫੋਟੋ ਆ ਖਿਚਣ ਨੂੰ ਕੇ ਆਏ ਜੀ ਮੈਂ ਬਹੁਤ ਦਰੰਦਾ ਸੋਚਦਾ ਸੀ ਕਿ ਜੇ ਇਹਦੇ ਬਾਰੇ ਗੱਲ ਕਰੀਏ ਆ ਹਾਲੇ ਮੈਂ ਦਸੰਬਰ ਦੀ ਬਾਤ ਪਾਇਆ ਜੀ ਉੱਥੋਂ ਜੀ ਸੈਲਫੀ ਵਾਲੀ ਦਾ ਬਿਲਕੁਲ ਠੀਕ ਹੋਵੇ ਬਸ ਪੈਰ ਪੈਰ ਤੇ ਪ੍ਰਸ਼ਾਦ ਦੀ ਵਰਤੀ ਲਈ ਉੱਥੇ ਸੈਲਫੀ ਯੂ ਪ੍ਰਸ਼ਾਦ ਦਿੱਤਾ ਉੱਥੇ ਸਾਰੇ ਜਿਹੜਾ ਸੈਲਫੀਆਂ ਨਾਲ ਸੱਲੇ ਨੂੰ ਗੰਭੀਖੜਿਆ ਨਾ ਜੀ ਤੇ ਬਾਕੀ ਟੂਰਿਸਟ ਅਟਰੈਕਸ਼ਨ ਮੇਰੇ ਹਿਸਾਬ ਨਾਲ ਆਲਰੋਡੀ ਬਣ ਗਿਆ ਹੈ ਜੀ ਸਾਰੇ ਧਰਮਾਂ ਦੇ ਲੋਕ ਉੱਥੇ ਹੁੰਦੇ ਮੇਰਾ خیال ਉਹਨਾਂ ਨੂੰ ਜਿੱਦਾਂ ਤੁਸੀਂ ਪਿਆ ਰਹੇ ਹੋ ਤਾਂ ਕੋਈ ਚਾਹੀਦਾ ਜਿੱਦਾਂ ਕੋਈ ਗਾਈਡ ਸਾਈਟ ਤੇ ਆ ਉਹਨੂੰ ਦੱਸੇ ਬਾਰੇ ਸਾਰਾ ਕੁਝ ਚਲੋ ਇਹ ਤਾਂ ਗੱਲ ਹੈ ਜੀ ਹੈ ਨੰਬਰ 2 ਮੈਂ ਸ਼ਰਧਾ ਦੀ ਗੱਲ ਕਰਦਾ ਜੀ ਜਿਹੜੇ ਉੱਥੇ ਅਜਕਲ ਲੋਕੀ ਨਮਸਟਕ ਹੋ ਕੇ ਆਉਂਦੇ ਮੱਥਾ ਟੇਕਣ ਜਾਂਦੇ ਆ ਤੇ ਤੁਸੀਂ ਨੋਟਿਸ ਕਰੋ ਜੇ ਤੁਸੀਂ ਰੀਸਨਲੀ ਕਿਤੇ ਗਏ ਹੋਵੋਗੇ ਜੀ ਕਿ ਕੀ ਨਾ ਵਾਪਸ ਆਉਂਦੇ ਆ ਮੱਥਾ ਟੇਕੇ ਉਨੇ ਬੰਦੇ ਮੱਥਾ ਦੂਜੇ ਪਾਸੋਂ ਨਹੀਂ ਦੇਖਦੇ ਲਾਈਨ ਚ ਲੱਗ ਕੇ ਜਿੰਨੇ ਬੰਦੇ ਦੂਜੇ ਪਾਸਿਓਂ ਉਧਰੋਂ ਕੇ ਟਿਕ ਜਾਂਦੇ ਆ ਤਾਂ ਉੱਥੇ ਲਾਈਨ ਲੱਗੀ ਕਲਚਰ ਦੀ ਗੱਲ ਕਰਦੇ ਹੋ ਦੇ ਫੋਨ ਆ ਚਲੋ ਸਿਆਣਾ ਤੇ ਤੁਸੀਂ ਉੱਥੋਂ ਜੀ ਮੱਥਾ ਉਹਨੂੰ ਢਕਾ ਦਿਓ ਕੋਈ ਗੱਲ ਨਹੀਂ ਇੱਧਰ ਰਸ਼ ਕਾਫੀ ਆ ਜਿਹੜੇ ਚੰਗੇ ਭਲੇ ਗੋਗਣ ਕੱਢਿਆ ਜੀ ਫੋਨ ਆਛ ਫੜਿਓ ਗੱਲਾਂ ਕਰਦੇ ਹੋ ਦਰਵਾਜ਼ੇ ਤੱਕ ਅੰਦਰ ਤੱਕ ਜਾਂਦੇ ਆ ਉਹਨਾਂ ਨੂੰ ਬੰਦੇ ਨੂੰ ਕੀ ਤਕਲੀਫ ਹੋਆ ਜਾਂ ਕੁਛ ਐ ਹੋਜੀ ਹੈ ਜਿਹਦੇ ਉਹ ਲਾਈਨ 'ਤੇ ਖੜ੍ਹ ਸਕਦੇ ਬਾਕੀ ਲੋਕਾਂ ਨੂੰ ਜਜਦੀਮ ਕਰੋ ਜੀ ਉਹਨਾਂ ਦੀ ਸ਼ਾਂਤੀ ਇੰਨੀ ਕਪਨ ਹੁੰਦੀ ਆ ਬੰਦੇ ਦੇਖ ਰਿਹਾ ਸਾਡੀ ਲਾਈਨ ਤਾਂ ਤੁਰਪੀ ਕੋਈ ਹੈ ਨਹੀਂ ਤੇ ਇਧਰ ਲਾਈਨ ਦੀ ਲਾਈਨ ਬੰਨੀ ਦਾੜ ਦੀ ਦਾਲਾ ਤੋਂ ਟੇਕ ਕੇ ਮੈਂ ਸਾਡੇ ਇੱਥੇ ਵਾਫੇ ਦੇ ਆਉਂਦੇ ਆ ਤੇ ਦੂਜੇ ਬੰਦੇ ਨੂੰ ਇਹ ਮਹਿਸੂਸ ਹੁੰਦਾ ਪਿਆ ਜੀ ਜਿਦਾ ਖੜੇ ਆ ਖੜੇ ਆ ਇਹ ਤਾਂ ਹੈਗੀ ਜੀ ਸ਼ਰਦਾ ਦੀ ਗੱਲ ਨੰਬਰ ਦਾ ਸਾਹ ਦੇ ਹਰੀ ਲਾਈਨ ਤੇ ਖੜੇ ਸੀਗੇ ਉਹਨੂੰ ਸੇਵਾਦਾਰ ਆ ਉਹ ਕਹਿੰਦਾ ਤੈਨੂੰ ਇਹ ਤੇ ਕੀ ਕਹਿੰਦਾ ਤੂੰ ਆਪਣੇ ਕਹਿੰਦਾ ਮਤ ਮਤਲਬ ਗੱਲ ਨਾ ਮਤ ਉਹਨਾਂ ਨੂੰ ਸੁਣੀ ਜਿਹੜੇ ਉਹ ਬੰਦੇ ਹਜੇ ਉਹਨਾਂ ਨੂੰ ਵੀ ਇਹੋ ਜਿਹੀ ਨਾ ਕਿਸੇ ਦੀ ਗੱਲ ਸੁਣਦੇ ਨਾ ਰਿਸਪੈਕਟ ਜੀ ਕਰਦੇ ਨਾ ਉਹ ਕਰਾਉਂਦੇ ਤੇ ਫਿਰ ਉਹ ਵਰਸ ਸਿਰਫ ਇਦਾਂ ਦੇ ਫੋਨ ਆਈ ਜਾਂਦੇ ਆ ਜੀ ਤੇ ਹੁਣ ਸੈਕੰਡ ਤੁਹਾਨੂੰ ਮੈਂ ਦੱਸਦਾ ਜੀ ਉਥੋਂ ਨਿਕਲ ਕੇ ਬਾਹਰ ਜਿਹੜੀ ਉਹਦੀ ਪਾਰਕਿੰਗ ਲੋਟ ਆ ਉੱਥੇ ਆਪਣੇ ਕੋਈ ਇੱਕ ਟੂਰਿਸਟ ਬੰਦੇ ਆਏ ਹੋ ਸੀ ਜੀ ਸਰਦਾਰ ਸਿੰਘ ਬੰਦੇ ਉਹਨਾਂ ਦਾ ਰੌਲਾ ਪੈ ਗਿਆ ਜੀ ਜਿਹੜੇ ਉਹ ਹੈਗੇ ਆ ਪਾਰਕਿੰਗ ਲੋਟ ਵਾਲੇ ਉਹ ਕਹਿੰਦੇ ਜੀ ਤੁਹਾਨੂੰ 10 ਮਿੰਟ ਉੱਪਰ ਹੋ ਗਏ ਆ ਤੇ ਤੁਹਾਨੂੰ ਇੰਨੇ ਪੈਸੇ ਹੋਰ ਦੇਣੇ ਪੈਣੇ ਆ ਉਹ ਕਹਿੰਦੇ ਜੀ ਅਸੀਂ ਦੇਣੇ ਹੀ ਅੱਛਾ ਜੀ ਉਸ ਬੰਦੇ ਆ ਉਹਨਾਂ ਬੰਦਿਆਂ ਨੇ ਜੀ ਗੈਸਪਲ ਦੀ ਜਕੀ ਨਿਕਲਦਾ ਡੇਢ ਘੰਟਾ ਉਹ ਘੜਮਸ ਪਾਇਆ ਜੀ ਉਹ ਖੜਾ ਵੀ ਕਿੱਥੇ ਸੀਗਾ ਜਿਵੇਂ ਜਿੱਥੇ ਸਾਰੀਆਂ ਖਾਰਾਂ ਪਿਛੇ ਲਾਈਨ ਲੱਗੀ ਬੁਰਾ ਉਸੇ ਹਾਲ ਹੋਇਆ ਅਖੀਰ ਦੇ ਵਿੱਚ ਮੈਂ ਉੱਤਰ ਕੇ ਉਹਨਾਂ ਮੈਂ ਕਿਹਾ ਭਾਈ ਸਾਹਿਬ ਇਹਦੇ ਪੈਸੇ ਕਿੰਨੇ ਬਣਦੇ ਆ ਕਹਿੰਦਾ ਇੰਨੇ ਬਣਦੇ ਮੈਂ ਯਾਰ ਤੂੰ ਮੇਰੇ ਕੋ ਪੈਸੇ ਲੈ ਲਾ ਮੈਂ ਪੈਸੇ ਉਹਨੂੰ ਦਿੱਤੇ ਜੀ ਉਹ ਬੰਦੇ ਉਸ ਤੋਰੇ ਇਹੋ ਜਿਹੇ ਲੋਕੀ ਜਿਹਨੇ ਮੱਥਾ ਟੇਕ ਮੈਂ ਇਹ ਨਹੀਂ ਕਹਿੰਦਾ ਸਾਰੇ ਬੰਦੇ ਇਦਾਂ ਦੇ ਹੀ ਹੋਣਗੇ ਇਹੋ ਜੀ ਸ਼ਰਦਲ ਕੋਈ ਸਾਡੇ ਕੋ ਆਉਂਦਾ ਜੀ ਮੇਰੀ ਤਾਂ ਫਲਾਈਟ ਲੇਟ ਹੋ ਗਈ ਮੈਂ ਫਲਾਈਟ ਫੜ ਨਹੀਂ ਮੈਨੂੰ ਇੱਥੇ ਜਾਣਦੇ ਹੋ ਹੁਣ ਜੇ ਫਲਾਈਟ ਵਾਲੀ ਰੱਬ ਜਾਣੇ ਤੇ ਜਿਹੜੇ ਬੰਦੇ ਨੇ ਹੁਣ ਫਲਾਈਟ ਦੇ ਉਹਨਾਂ ਨੇ ਕਦੇ ਜਾਣ ਲੱਗੇ ਸਰਪੇ ਇਹ ਫਾਰਮ ਨਾਲ ਮੱਥਾ ਟੇਕੀਏ ਥੋੜੇ ਅਰਲੀ ਤਰਫ ਹੋਕਰ ਹ ਇਹ ਕਿਹੜੀ ਸਰਦਾ ਹੋਈ ਮੈਨੂੰ ਸਮਝ ਨਹੀਂ ਲੱਗਦੀ ਇਸ ਗੱਲ ਇਹ ਉਹਨਾਂ ਨੂੰ ਕਾਫੀ ਮੇਰੇ ਸਾਹਦੇ ਸਿਰ ਪ੍ਰੋਪਰ ਟਾਕ ਚ ਸਿੰਘ ਜੀ ਲਾਈਨ ਨੰਬਰ 5 ਇਹ ਜਹੇਦਾਰੇ ਸਿਕਿਉਰਿਟੀ ਦੀ ਗੱਲ ਕੀਤੀ ਆ ਇਹ ਉਹ ਜਹੇਦਾਰ ਆ ਜਿਹੜਾ ਲੋਕਾਂ ਨੂੰ ਸੇਫ ਰੱਖੇ ਤੈਨੂੰ ਮੈਨੂੰ ਤੇ ਸੇਫ ਇਹ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੌਤ ਤੇ ਇਹਨਾਂ ਨੂੰ ਚਾਹੀਦਾ ਕੈਮਰੇ ਅੰਦਰ ਫੋਨ ਹੀ ਬੰਦ ਕਰਨੇ ਚਾਹੀਦੇ ਜਿਵੇਂ ਗੁਰੂ ਦਰਬਾਰ ਸਾਹਿਬ ਦੇ ਅੰਦਰ ਜਾਣਾ ਆ ਫੋਨ ਆਪਣੇ ਕੱਟੜਾ ਚ ਰੱਖ ਕੇ ਅੰਦਰ ਫੋਨ ਜਾਣਾ ਨਹੀਂ ਜਾਏਗਾ ਜੁਦਾ ਆਪਣੇ ਅਜੇ ਨਹਾਉਣ ਦਾ ਕੰਮ ਕਰਦੇ ਹੁਣ ਕਿਹੜਾ 80 ਮੀਟਰ ਕੋਲਾ ਕੇ ਦੇਖੇ ਵੀ ਇਹ ਬੰਦਾ ਚਾਰ ਦਿੰਦਾ ਨਾਤਾ ਆਇਆ ਕਿ ਖੇ ਦੇ ਦਾ ਸਿਰਫ ਰੈਵਨਿਊ ਕੱਠਾ ਕਰਨਾ ਮਰਜੀ ਕਰੀ ਜਾਓ ਤੁਸੀਂ ਪੈਸੇ ਚੱਲਣਾ ਧੰਨਵਾਦ ਜੀ ਸੰਦੇਸ਼ ਤੇ ਵਾਪਸ ਕਾਬਲੇ ਗੌਰ ਹੈ ਕਿ ਜਿੰਨੇ ਵੀ ਆਉਣ ਲੋਕ ਦਰਸ਼ਨ ਕਰਨ ਆਉਣ ਕੋਈ ਪ੍ਰੋਬਲਮ ਨਹੀਂ ਪਰ ਉੱਥੇ ਕੋਡ ਆਫ ਕੰਡਕਟ ਜਿਹੜਾ ਲਾਗੂ ਕੀਤਾ ਜਾਵੇ ਫੋਨ ਹੈ ਜਿਹੜੇ ਉਹਨਾਂ ਦੀ ਵਰਤੋਂ ਬੰਦ ਕੀਤੀ ਜਾਵੇ ਇਸ਼ਨਾਨ ਕਰਨ ਦੇ ਅਸੂਲ ਦੱਸੇ ਜਾਣ ਤੇ ਇਕੱਠ ਬਹੁਤ ਹੁੰਦਾ ਹੈ ਗੱਲ ਠੀਕ ਹੈ ਦਮੜਾ ਤਾਂ ਗਿਰਦਾ ਹੈ ਉਹਦੇ ਵਿੱਚ ਤੁਸੀਂ ਉਹਨਾਂ ਨੂੰ ਦੱਸਿਆ ਜਾਵੇ ਕੋਈ ਸਮਝਾਇਆ ਜਾਵੇ ਜਗ੍ਹਾ ਕੀ ਹੈ ਕਿਉਂਕਿ ਕੋਈ ਖੜਦਾ ਨਹੀਂ ਕੋਈ ਇਤਿਹਾਸ ਨਹੀਂ ਪੜਦਾ ਹੇੜੇ ਹੇੜੇ ਹੇੜੇ ਹੁੰਦੀ ਆ ਉੱਥੇ ਕੋਈ ਸ਼ਰਦਾ ਨਾਲ ਨੀ ਡਰਦੇ ਨੀ ਲੋਕ ਹੋਰ ਕੁਝ ਮਾਹੌਲ ਹੋ ਰਿਹਾ ਜਿਹੜੇ ਹੁਣ ਵੀ ਇਸ ਵਾਰ ਵੀ ਦਰਸ਼ਨ ਕਰਕੇ ਸਾਰੇ ਇੱਕ ਨਹੀਂ ਮੈਸੇਜ ਨੇ ਸਾਰੇ ਸੇਮ ਗੱਲ ਕਰ ਰਹੇ ਠੀਕ ਹੈ ਟੈਕਨੋਲੋਜੀ ਆ ਗਈ 10 ਸਾਲ ਪਹਿਲਾਂ ਇਹ ਸੈਲਫੀਆਂ ਤੇ ਫੋਨ ਨਹੀਂ ਸੀ ਉਹ ਚੀਜ਼ਾਂ ਹੋ ਗਈਆਂ ਪਰ ਉਹਨਾਂ ਨੂੰ ਵਰਤੋਂ ਦੇ ਵਿੱਚ ਉੱਥੇ ਨਾ ਉੱਥੇ ਮਨਾ ਕੀਤਾ ਜਾਵੇ ਉਹ ਜਿਹੜੇ ਵਰਸ਼ਿਆਂ ਖੜੇ ਨੇ ਉਹ ਮੋੜ ਤੇ ਡਾਲ ਗਵਲੀ ਲਾਈਨ ਚ ਉਹਨੂੰ ਘੋਣ ਕੋ ਹੋਰ ਉਹ ਕੁਛ ਕਰਨ ਲਈ ਨੇ ਜਾਂ ਅੰਦਰ ਵਕੀਨੇ ਵੀਆਈਪੀ ਕਾਰਨਰ 'ਚ ਬਹਿਣਾ ਤੁਸੀਂ ਪਿੱਛੇ ਹੋ ਜੋ ਤੁਸੀਂ ਅੱਗੇ ਹੋ ਜੋ ਉੱਥੇ ਮਿੰਤਾਂ ਕਰਦੇ ਨੇ ਲੋਕ ਬੜਾ ਚੱਕਰ ਤੇ ਕੈਮਰਾ ਮੂਹਰੇ ਲੱਗਿਆ ਤੇ ਲੋਕ ਕੈਮਰਿਆਂ ਵੱਲ ਨੂੰ ਵੇਖੀ ਜਾਂਦੇ ਨੇ ਹੋਰੇ ਕੁਛ ਜਿਹੜਾ ਉਹ ਸਿਸਟਮ ਹੋਇਆ ਹੋਇਆ ਉਹ ਠੀਕ ਕਰਨ ਵਾਲਾ ਜਿਹਨੂੰ ਨਹੀਂ ਪਤਾ ਉਹਦੀ ਗਲਤੀ ਨਹੀਂ ਹੈ ਦੱਸੋ ਉਸ ਨੂੰ ਵੀ ਮਰਿਆਦਾ ਕੀ ਹੈ ਇਸ ਜਗ੍ਹਾ ਦੀ ਜਗ੍ਹਾ ਕੀ ਹੈ ਵਰਚਨ ਸਿੰਘ ਜੀ ਲਾਈਨ ਨੰਬਰ 2 ਬਸ਼ਪਿੰਦਰ ਸਿੰਘ ਜੀ ਲਾਈਨ ਨੰਬਰ 3 ਹਰਮਿੰਦਰ ਸਿੰਘ ਜੀ ਲਾਈਨ ਨੰਬਰ 4 ਭਾਜੀ ਸਤਿ ਸ਼੍ਰੀ ਅਕਾਲ ਜੀ ਇਹ ਜਦਾਂ ਭਾਜੀ ਤੁਸੀਂ ਬਾਠਿਆਂ ਵਾਲਿਆਂ ਦੀ ਗੱਲ ਕੀਤੀ ਹੈ ਨਾ ਮੇਰੇ ਮੂੰਹੋਂ ਹੱਥ ਆ ਨਿਕਲ ਗਿਆ ਜਿਹੜਾ ਬੰਦਾ ਹੁੰਦਾ ਮਾਰਾ ਉਹਨੂੰ ਤਾਂ ੱਟਕੇ ਦੇ ਦੇਗੇ ਸਾਹਿਬ ਵਿੱਚ ਪਰ ਇਹਨੂੰ ਕਰਦੇ ਆ ਵੀ ਪਰੇ ਹੋ ਜਾ ਬੰਦਾ ਵੀ ਹੋਵੇ ਜਿਹੜਾ ਧਾਰੇ ਵਾਲਾ ਖਰਾਜ ਆ ਉਹਨੂੰ ਕਹਿਣਗੇ ਵੀ ਅੰਦਰ ਬਹਿ ਜਾ ਹਨਾ ਜਿੱਦਾਂ ਬਾਜੀ ਤੁਸੀਂ ਗੱਲ ਕਰਦੇ ਮੈਂ ਥੋੜਾ ਸਿਸਟਮ ਠੀਕ ਹੋਣ ਵਾਲਾ ਨਾ ਜਿੱਦਾਂ ਤੁਹਾਡਾ ਕੱਲ ਟਾਕ ਚੋਂ ਜਾਂਦਾ ਸੀਗਾ ਜਿੰਨਾ ਚਿਰ ਕੋਈ ਲੰਮੀਆਂ ਬਹਾਂ ਵਾਲੇ ਆਪਣੇ ਮਾਹ ਪੋਤਸੇ ਆਉਂਦੇ ਉਹਨਾਂ ਚਿਰ ਸਿਸਟਮ ਨਹੀਂ ਬਾਜੀ ਠੀਕ ਹੋਣਾ ਜਿੰਨਾ ਚਿਰ ਉੱਥੇ ਮਾਹ ਵਾਲੇ ਬਹਾਂ ਵਾਲੇ ਰਹੇ ਆ ਇਹ ਡਰਦੇ ਆ ਜਿਹੜੇ ਸਾਰੇ ਸਾਡੇ ਪੰਜੇ ਸਿੰਘ ਸਵਾਰ ਆ ਇਹ ਤਾਂ ਵੱਡਿਆ ਟਡਾਲਿਆ ਕੋਈ ਡਰਦੇ ਆ ਇਹ ਕੋਈ ਬੋਲ ਨਹੀਂ ਸਕਦੇ ਕੋਈ ਹੁਕਮਨਾਮਾ ਨਹੀਂ ਜਾਰੀ ਕਰ ਸਕਦੇ ਆਪਣੀ ਮਾਦੀ ਤੋਂ ਬਣਾ ਇਹ ਉਹਨਾਂ ਚਿਰ ਨਹੀਂ ਬਾਜੀ ਹੋਣਾ ਸਿਸਟਮ ਥੀ ਟਕਵਾਰੀ ਜੇ ਬਾਂਹ ਕੋਪੀ ਰੋਟੀ ਸਿੰਘ ਜੀ ਲਾਈਨ ਨੰਬਰ 5 ਓਕੇ ਰੋਟੀ ਸਿੰਘ ਜੀ ਹਾਂਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਖਾਲਸਾ ਜੀ ਹਾਂਜੀ ਭਾਈ ਸਾਹਿਬ ਬੇਨਤੀ ਐਦਾ ਸੀ ਕਿ ਇਹ ਤੁਸੀਂ ਬਹੁਤ ਸੋਹਣਾ ਵਿਸ਼ਾ ਲੈ ਕੇ ਆਏ ਮੈਂ ਸਪੈਸ਼ਲ ਟਰੱਕ ਖਿਲਾ ਰਿਆ ਕਿ ਗੱਲ ਫੋਨ ਕੱਟ ਹੋ ਜਾਣਾ ਸੋ ਮੈਂ ਬੇਨਤੀ ਕਰਨੀ ਹੈ ਕਿ ਜਿਹੜੇ ਮਹਾਰਾਸ਼ਟਰ ਵੱਲੋਂ ਆਉਂਦੇ ਆ ਮੈਂ 2 2.5 ਦੇਖਿਆ ਆ ਜਾਂ ਕਿਹੜੇ ਵੀ ਸਰਬਦਾ ਸਾਰਿਆਂ ਦਾ ਸਾਂਝਾ ਦਰਬਾਰ ਸਾਹਿਬ ਹਨਾ ਜੀ ਹੌਣ ਜੀ ਆਏ ਹਣ ਪਰ ਉਹਨਾਂ ਨੂੰ ਜਿੱਦਾਂ ਆਪਣਾ ਤਾਜਮਹਾਲ ਦਾ ਆਪਾਂ ਜਾਣਦੇ ਆ ਉੱਥੇ ਉਹ ਸਪੈਸ਼ਲ ਉਹਨਾਂ ਨੇ हायर ਕੀਤੇ ਆ ਜੇ ਆਪਾਂ ਉਹਨਾਂ ਨੂੰ 10 20 50 ਰੁਪਏ ਦੇਣੇ ਆ ਉਹ ਫਿਰ ਉੱਥੋਂ ਦੇ ਦੱਸਦੇ ਆ ਸਾਰੀ ਕਿ ਸ੍ਰੀ ਮਾਰੇ ਕਿੱਦਾਂ ਕੀਆ ਕਿੱਦਾਂ ਕੀ ਹਣਾ ਜੀ ਇੰਦਾ ਜਿਹੜਾ 11 ਅਰਬ ਕੀ ਕਰੋੜ ਦਾ ਜਿਹੜਾ ਬਜਟ ਹੈ ਕਹਿੰਦੇ ਆ ਦਰਬਾਰ ਵਾਲੇ ਆ ਜਾਂ ਤਾਮਿਲਨਾਡੂ ਵਾਲੇ ਉਹ ਸਾਰੇ ਬਸਾਂ ਪਰ ਪਰ ਆਉਂਦੇ ਆ ਉਹਨਾਂ ਦੇ ਵਾਸਤੇ ਸਪੈਸ਼ਲ ਬੰਦੇ ਹਾਇਰ ਕੀਤੇ ਜਾਣ ਜਦੋਂ ਬਸ ਇੱਥੇ ਆਵੇ ਉਹ ਦੇ ਗਰੁੱਪ ਆਉਂਦੇ ਉਹਨਾਂ ਉਹ ਜਦੋਂ ਉਹ ਇਕੱਠੇ ਦੇ ਇਕੱਠੇ ਆਉਣ ਉੱਥੇ ਤੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਸਮਝਾਇਆ ਜਾਵੇ ਕਿ ਭਾਈ ਕਿ ਤੁਸੀਂ ਜਿਹੜਾ ਪਹਿਲੀ ਗੱਲ ਤੇ ਆਪਾਂ ਕਹਿੰਦੇ ਦਰਬਾਰ ਸਾਹਿਬ ਨਸ਼ਾ ਮੁਕਤ ਕਰੀਏ ਨਸ਼ਾ ਮੁਕਤ ਕਿੱਦਾਂ ਹੋਊਗਾ ਉਹ ਜੇਬਾਂ 'ਚ ਤੇ ਦੇ ਤੰਬਾਕੂ ਤੇ ਬੀੜੀਆਂ ਹੁੰਦੀਆਂ ਉਹ ਹੀ ਚੱਲ ਜਾਂਦੇ ਆ ਠੀਕ ਹੈ ਜੀ ਆਪਾਂ ਜਿਹੜੇ ਉਹਨੇ ਬਰਸ਼ਾਂ ਦੇ ਆ ਉਹ ਜਾਂ ਪੰਜਾਬੀ ਬੋਲ ਲੈਣਗੇ ਜਾਂ ਹਿੰਦੀ ਬੋਲ ਲੈਣਗੇ ਠੀਕ ਹੈ ਜੀ ਤੇ ਜਾਂ ਫਿਰ ਇੰਗਲਿਸ਼ ਬੋਲ ਲੈਣਗੇ ਜਿਹੜੀ ਉਹਨਾਂ ਦੀ ਭਾਸ਼ਾ ਉਹ ਕੌਣ ਬੋਲੂਗਾ ਉਹ ਜਿਹੜਾ ਇੰਨਾ ਪੈਸਾ ਉਹਨਾਂ ਵਾਸਤੇ 5 7 10 15 ਬੰਦੇ ਹਾਇਰ ਕੀਤੇ ਹੋਣਗੇ ਭਾਈ ਜਦੋਂ ਆਉਣ ਉਹਨਾਂ ਦੀਆਂ ਬੱਸਾਂ ਦੀਆਂ ਛਕਾਉਣਾ ਕਿਸੇ ਨੂੰ ਇਹਨਾਂ ਨੇ ਗਲਿਆਰੇ ਦੇ ਵਿੱਚ ਉੱਥੇ ਖਿਲਾੜ ਕੇ ਜਿਹੜੇ 10 ਦਾ 20 ਦੀ 50 50 100 100 ਬੰਦਾ ਹੁੰਦਾ ਉਹਨਾਂ ਨੂੰ ਦੱਸਣ ਕਿ ਭਾਈ ਇੱਥੋਂ ਦੀ ਮਰਿਆਦਾ ਇਹ ਹੈ ਇੱਥੇ ਆਪਾਂ ਨਸ਼ਾ ਨਹੀਂ ਲੈ ਕੇ ਜਾ ਸਕਦੇ ਨਸ਼ਾ ਤੁਸੀਂ ਆਪਣੀਆਂ ਗੱਡੀਆਂ ਚ ਰਹਿ ਕੇ ਆਓ ਯਾਓ ਇੱਥੇ ਛੋਟੀਆਂ-ਛੋਟੀਆਂ ਕੋਈ ਬਾਰੀਆਂ ਬਣਾ ਦਿੱਤੀਆਂ ਜਾਂਦੀਆਂ ਜਾਣ ਕੇ ਹਾਂ ਬਾਈ ਇੱਥੇ ਇੱਕ ਸਾਧ ਜਮ੍ਹਾਂ ਕਰ ਦਿਓ ਸਮਾਨ ਆਪਦਾ ਟੋਕਣ ਲੈ ਲਓ ਆ ਕੇ ਵਾਪਸ ਦਰਬਾਰ ਸਾਹਿਬ ਤੋਂ ਹੋ ਜਾਓਗੇ ਤੇ ਉਦੋਂ ਤੁਸੀਂ ਇੱਥੇ ਆ ਕੇ ਆਪਣਾ ਸਮਾਨ ਲੈ ਲਓ ਨੰਬਰ ਨੰਬਰ 2 ਉੱਥੇ ਮੈਂ ਇਸ਼ਨਾਨ ਕਰਨ ਵਾਲਿਆਂ ਦੀ ਬੜੀ ਫਨੀ ਜੀ ਗੱਲ ਮੈਂ ਤੁਹਾਨੂੰ ਦੱਸਾਂ ਜਿਹੜਾ ਪਰਣਾ ਉਹਨਾਂ ਨੇ ਇਸ਼ਨਾਨ ਕਰਨ ਤੋਂ ਬਾਅਦ ਆਪਣਾ ਵਰਤਦੇ ਆ ਉਹੀ ਪਰਣਾ ਸਿਰ ਤੇ ਲਪੇਟ ਕੇ ਗਿੱਲਾ ਅੱਦਾ ਕੀ ਉਦਾਂ ਹੀ ਗਿੱਲਾ ਹੁੰਦਾ ਅੱਦਾ ਕੀ ਸੁੱਕਾ ਉਦਾਂ ਹੀ ਹੁੰਦਾ ਜਾਂਦੇ ਆ ਮੱਥਾ ਟੇਕਣ ਉਹੀ ਸਿਰ ਤੇ ਬੰਨ ਲੈਂਦੇ ਕੋਈ ਸਪੈਸ਼ਲ ਰਮਾਲ ਨਹੀਂ ਉਥੇ ਬੰਨਦੇ ਜਿਹੜਾ ਪਰਨਾ ਉਹਨਾਂ ਨੇ ਆਪਣਾ ਇਸ਼ਨਾਨ ਕਰਨ ਤੋਂ ਬਾਅਦ ਕਿਰਿਆ ਆ ਪਰਨਾ ਲਪੇਟ ਕੇ ਉਹੀ ਪਰਨਾ ਦੇ ਜਿਹੜੇ ਦਰਬਾਰ ਸੈਟਲ ਦੇ ਮੈਂਬਰ ਆਉਣ ਆ ਜਾਂ ਹੋਰ ਕੋਈ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਦੱਸਿਆ ਜਾਵੇ ਥੋੜਾ ਬਹੁਤ ਵੀ ਭਾਈ ਤੁਸੀਂ ਉਥੇ ਜਿਹੜੇ ਭਾਸ਼ੀਏ ਜਿਹੜੇ ਹੈਗੇ ਆ ਜਿਹੜੇ ਉਹਨਾਂ ਦੀ ਬੋਲੀ ਦੇ ਵਿੱਚ ਬੋਲਣ ਵਾਲੇ ਉਹ ਹਾਇਰ ਕਰਕੇ ਤੇ ਉਹਨਾਂ ਨੂੰ ਸਮਝਾਓ ਕਿ ਭਾਈ ਇੱਥੇ ਉਹਦਾ ਲੈ ਕੇ ਤੇ ਆ ਜਿਹੜੇ ਆਪਣੇ ਕਾਰ ਸੇਵਾ ਵਾਲੇ ਆ ਦੀ ਯਾਦਗਾਰ ਬਣਾਈ ਫਿਰ ਨਵੇਂ ਪਾਸ਼ਾ ਦਾ ਸਥਾਨ ਫਿਰ ਬਾਬਾ ਟਾਲਰ ਆਏ ਵੱਲ ਨੂੰ ਹੋ ਤਰੇ ਹੁਣ। ਸੋ ਬੇਨਤੀ ਇਹ ਹੈ ਮਹਿੰਗਾ ਸੰਗ ਮਾਰ ਮਰ ਲਿਆ ਉੱਥੇ ਆਉਣ ਦੇ ਆ 1000 ਦਾ ਸਾਰੀ ਪਾਸ਼ਾ ਦੇ ਵਿੱਚ 1000 ਰੁਪਏ ਦਾ ਇੰਡੀਆ ਦੇ ਸਾਰਾ ਇੱਕ ਬੋਰਡ ਦੇ ਵਿੱਚ ਸਾਰੀ ਭਾਸ਼ਾ ਇੰਡੀਆ ਦੇ ਨੋਟਾਂ ਤੇ ਕਿੰਨੀਆਂ 13 ਲਿਖੀਆਂ ਭਾਸ਼ਾਵਾਂ ਦੇ ਵਿੱਚ ਲਿਖਿਆ ਜਾਵੇ ਤੇ ਭਾਈਆਂ ਨੂੰ ਤੇ ਉਹ ਫੈਡ ਜੀ ਤੇ ਹੁੰਦਾ ਜੀ ਬਿਲਕੁਲ ਉਹ ਉੱਥੇ ਬਿਲਕੁਲ ਚਰਨ ਗੰਗਾ ਤੇ ਬਿਲਕੁਲ ਮੂਹਰੇ ਕਰਕੇ ਲਾਇਆ ਜਾਵੇ ਮੱਥੇ ਤੇ ਵੱਜੇ ਅਗਲੇ ਜਾਂਦੇ ਆ ਭਾਈ ਅੰਦਰ ਨਿਸ਼ਾਨੀ ਸਕਦੇ ਪਹਿਲੋਂ ਪੰਜਾਬੀ ਫਿਰ ਇੰਗਲਿਸ਼ ਹਿੰਦੀ ਜੋ ਜਿੰਨੀਆਂ ਵੀ ਜਿੱਦਾਂ ਵੀ ਉਹਨਾਂ ਦੀਆਂ ਭਾਸ਼ਾਵਾਂ ਆ ਇੰਡੀਆ ਦੇ ਨੋਟਾਂ ਤੇ ਕਿਦਾਂ ਸਾਰਿਆਂ ਉੱਥੇ ਲਿਖੀਆਂ ਜਾਣਗੀਆਂ ਭਾਈ ਲੈ ਕੇ ਜਾ ਸਕਦੇ ਕੋਈ ਥੋੜਾ ਬਹੁਤ ਜਿੱਦਾਂ ਯਾਦਗਾਰ ਵਾਸਤੇ ਸਾਰਿਆਂ ਨੇ ਅਸੀਂ ਵੀ ਜਾਣਦੇ ਆ ਅਸੀਂ ਵੀ ਕੈਮਰੇ ਸਾਡੇ ਹੱਥਾਂ 'ਚ ਹੁੰਦੇ ਯਾਦਗਾਰ ਵਾਸਤੇ ਕਰਦੇ ਆ ਪਰ ਉਹ ਜੋ ਜਿਹੜੇ ਨਵੇਂ ਤੋਂ ਨਵੇਂ ਸੰਨ ਜਾ ਕੱਬੇ ਜਿੱਦਾਂ ਤੁਸੀਂ ਕਹਿੰਦੇ ਪੈਰ ਸਰੂਵਰ ਦੇ ਵਿੱਚ ਇੱਕ ਪੈਰ ਸਰੂਵਰ ਤੇ ਇੱਕ ਪੈਰ ਬਾਹਰ ਲੱખ્યા ਹੁੰਦਾ ਉੱਦਾਂ ਫੋਟੋਆਂ ਖਿਚਾ ਲੀਆਂ ਜਾਂ ਉੱਤੇ ਜਾ ਕੇ ਤੀਜੀ ਫਲੋਰ ਤੇ ਦਰਬਾਰ ਸਾਹਿਬ ਦੇ ਜਿਹੜੇ ਉੱਥੇ ਵੇਖਣ ਵਾਲੇ ਉਹਨਾਂ ਦਾ ਹੀ ਜਦਾਂ ਫਿਰ ਸ਼ਾਂਤੀ ਭੰਗ ਹੋ ਜਾਂਦੀ ਆ। ਤੋਂ ਬੇਨਤੀ ਲੈ ਕੇ ਜਾਇਆ ਜਾਵੇ ਏਰ ਤੇ ਫਿਰ ਵਾਹਿਗੁਰੂ ਕਿਰਪਾ ਕਰੇ ਇਹਨਾਂ ਦੀ ਮਾਤ ਥੋੜੀ ਸਿੱਧੀ ਹੋਵੇ। ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਸਿੰਘ ਜੀ। laljot singh di line number 2 hanje pheer ji singh ji aap da sarotan satkar sar sat sri akal dhanwad sabadean da dekho pichle paichsa guni bahut kuch cover kar gaye dekho ke main utthon vi sun reya se ke sundri karan de naam teh jdi ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਪਤਾ ਨਹੀਂ ਲੱਗੂਗਾ ਕਿ ਗੁਰੂ ਰਾਮਦਾਸ ਜੀ ਚੱਕ ਗੁਰੂ ਰਾਮਦਾਸ ਨੇ ਕਿਸ ਤਰ੍ਹਾਂ ਚੱਕੀਆਂ ਦੇ ਨਾਲ ਜਨਾਬੀ ਕੇ ਆਹ ਛੋਟੀਆਂ ਇੱਟਾਂ ਦਾ ਬਣਾਇਆ ਹੋਇਆ ਉਹਦਾ ਨਾਮੋ ਨਿਸ਼ਾਨ ਕਿਹਾ ਤੇ ਹੁਣ ਦੀ ਪੀੜ੍ਹੀ ਨਹੀਂ ਦੇਖਣਾ ਕਿ ਨਵਾ ਦੂਸਰਾ ਉਹਦੀ ਮਰਿਆਦਾ ਔਰ ਇਹ ਅਸੀਂ ਦੂਜੇ ਲੋਕਾਂ ਨੂੰ ਵੀ ਸਮਝਾਉਣਾ ਔਰ ਜਿਹੜੇ ਸਾਡੇ ਮੰਤਰੀ ਸੰਤਰੀ ਧੜਾ ਲੈ ਕੇ ਜਾਂਦੇ ਆ ਆਮ ਸੰਗਤ ਜਿਹੜੀ ਗੁਰਨਾਨਕ ਨਾਮ ਲੈਵਾ ਗੁਰਸਿੱਖ ਮਾਚੀ ਭਾਈਆ ਕਦੋਂ ਉਪਦੇਵਿਚ ਵਾਲੇ ਖੜੇ ਰਹਿੰਦੇ ਆ ਇਹਨਾਂ ਨੂੰ ਵੀਆਈਪੀ ਦੇ ਵਿੱਚ ਦੇ ਨਿਗਾਹ ਕੇ ਸ਼ਾਨੋ ਸ਼ੌਕਤ ਦੇ ਨਾਲ ਇਹ ਅੰਨਾਂ ਦੇ ਨਾਲ ਮੱਥਾ ਟੇਕਦੇ ਦੂਜੀ ਸੰਗਤ ਨੂੰ ਮੂੰਹ ਹਲ ਝਾਕਦੇ ਆ ਹੁਣ ਜਿੱਥੇ ਮੈਂ ਅਕਬਰਾਵਲ ਦੇਖਾ ਦੂਸਰੇ ਹਵਾਲ ਦੇਖਾ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਸੰਗਤ ਵਾਂਗੂ ਟ੍ਰੀਟ ਕੀਤਾ ਤੇ ਇਥੇ ਇਹ ਲੋਕ ਆਉਂਦੇ ਆ ਤੇ ਇਹਨਾਂ ਨੂੰ ਸੰਗਤ ਵਾਂਗੂ ਹੀ ਟ੍ਰੀਟ ਕਰਨਾ ਚਾਹੀਦਾ ਨਾ ਕਿ ਇਹਨਾਂ ਨੂੰ ਸਪੈਸ਼ਲ ਵੀਆਈਪੀ ਔਰ ਸਾਰੀ ਸੰਗਤ ਨੂੰ ਰੋਕ ਕੇ ਇਹਨਾਂ ਨੂੰ ਜਿਹੜੇ ਆ ਪ੍ਰਧਾਨ ਹੋਏ ਜਾਂ ਮੰਤਰੀ ਸੰਤਰੀ ਮੁੱਖ ਮੰਤਰੀ ਹੋਏ ਗ੍ਰਾਮ ਮੰਤਰੀ ਹੋਏ ਇਹਨਾਂ ਨੂੰ ਪਹਿਲ ਕਾਦਮੀ ਦੇ ਆਧਾਰ ਦੇ ਉੱਤੇ ਤੇ ਮਤਾ ਫੇਰ ਤਾਂ ਗੁਰੂਆਂ ਕੇ ਸਾਬ ਦਾ ਜਿਹੜਾ ਸਿਧਾਂਤ ਵਾ ਅਜੀ ਦੇ ਵਿੱਚ ਅਨੇਕਤਾ ਵਾ ਤੇ ਜਾਂ ਉੱਚ-ਨੀਚ ਦਾ ਨਹੀਂ ਸਰੋਵਰਤਾ ਹੀ ਬਣਾਇਆ ਸੀ ਨਾ ਉਹਦੇ ਵਿੱਚ ਕਰੋੜਾ ਵੀ ਉਸੇ ਅਸ਼ਨਾਣ ਕਰੇ ਤੇ ਇੱਕ ਮੇਰੇ ਵਰਗਾ ਗਰੀਬ ਜਿਹੜਾ ਰੱਖਸ਼ਾ ਚੜਾਉਣਾ ਜਿਹੜੀ ਚੜਾਉਣ ਵਾਲਾ ਉਹ ਵੀ ਜਨਾਰ ਕਰੇ ਉਹਦੇ ਬਣਾਇਆ ਸੀਗਾ ਪਰ ਦੂਜੇ ਪਾਸੇ ਜੇ ਉਹ ਅੰਦਰ ਜਾਂਦੇ ਆ ਉੱਥੇ ਆਮ ਗੁਰ ਸਿੱਖ ਲਈ ਜਿਹੜਾ ਉਹ ਉਹ ਲੈਂਚ ਵੀ ਲੱਗਾ ਹੋਏ ਪਿੱਛੇ ਮੂੰਹ ਚਾ ਕੇ ਖੜਾ ਦੇਦਾ ਜੇ ਕੋਈ ਵੀ ਆ ਤੇ ਉਹ ਪਹਿਲ ਕਾ ਆਦਮੀ ਰੋਕ ਕੇ ਸਿਧਾਂਤ ਦੀ ਜਿਹੜੀ ਹੈਗੀ ਹੈਗੀ ਵਿਸ਼ੇਸ਼ਤਾ ਉਹਦੇ ਅਨੁਕੂਲ ਨਹੀਂ ਉਹਦੇ ਉਲਟ ਕੰਮ ਹੋ ਰਿਹਾ ਵਾ ਇਸ ਕਰਕੇ ਜਿਹੜੇ ਦੂਜੇ ਆਉਂਦੇ ਆ ਕਿ ਜਿਸ ਤਰ੍ਹਾਂ ਸਾਨੂੰ ਗਾਈਡੈਂਸ ਕੀਤਾ ਗਿਆ ਸੀ ਹੁਣ 에ਰਪੋਰਟਾਂ ਦੇ ਚੜਦੇ ਨਾ ਕਿ ਤੁਹਾਡੇ ਬੈਗ ਦੇ ਵਿੱਚ ਕੋਈ ਐਸਾ ਸਮਾਨ ਨਹੀਂ ਹੋਣਾ ਚਾਹੀਦਾ ਜਿਹੜੇ ਨਾਲ ਤੁਹਾਨੂੰ ਹਾਨੀਕਾਰਕ ਹੁਣ ਇਹਨਾਂ ਲੋਕਾਂ ਨੂੰ ਵੀ ਅਸੀਂ ਜਿਹੜੇ ਸੰਗਤ ਦੇ ਰੂਪੀ ਵਿੱਚ ਆਉਦੇ ਆ ਇਹਨਾਂ ਨੂੰ ਸੁਚੇਤ ਕਰ ਸਕਦੇ ਜਿਹੜੀਆਂ ਟੂਰ ਗਾਈਡਾ ਉਹਨਾਂ ਨੂੰ ਇਹਨਾਂ ਵੱਲੋਂ ਦਿੱਤੇ ਜਾਣੇ ਚਾਹੀਦੇ ਮਾਪਦਾਂ ਤੇ ਕੀ ਆ ਵੇ ਸਤਗੁਰੂ ਦੇ ਉੱਥੇ ਜਾੜ ਵਾਸਤੇ ਵੇ ਹਰਮੰਦਰ ਸਾਹਿਬ ਵਾਸਤੇ ਤੇ ਉਹਨੂੰ ਨਾ ਕੋਈ ਯੂਪੀ ਦੀ ਤਰ੍ਹਾਂ ਮਸ਼ਹੂਰ ਕਰਨ ਲੱਪੈ ਤਾਂ ਇਹੋ ਲੋਕਾਂ ਦੇ ਵਿੱਚ ਉਹਨਾਂ ਨੂੰ ਆਉਣ ਵਾਲੇ ਨੂੰ ਕੋਈ ਪਤਾ ਨਹੀਂ ਉਹ ਕਹਿੰਦੇ ਯੂਪੀ ਆ ਅਸੀਂ ਦੇਖਣ ਚੱਲੇ ਆ ਜੋ ਵੀ ਮਰਜ਼ੀ ਹੋਵੇ ਔਰ ਕਈਆਂ ਤੇ ਵੀ ਨਹੀਂ ਪਤਾ ਵੇ ਸੈਟਾ ਕਰਾ ਹੁਣ ਇਹਦੇ ਵਿੱਚ ਕਿੱਥੇ ਕਟਾਈ ਕਿੱਥੇ ਹੋ ਰਹੀ ਆ ਕਿ ਜਿਹੜੀ ਸ਼੍ਰੋਮਣੀ ਪ੍ਰੰਧਕ ਕਮੇਟੀ ਉਹਦਾ ਪ੍ਰਬੰਧ ਕਰ ਰਹੀ ਆ ਉਹਦੇ ਕੋਲ ਅਨੱਫ ਜਿਹੜੇ ਇਹਨਾਂ ਚੀਜ਼ਾਂ ਵਾਸਤੇ ਉਹ ਜਾਗਰੂਕਤ ਹੈ ਨਹੀਂ ਔਰ ਆਉਣ ਵਾਲੀਆਂ ਸੰਗਤਾਂ ਨੂੰ ਉੱਥੇ ਰਿਸੀਵ ਕਰਨਾ ਔਰ ਜਿਹੜੇ ਦੂਜੇ ਲੋਕ ਆਉਦੇ ਉਹਨਾਂ ਦਾ ਮਾਨ ਸਤਕਾਰ ਕਰਨਾ ਇਹ ਚੀਜ਼ ਕਿਤਾਏ ਵੀ ਹੈ ਨਹੀਂ ਜੇ ਉੱਥੇ ਆਉਣ ਤੇ ਉਸ ਭਾਸ਼ਾ ਦੇ ਵਿੱਚ ਕਾਹੜੇ ਲੋਕ ਉਹਨਾਂ ਨੂੰ ਕਹਿ ਵੀ ਜਿਹੜਾ ਤੁਹਾਡੇ ਕੋਲ ਸਮਾਨ ਆਪਣੀ ਪਾਸੇ ਰੱਖ ਜਾਓ ਜੋ ਵੀ ਐਸਾ ਪੈਸਾ ਤਮਾਕੂ ਆਦਿਕ ਜੋ ਬੀੜੀ ਜਾਂ ਤੁਹਾਡੇ ਕੋਲ ਕੋਈ ਚੀਜ਼ ਹੋ ਪਰ ਇਹ ਚੀਜ਼ ਹੈ ਹੀ ਨਹੀਂ ਉੱਥੇ ਤਾਂ ਕੋਈ ਪੁੱਛਦਾ ਹੀ ਨਹੀਂ ਉਹ ਵਿਚਾਰੇ ਆਏ ਚੱਲ ਗਏ ਸੁਧਾਰਤ ਦੇ ਨਾਲ ਸਿਰਫ ਸਿਰਫ ਇਹਨਾਂ ਦਾ ਰਿਸੀਵ ਕਰਨ ਦਾ ਇੱਕੋ ਇੱਕ ਮੈਂ ਹਾੜਾ ਕੀ ਕਹਾ ਕਿ ਜਿਹੜੇ ਉਹ ਲੋਕ ਆ ਜਿਹੜੇ ਪ੍ਰਬੰਧਕ ਕਮੇਟੀ ਵਾਲੇ ਪਰ ਸਾੜੇ ਵਿਸ਼ਵਾਤਕ ਵੀ ਜਾਂਦੇ ਆ ਕਿ ਸਾਨੂੰ ਕਿਤੇ ਨਾ ਕਟਾਈ ਅੱਖ ਤੱਲੇ ਲੈ ਲਵੇ ਤੇ ਸਾਨੂੰ ਚੰਗੀ ਨੌਕਰੀ ਜਾਂ ਟੰਗੇ ਸਾਫ ਕੱਟ ਕਰ ਦੇਵੇ ਪਰ ਜਿਹੜਾ ਆਮ ਸ਼ਰਧਾਲੂ ਆਦਾ ਵਾ ਉਹਦੇ ਵਾਸਤੇ ਕੋਈ ਗਾਈਡੈਂਸ ਨਹੀਂ ਕੋਈ ਉਹਨੂੰ ਜੀ ਆਇਆਂ ਨਹੀਂ ਕੋਈ ਉਹਦਾ ਮਾਨ ਸਤਕਾਰ ਨਹੀਂ ਧੰਨਵਾਦ ਜੀ ਸਭਾਂ ਦੇਣ ਦਾ ਜੀ ਧੰਨਵਾਦ ਜੀ ਵਪਾਰਕ ਸੰਦੇਸ਼ ਪਟੋਨਾ ਬ੍ਰਿਜ ਜੀ ਉਹ ਕੀਤਾ ਹੋਇਆ ਹੈ ਕੋਈ ਪੁਲਿਸ ਇਨਸੀਡੈਂਟ ਹੈ ਕੋਈ ਬ੍ਰਿਜ ਤੋਂ ਜੰਪ ਦੀ ਕੋਸ਼ਿਸ਼ ਕਰ ਰਿਹਾ ਹੈ ਬ੍ਰਿਜ ਬੰਦ ਹੈ ਬਦਲ ਮਾ ਸ੍ਰੀ ਮੋਹਨ ਜੀ ਲਾਈਨ ਨੰਬਰ 3 ਜੀ ਚਲੋ ਸਾਬ ਦੂਜੀ ਸੇਵਾ ਸਾਡਾ ਹਾਲ ਇਹ ਆ ਦੇਖੋ ਅਸੀਂ ਸੱਚ ਨੂੰ ਸੱਚ ਪਾਈ ਜਾਈਏ ਗੁਰੂ ਸਾਹਿਬ ਕਹਿੰਦੇ ਸੱਚੇ ਨਾ ਕਿ ਬਹਿਣ ਜਿ ਪਿੰਡਾ ਤੋਂ ਸੱਚੇ ਕੋਈ ਨਾਨਕਾ ਜਨਮ ਵਸਿਆ ਤੋਂ ਹੈ। ਅੰਨ ਗੁਰੂ ਸਾਹਿਬ ਨੇ ਗਵਾਣੀ ਦਿੱਤੀ ਵੀ ਕਿ ਬਹਿਮ ਦੇ ਕੰਮ ਕਰਨੇ ਹੈਗੇ ਮੇਰੇ ਕੋ ਨਸ਼ਾ ਆਇਆ। ਕਿਸੇ ਤਰ੍ਹਾਂ ਨਿਕਾਇਆ ਮੇਰੇ ਕੋ ਲੇਗਾ। ਪਰ ਜੇ ਮੈਂ ਅੰਦਰ ਲਗਾਇਆ ਉਹ ਕਿੱਥੇ ਜਾਊਗਾ। ਇਹਦਾ ਨਸ਼ੇ ਦੀ ਛੱਡੋ ਪਰ ਸਤਕਾਰ ਨਾ ਜੀ। ਇਹ ਹੁਣ ਉੱਥੇ ਤੁਸੀਂ ਪਿੱਠ ਕਰਕੇ ਕਦੇ ਪਾਣੀ ਚੱਦੀਆਂ ਲੱਤਾਂ ਰੱਖ ਕੇ ਕਦੇ ਬਾਹਰ ਰੱਖ ਕੇ ਫੋਟੋਆਂ ਖਿੱਚਦੇ ਪੈਰੋਂ ਟੂਰਿਸਟ ਸਪੌਟ ਥੋੜਾ ਹੋ। ਇਹ ਲੋਕਾਂ ਨੇ ਸਾਡਾ ਕਸੂਰ ਹੈ ਬਣਾਇਆ ਨਾ ਉਹ ਉਜੂਬਾ ਦੱਸਦੇ ਉਹਨੂੰ ਜਾਣਗੇ ਉੱਥੇ। ਬਿਲਕੁਲ। ਸਰਕਾਰ ਨਾਲ ਉਹਨਾਂ ਐਸਜੀ ਪੀਸੀ ਦੇ ਵਿੱਚ ਰਿਫਾਰਮ ਦੀ ਜ਼ਰੂਰਤ ਆ ਉੱਥੇ ਦੇਖਿਓ ਤੁਸੀਂ ਦੇਖਿਆ ਹੀ ਆ ਵੀਆਈਪੀ ਕਲਚਰ ਨੂੰ ਤੁਸੀਂ ਵੇਖ ਆ ਕਰਨ ਲੱਗਿਆ ਅਸੀਂ ਮਹਿਤਰ ਨੂੰ ਤੁਸੀਂ ਦੇਖਣਾ ਸੀ ਕਿਵੇਂ ਟੱਪਦਾ ਕਿਵੇਂ ਸੀ ਸਰੋਪਾ ਪਾਉਣ ਲਈ ਤੇ ਗੁਰੂ ਮਹਾਰਾਜ ਦੇ ਹਜ਼ੂਰੀਏ ਜਿਹੜੇ ਸਾਹਿਬ ਨੂੰ ਇੰਸਟਰਕਸ਼ਨਾਂ ਕਿਵੇਂ ਦੇ ਰਾ ਸੀ ਇਹਨੂੰ ਪਾ ਇਹਨੂੰ ਪਾ ਇਹਨੂੰ ਪਾ ਦਰਦੇ ਵੀ ਪਿਛ ਪਹਿਲੀ ਵਾਰ ਅਰਦਾਸੀ ਜਵਾਬ ਦੇਣ ਲੱਗੇ ਸਿਰ ਤੇ ਖੜ ਕੇ ਕਰਾਈਏ ਕੰਮ ਦੇਖਿਓ ਕਿਤੇ ਸਾਡਾ ਹੀ ਗੜਬੜ ਨਾ ਹੋ ਜਾਏ ਇਹ ਹਜੇ ਜਨਰਲ ਸਕੱਤਰਾਂ ਤੋਂ ਕੀ ਇਹ ਹਜੇ ਮੈਂਬਰਾਂ ਤੋਂ ਲੈਣਾ ਜ਼ਮੀਰ ਲੋਕਾਂ ਦੀ ਮਰਗੀ ਇਹਨਾਂ ਨੇ ਸਾਰਾ ਕੁਝ ਰਾਜਨੀਤੀ ਦੇ ਦਾਤ ਤੇ ਲਾ ਦਿੱਤਾ ਸਾਰਾ ਕੁਝ ਰਾਜਨੀਤੀ ਛੋਡੀ ਜੀ ਲਾਈਨ ਨੰਬਰ 4 ਸਾਪਲਿੰਦਰ ਲਾਈਨ ਨੰਬਰ 5 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਤਾਂ ਬੇਨਤੀ ਇਹ ਕਰਨੀ ਸੀ ਕਿ ਜ ਸੁਝਾਅ ਸਾਰਿਆਂ ਦੇ ਬਹੁਤ ਵਧੀਆ ਵਧੀਆ ਆ ਰਹੇ ਨੇ ਮੰਨਣਯੋਗ ਨੇ ਤੇ ਦਿਲ ਕਰਦਾ ਕਿ ਹੋ ਜਾਵੇ ਪਰ ਮੈਂ ਜਿਵੇਂ ਤੁਸੀਂ ਵੀਰਾਂ ਨੇ ਕਿਹਾ ਕਿ ਗਾਈਡ ਰੱਖਨੇ ਚਾਹੀਦੇ ਹਨ ਆਪਾਂ ਇੱਕ ਪਾਸੇ ਤਾਂ ਇਹ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਆਰਐਸਐਸ ਦੀ ਮਾਰ ਹੈਗੀ ਆ ਠੀਕ ਆ ਜੀ ਉਹਦੇ ਬੰਦੇ ਵੀ ਹੋਣਗੇ ਜਿਹੜੀਆਂ ਨਿਯੁਕਤੀਆਂ ਹੋਣੀਆਂ ਗਾਈਡ ਦੀਆਂ ਪਤਾ ਉਹ ਕਿਹੜੇ ਚੁੜੇ ਜਾਣਾ ਰਾਈਟ ਨੰਬਰ 1 ਜਿਹੜਾ ਬੰਦਾ ਹਿੰਦੀ ਬੋਲਦਾ ਜਾਂ ਬਾਹਰੋਂ ਬੋਲ ਉਹਨੂੰ ਸੱਦਣਾ ਪੈਣਾ ਤੁਸੀਂ ਤੇ ਉਹ ਬਹੁਤ ਪੜਿਆ ਲਿਖਿਆ ਬੰਦਾ ਚਾਹੀਦਾ ਜਿਹੜਾ 2-3 ਭਾਸ਼ਾਵਾਂ ਜਾਣਦਾ ਹਾਂ ਜੀ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਬੰਦਾ ਪੜਿਆ ਨੌਕਰੀ ਕਰੂ 100 ਡਾਲਰ ਤੇ ਚਲੋ ਲਿਖਿਆ ਜਾ ਸਕਦੀ ਗਾਇਡ ਨਹੀਂ ਲਿਖਿਆ ਤਾਂ ਜਾ ਸਕਦਾ ਨਾ ਬੋਰਡ ਤਾਂ ਲਿਖੇ ਜਾ ਸਕਦੇ ਆ ਮੈਂ ਤੁਹਾਨੂੰ ਉਹੀ ਦੱਸਦਾ ਨਾ ਮੈਂ ਜਿਹੜੀ ਗੱਲ ਦੱਸੀ ਵੀ ਜਿਹੜੇ ਉੱਥੇ ਨੌਕਰੀ ਕਰਦੇ ਆ ਉਨਦੇ ਉਨਦੇ ਤਨਖਾਹ ਹੈਗੀ ਜੀ 5000 6000 7000 10000 ਤਾਂ ਉਹਦੀ ਤਨਖਾਹ ਆ ਵਾ ਜਿਹਨੇ ਗੁਰਨਾਣਕ ਦੇਵ ਇੰਜੀਨੀਅਰ ਡਿਗਰੀ ਜਾਂ ਡਿਪਲੋਮਾ ਕੀਤਾ ਸਰਦਾਰ ਜੀ ਆਪ ਬੰਦੇ ਵਾਲੇ ਜਿਹੜੇ 5-6000 ਬਚਾਉਣਾ ਨਾ ਆਪਦੀ ਆਰਥੀਓ ਰੋਜੀ-ਰੋਟੀ ਚਲਾਉਣੀ ਆ ਉਹਨਾਂ ਨੂੰ 5-6000 ਚਲਾਉਣ ਦੀ ਖਾਤਰ ਉਹ ਵਿਚਾਰੇ ਚੁੱਪ ਨੇ ਉੱਥੇ ਬਰਛੇ ਲਈ ਖੜੇ ਨੇ ਉਹ ਅੱਕੇ ਖੜੇ ਨੇ ਠੀਕ ਆ ਜੀ ਸਾਰਾ ਨਜਲਾ ਸਾਡਾ ਉਹਨਾਂ ਦੇ ਛੱਡ ਜਾਂਦਾ ਸੋ ਮੈਂ ਤਾਂ ਨਹੀਂ ਖੁਦ ਮਲਾਜਮ ਰਿਹਾ ਇਸ ਲਈ ਇੰਨਾ ਕੋਲ ਸਕਦਾ ਮੈਂ ਭਾਵਕ ਜ਼ਿਆਦਾ ਹੋ ਜਾਣਾ ਬੋਲਣ ਲੱਗਿਆ ਸੋ ਮੈਂ ਤਾਂ ਇਹ ਬੇਤੀ ਕਰਦਾ ਕਿ ਇਹ ਜਿਵੇਂ ਚੱਲਦਾ ਇਹਨੂੰ ਚੱਲੀ ਜਾਣ ਦੋ ਸਾਰਾ ਕੁਝ ਸਾਰਾ ਨਿੱਕੇ ਨਿੱਕੇ ਪੁਆਇੰਟ ਹੈਗੇ ਨੇ ਜਿਹੜੇ ਠੀਕ ਹੋ ਸਕਦੇ ਪਰ ਸਾਨੂੰ 5000 6000 ਦੀ ਨੌਕਰੀ ਪਿਆਰੀ ਹੈ ਜੀ ਉੱਥੇ ਤੁਸੀਂ ਅਸਲੀ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਸਾਨੂੰ ਤਾਂ ਜਿੱਥੇ ਆ ਜਾਨੂੰ ਕਹਿੰਦੇ ਆ ਲਓ ਵੀ ਅੱਜ ਨਹੀਂ ਲਿਆਉਣਾ ਬਿਲਕੁਲ ਇਹ ਠੀਕ ਆ ਇੱਕ ਵਰਕਰ ਕੁਝ ਨਹੀਂ ਕਰ ਸਕਦਾ ਸੁਲਿੰਦਰ ਸਿੰਘ ਜੀ ਇਹ ਗੱਲ ਤਾਂ ਨਾਲੇ ਜੇ ਉਹ ਵਿਚਾਰੇ ਕੋਲ ਇੰਨੀ ਵਿਦਵਤਾ ਹੋਵੇ ਉਹ ਉੱਥੇ ਕਿਉਂ ਖੜੇ ਇਹ ਤਾਂ ਉੱਪਰ ਵਾਲੇ ਪ੍ਰਬੰਧਕਾਂ ਦੀ ਗੱਲ ਹੈ ਉਹਨਾਂ ਨੂੰ ਠੀਕ ਦੀ ਲੋੜ ਹੈ ਥੈਂਕ ਯੂ ਗੁਰਜੋਤ ਸਿੰਘ ਜੀ ਲਾਈਨ ਨੰਬਰ 2 ਪਲੀਜ਼ ਹੋਰ ਕਾਲ ਨਾ ਕਰੋ ਕੋਲਾ ਚਾਰ ਕਾਲਰ ਹੋਰ ਨੇ ਸਮਾਂ ਥੋੜਾ ਗੁਰਜੋਤ ਸਿੰਘ ਜੀ ਲਾਈਨ ਨੰਬਰ 2 ਅਜੀ ਗਿਲਸਾਹ ਸਸਿਕਾਲ ਜੀ ਸਸਿਕਾਲ ਬਾਈ ਜੀ ਗਿਲਸਾਹ ਦੇਖੋ ਮੈਂ ਇੱਕ ਬੇਨਤੀ ਕਰਵਾ ਜਿਵੇਂ ਆਪ ਪਿਛਲੇ ਆ ਕੇ ਗੱਲ ਕਰਿਆ ਮੈਂ ਇਹੀ ਗੱਲ ਕਹਿਣੀ ਸੀ ਜੀ ਅਸੀਂ ਦੋ ਲਬਜ ਕੱਢ ਦਿੰਨੇ ਆਂ ਚੇਂਜ ਚਾਹੁੰਦੇ ਆਂ ਪਰ ਚੇਂਜ ਲਈ ਅਸੀਂ ਵਰਕ ਨਹੀਂ ਜੀ ਗਿਲਸਾਹ ਬਸੀਂ ਕਦੇ ਕੀਤਾ ਹੁਣ ਮੈਂ ਤੁਹਾਨੂੰ ਇੱਕ ਫਿਗਰ ਦੇਣੀ ਚਾਹੁੰਨਾ ਇੱਥੇ ਕਹਿ ਦਿੰਦੇ ਆ ਆਪਾਂ ਵੀ ਸ਼ੰਤ ਬਾਬਾ ਜਰਨੈਲ ਸਿੰਘ ਉਹਨਾਂ ਚੇਂਜ ਹੋ ਜਾਂਦੀ ਉਹਨੇ ਵੀ ਟਰਾਈ ਕੀਤੀ ਸ਼ੰਤ ਬਾਬਾ ਤੇ ਲਾਇਆ ਸ਼੍ਰੋਮਣੀ ਕੇ ਹਰਾਇਆ ਇਹ ਗੱਲਾਂ ਬਾਤਾਂ ਨੇ ਨਾ ਇਹ ਕੌਮ ਅਤੇ ਬਾਬਾ ਜਰਨੈਲ ਸਿੰਘ ਨੇ ਕਿਉਂਕਿ ੱਤਕਾ ਨਹੀਂ ਹੁੰਦਾ ਗੱਲ ਸਾਬ ਐਸੀ ਜੇ ਕਰਤਿਆਂ ਜੇ ਅਸੀਂ ਬੈਠਿਆ ਇੱਥੇ ਗੁਰਦੁਆਰੇ ਜੇ ਤੁਸੀਂ ਦੇਖ ਲਓ ਚੇਂਜ ਕਰਾ ਕੇ ਐਥੇ ਵੀ ਮੈਂ ਤਾਂ ਜ਼ੋਰ ਲਾਇਆ ਗੁਰਦੁਆਰੇ ਦੀ 5 500 1 ਕੀ ਹੋਇਆ ਕੱਲ ਸਾਹਿਬ ਹੁਣ ਦੇਖੋ 96 ਤੋਂ ਲੈ ਕੇ 2021 ਤੱਕ 6 ਵਾਰ ਚੋਣ ਹੋਣੀ ਚਾਹੀਦੀ ਸੀ ਸ਼੍ਰੋਮਣੀ ਕਮੇਟੀ ਦੀ ਇਹ ਹਿੰਦੁਸਤਾਨ ਦੀ ਹਕੂਮਤ ਨੇ 3 ਵਾਰ ਕਰੀ ਆ ਮਾਨ ਸਾਹਿਬ ਕੋਰਟਾਂ ਚ ਗਏ ਕਿਉਂਕਿ ਪਤਾ ਨਹੀਂ ਮੇਰੇ ਭਰਾ ਤਾਂ ਆਉਂਦੇ ਆ ਟੱਕ ਕੇ ਮਾਨ ਦੇ ਖਿਲਾਫ ਬੋਲ ਕੇ ਜੀ ਉਹ ਕਰਦਾ ਕੁਝ ਨਹੀਂ ਉਹਨੇ ਪੱਥੇ ਹੀ ਬਠਾਇਆ ਕਿਉਂਕਿ ਇਹਨਾਂ ਨੂੰ ਕੋੜਾ ਪਤਾ ਨਾ ਇਹਨਾਂ ਨੇ ਕਦੇ ਉਹਦੇ ਪੇਪਰ ਵਰਕ ਦੇਖਿਆ ਅਸੀਂ ਮਰ ਗਏ ਉੱਥੇ ਗੱਲ ਸਾਹਿਬ ਕੋਰਟਾਂ ਚ ਜਾਂਦੇ ਫਿਰਦੇ ੱੱਕੇ ਖਾਂਦੇ ਹਾਂ ਪਉ ਪਤਾ ਇਹ ਨਾ ਚੁ ਕਿਸੇ ਨੂੰ ਆ ਜਿਹੜਾ ਹੁਣ ਮੈਂ ਇੱਕ ਗੱਲ ਕਹੂੰ ਅੱਜ ਮੇਰੀ ਕੌਮ ਨੂੰ ਹਾਲੇ ਵੀ ਜੇ ਸਵੇਰ ਦੋ ਜਾਣ ਇਹ ਜਿਹੜਾ ਇਹ ਕਹਿੰਦਾ ਨਾ ਵੋਟਾਂ ਪੈਣੀਆਂ ਨੇ ਗੱਲੀਆਂ ਜੱਲ ਸਾਹਿਬ ਕਿ ਇਸ ਤੋਂ ਅਸੀਂ ਅਵੇਅਰ ਕਰਿਓ ਹੁਣ ਕੌਮ ਨੂੰ ਜ਼ਰੂਰੀ ਆ ਮੈਂ ਬਾਲ ਕੱਟਿਆਂ ਦੇ ਵਿਰੋਧੀ ਨਹੀਂ ਹੈਗਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਵੀ ਉੱਥੇ ਜਦੋਂ ਵੋਟਾਂ ਪੈਂਦੀਆਂ ਨੇ ਅਸੀਂ ਪਿਛਲੀ ਵਾਰ ਵੀਡੀਓ ਬਣਾ ਕੇ ਚ ਫੇਰ ਉਹ ਸਾਨੂੰ ਹਰਾ ਦਿੰਦੇ ਸੀਗੇ ਪਤਾ ਇੱਕ ਸੈਜ ਭਾਰੀ ਨੇ ਵੋਟਾਂ ਹੁੰਦੀਆਂ ਤੇ ਇੱਕ ਕੇਸਾ ਭਾਰੀ ਨੇ ਵੋਟਾਂ ਹੁੰਦੀਆਂ ਤੇ ਮੈਂ ਪ੍ਰਬੰਧ ਤੇ ਹੀ ਆਉ ਰਿਹਾ ਵੀ ਇਹ ਪ੍ਰਬੰਧ ਜਿਹੜੇ ਧੱਕੇ ਨਾਲ ਸਰੋਪੇ ਅਗਲੇ ਨੂੰ ਨਵਾਬੀਆਂ ਮਿਲੀਆਂ ਨੇ ਅਗਲੇ ਨੂੰ ਜੇ ਨਵਾਬੀਆਂ ਸਿੱਖ ਕੌਮ ਦਊਗੀ ਉਹ ਸਿੱਖ ਕੌਮ ਨੂੰ ਜਿਹੜੀਆਂ ਇਹਨਾਂ ਦੀਆਂ ਰੀਤਾਂ ਨੇ ਇਹਨਾਂ ਦੇ ਸੰਧਾਤ ਨੇ ਉਹਨਾਂ ਤੇ ਪਹਿਰਾ ਦੇਣ ਵਾਲੇ ਅੱਗੇ ਆਉਣਗੇ ਬੰਦੇ ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੀਆਂ ਜਦੋਂ ਵੀ ਹੁਣ ਧੱਕਾ 21 ਹਿਚ ਇੱਕ ਕੀ ਸ਼੍ਰੋਮਣੀ ਕਮੇਟੀ ਦੇ ਚੋਣਾਂ ਉਹਦੇ ਸਿੱਖ ਕੌਮ ਦੀਆਂ ਵੋਟਾਂ ਪੈਣੀਆਂ ਨੇ ਅਸੀਂ ਵੀ ਮੈਂ ਤੁਹਾਡਾ ਬਹੁਤ ਦਾ ਕਰਦਾ ਸਾਰੇ ਕੈਂਡੀਡੇਟ ਅਨਾਉਂਸ ਕਰਨੇ ਆ ਤੇ ਉਹਨਾਂ ਦਾ ਅਸੀਂ ਚਾਹੁੰਦੇ ਆ ਜਿਵੇਂ ਆਮ ਆਦਮੀ ਪਾਰਟੀ ਦਾ ਹੱਥ ਛੱਡੀ ਸਿੱਖ ਕੌਮ ਨੇ ਰੋਲਾ ਪਾਇਆ ਦੀਆ ਪਲੀਜ਼ ਮੇਰੀ ਹੱਥ ਚੋੜ ਕੇ ਬੇਨਤੀ ਆ ਇੱਕ ਮੌਕਾ ਦੇ ਦੇਣ ਪਰ ਮੈਂ ਇੱਥੇ ਜ਼ਰੂਰ ਤੁਹਾਨੂੰ ਦੱਸਦਾ ਇਹ ਅਵੇਅਰ ਜ਼ਰੂਰ ਰਹਿਣ ਭਗਵਾਨ ਸਿਮਰ ਨੇ ਪਾਰਲੀਮੈਂਟ ਤੇ ਜਾ ਕੇ ਗੱਲਬਾਤ ਗੱਲ ਸਾਹਿਬ ਸਾਡੀ ਵਿਰੋਧਤਾ ਕੀਤੀ ਆ ਅਸੀਂ ਤਾਂ ਕੋਟਾ ਚ ਕਰੀਏ ਕਿ ਪੌਂਡੀਆਂ ਪਾਣੀਆਂ ਚਾਹੀਦੇ ਨੇ ਉਹ ਕਹਿੰਦਾ ਨਹੀਂ ਕਹਿੰਦਾ ਸਾਰਿਆਂ ਦੀਆਂ ਪਾਣੀਆਂ ਚਾਹੀਦੇ ਨੇ ਮੈਂ ਆਪ ਜੋੜ ਕੇ ਬੇਨਤੀ ਕਰਦਾ ਇਹ ਤੋਂ ਜਲੂਰ ਅਲਰਟ ਰਹੋ ਸੰਤ ਸਾਧੂ ਮਹਤਮਾ ਨੂੰ ਫੇਰ ਜਿਹੜੇ ਕੱਲੇ ਬਾਦਲ ਨਾ ਹੁੰਦੇ ਸੀ ਅੱਜ ਇਹਨਾਂ ਨਾਲ ਆ ਗਏ ਕਿ ਨੂੰ ਅਕੇ ਲਿਆਉਣਗੇ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕੌਮ ਜ਼ਰੂਰ ਸਮਝੇ ਜੇ ਅਸੀਂ ਧੰਨਵਾਦ ਧੰਨਵਾਦ ਤੁਹਾਡਾ ਵਪਾਰਕ ਸੰਦੇਸ਼ ਤਿੰਨ ਕਾਲਰ ਨੇ ਜੀ ਪਲੀਜ਼ ਸੰਖੇਪ ਰੱਖਿਓ ਆਪਨੂੰ ਕੋ ਸਮਾਂ ਘਟ ਗਿਆ ਥੋੜਾ ਜਿਹਾ ਜਸਵਿੰਦਰ ਸਿੰਘ ਜੀ ਲਾਈਨ ਨ ਸਤਿ ਸ਼੍ਰੀ ਅਕਾਲ ਜੀ ਸਾਜੀ ਮੈਂ ਥੋੜੀ ਜਿਹੀ ਰਿਕੁਐਸਟ ਸੀ ਮੈਂ ਗੱਲ ਕਰਨਾ ਚਾਹੁੰਦਾ ਸੀ ਆਪਾਂ ਉੱਥੇ ਇੰਡੀਆ ਬਾਰੇ ਆਪਾਂ ਗੱਲ ਕਰਦੇ ਹਾਂ ਵੀ ਚਲੋ ਠੀਕ ਹੈ ਮਹਾਰਾਜ ਬੇਦਵੀ ਜਾਂ ਵੀ ਹੈ ਬਟ ਮੈਂ ਮੈਨੂੰ ਇੱਥੇ ਆਏ ਨੂੰ ਸਾਲ ਹੋਏ ਨੇ ਅਮਰੀਕਾ ਦੇ ਵਿੱਚ ਤੇ ਮੈਂ ਜਦੋਂ ਇੱਥੇ ਆਇਆ ਤੇ ਮੈਂ ਇੱਥੇ ਦੇਖਦਾ ਮਹਾਰਾਜ ਪ੍ਰਕਾਸ਼ ਹੁੰਦਾ ਉੱਥੇ ਤਾਂ ਲੋਕੀ ਬੇਰਦੀ ਕਰਦੀ ਕਰਦੇ ਨੇ ਪਰ ਜਦੋਂ ਲੰਗਰ ਵਗੈਰਾ ਤੇ ਉਹ ਜੁੱਤੀਆਂ ਪਾ ਕੇ ਤੇ ਪਲੱਸ ਕੂਛੀਆਂ ਤੇ ਬਹਿ ਕੇ ਲੰਗਰ ਛਕਦੇ ਮੈਨੂੰ ਹੋ ਜੇ ਲੋਕਾਂ 'ਚ ਬਾਅਦ ਚ ਕਰਦਾ ਦੇਖੇ ਸ਼ਰਦਾ ਹੀ ਖਤਮ ਹੁੰਦੀ ਪਈ ਫਿਰ ਆਪਾਂ ਕਿਸੇ ਚੀਜ਼ ਬਾਰੇ ਕਿਦਾਂ ਬੋਲ ਸਕਦੇ ਆ ਮੈਂ ਇੱਕ ਗੁਰਦੁਆਰਾ ਸਾਹਿਬ ਇੱਥੇ ਮੈਂ ਜਿਸ ਖ਼ਾਨਾਮੀ ਫਿਰ ਠੀਕ ਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਮਾਜੀ ਵੀ ਤੁਸੀਂ ਦੇ ਉਹ ਕਹਿੰਦੇ ਜੀ ਸਾਡਾ ਜਿਹੜਾ ਧਰਮ ਹੈ ਜੀ ਉਹ ਇਕੁਐਲਿਟੀ ਤੇ ਉੱਤੇ ਟਿਕਿਆ ਹੋਇਆ ਹੈ ਕਹਿੰਦਾ ਇਕੁਐਲਿਟੀ ਤੇ ਹੈਗੀ ਨਾ ਸਾਡਾ ਤੇ ਜਿਹੜੀ ਚੀਜ਼ੇ ਆਪਣੀ ਇਸ ਚੀਜ਼ ਬਾਰੇ ਜੀ ਅਮ ਲੋਕਾਂ ਤੁਸੀਂ ਹੁਣ 2 ਸਾਲ ਪਹਿਲਾਂ ਆਏ ਹੋ ਦੇ ਵਿੱਚ ਇੱਥੇ ਬੜਾ ਕੰਮ ਚੱਲਿਆ ਉਸ ਤਰ੍ਹਾਂ ਰਹਿਣਾ ਕੋਈ ਥੱਲੇ ਬੈਠ ਕੇ ਸ਼ੱਕਦਾ ਕੋਈ ਇੱਥੇ ਚੇਂਜ ਨਹੀਂ ਹੋ ਸਕਦੀ ਬਹੁਤ ਵੱਡਾ ਮੁੱਦਾ ਹੈ ਇਸ ਤੇ ਬਹੁਤ ਬਹੁਤ ਜਮਹਿਮਾ ਹੋਈਆਂ ਪਰ ਕਿ ਇੱਥੇ ਆਪਾਂ ਨਹੀਂ ਚੇਂਜ ਕਰ ਸਕਦੇ ਕਿਉਂਕਿ ਲੋਕ 100 ਸਾਲਾਂ ਦੇ ਇਸ ਤਰ੍ਹਾਂ ਬੈਠਦੇ ਆਏ ਫਿਰ ਥੱਲੇ ਬੈਠਣ ਲੱਗੇ ਆ ਅਲੱਗ-ਅਲੱਗ ਗੁਰੂ ਘਰ ਉੱਥੇ ਹੁਣ ਮੇਰੀ ਤਾਂ ਸੁਣ ਲਓ ਜੇ 2 ਸਾਲ ਪਹਿਲਾਂ ਤੁਸੀਂ ਆਏ ਹੋ ਤੁਸੀਂ ਪਹਿਲਾਂ ਪਤਾ ਕਰ ਲਓ ਇੱਥੇ ਇਸ ਚੀਜ਼ ਦੇ ਵਿੱਚ ਬਹੁਤ ਮੁਸ਼ਕਲ ਜੀ ਕਮ ਲੰਗੀ ਹੈ ਕਿ ਜਗ੍ਹਾ 'ਚ ਪੰਜ ਗੁਰਦੁਆਰਿਆਂ ਤੋਂ ਇੱਕ ਸ਼ਹਿਰ 'ਚ 10 ਗੁਰਦੁਆਰਾ ਸਾਹਿਬ ਬਣ ਗਏ ਇਹ ਚੀਜ਼ਾਂ ਨਹੀਂ ਰੁਕ ਸਕਦੀਆਂ ਪਰ ਉੱਥੇ ਜਿਹੜੀ ਟੂਰਿਜ਼ਮ ਇਥੇ ਦਾ ਚਲੋ ਪਰਦੇਸ ਦੇ ਵਿੱਚ ਇੱਥੇ ਵੀ ਚਾਹੀਦੀ ਸੀ ਕੋਈ ਚਾਹੀਦੀ ਸੀ ਪਰ ਕੋਈ ਜਿੰਮ ਫਿਰਦਾ ਪਈ ਨਹੀਂ ਪਹੁੰਚਿਆ ਖਬਰਾਂ ਦੇ ਸਪੌਂਸਰ ਹਨ ਪੰਜਾਬੀਆਂ ਦਾ ਮਾਣ ਅਤੇ ਪੰਜਾਬੀਆਂ ਦੀ ਸ਼ਾਨ ਮਸ਼ਹੂਰ ਮੰਨਿਆ ਪ੍ਰਮੁੱਖ ਅਤੇ ਤੇਰੇ ਲੇਡਰ ਵਕੀਲ ਬ੍ਰਿਜ ਮੋਹਨ ਜਿਨ੍ਹਾਂ ਨੇ ਸਰੀ ਤੇ ਨਾਲ ਨਾਲ ਆਪਣਾ ਦਫ਼ਤਰ ਐਬਟਸਫਰਡ ਵਿੱਚ ਐਬਟਸਫਰਡ ਸਿਟੀ ਹਾਲ ਦੇ ਬਿਲਕੁਲ ਸਾਹਮਣੇ ਖੋਲ੍ਹ ਦਿੱਤਾ ਹੈ ਸਰੀ ਅਤੇ ਐਬਟਸਫਰਡ ਆਫਿਸ ਦਾ ਫੋਨ ਨੰਬਰ 6045980988 6045980988 ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ ਉੱਥੇ ਫਰਕ ਪੈ ਰਿਹਾ ਹੈ ਜਿਹੜਾ ਮਹਿਸੂਸ ਹੋਇਆ ਪਿਛਲੇ 5-14 ਸਾਲਾਂ ਦੇ ਵਿੱਚ ਇੱਕ ਉੱਥੇ ਚੇਂਜਸ ਆਈ ਹੈ ਬਹੁਤ ਵੱਡੀ ਜਿਹਦੇ ਵਿੱਚ ਟੂਰਿਸਟ ਜਿਹੜੀਆਂ ਬਸਾਂ ਭਰ ਜਾਂਦਾ ਉਹ ਉਸ ਤਰ੍ਹਾਂ ਟੂਰਿਜ਼ਮ ਦੇ ਤੌਰ ਤੇ ਗੁਰੂ ਘਰ ਜਾਂਦੇ ਆ ਉਹਨਾਂ ਨੂੰ ਕੁਝ ਅਵੇਅਰਨੈਸਲੀ ਉਹਨਾਂ ਦੀ ਮੈਂ ਗਲਤੀ ਨਹੀਂ ਮੰਨ ਸਕਦਾ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਕੋਡ ਆਫ ਕੰਡਕਟ ਉੱਥੇ ਲਾਗੂ ਕੀਤਾ ਜਾਵੇ ਕਿਉਂਕਿ ਬਹੁਤ ਵੱਡੀ ਮੁਸ਼ਕਲ ਆ ਜਿਹੜੇ ਲੇਟਲੀ ਆ ਕੇ ਆ ਨਾ ਦਰਵਾਦ ਦੇ ਆਲੇ-ਦਾਲੇ 메ਨ ਪ੍ਰਕਰਮਾ ਦੇ ਵਿੱਚ ਅੰਦਰ ਜੇ ਜਾਣੇ ਆ ਡਰਦੇ ਆ ਪਰ ਉੱਪਰ ਚੜ ਕੇ ਉੱਥੇ ਜਿਹੜਾ ਫੋਟੋਆਂ ਤੇ ਸੈਲਫੀਆਂ ਇੱਕ ਦੂਜੇ ਤੋਂ ਉੱਪਰ ਦੀ ਉਹ ਉਹ ਚੀਜ਼ਾਂ ਚੇਂਜ ਕਰਨ ਵਾਲੀਆਂ ਨੇ ਅਬਲਾ ਤਾਂ ਰਿਫਾਰਮ ਦੀ ਲੋੜ ਹੈ ਜਿਹੜੀ ਮੈਂ ਪਹਿਲਾਂ ਹੀ ਕਹਿੰਦਾ ਕਿ ਸਾਰਾ ਦੀ ਲੋੜ ਹੈ ਉੱਥੇ ਜਿਹੜਾ ਕੁਝ ਉੱਥੇ ਤਾਣਾ ਬਾਣਾ ਜਿਹੜਾ ਉਲਝਿਆ ਹੋਇਆ ਪ੍ਰਧਾਨ ਹੈ ਜਿਹੜਾ ਉਹ ਬਿਲਕੁਲ ਹੀ ਝੂਠ ਬੋਲ ਰਿਹਾ ਮੈਨੂੰ ਪਤਾ ਹੀ ਨਹੀਂ ਸਰਸੇ ਦੇ ਨਹੀਂ ਤੇ ਦੂਜੇ ਤੋਂ ਉੱਪਰ ਡਿਊਟੀ ਲਵਾ ਰਹੇ ਨੇ ਇੱਕ ਦੂਜੇ ਨਾਲ ਉੱਥੇ ਗਰੁੱਪ ਬਣੇ ਹੋਏ ਨੇ ਗਾਂ ਪ੍ਰਧਾਨਗੀ ਗਾਂ ਉੱਪਰ ਜਾਣ ਦਾ ਜਿਹੜਾ ਰੌਲਾ ਮੱਕੜ ਆ ਗਿਆ ਬਡੂਂਗਰ ਚਲੇ ਗਿਆ ਬਡੂਂਗਰ ਤੋਂ ਬਾਅਦ ਕੋਈ ਹੋਰ ਆ ਜੂ ਉੱਥੇ ਵੋਟਾਂ ਦੇ ਵਿਨਾਲ ਬਦਲਾ ਜਿਹੜਾ ਹੈ ਉਹ ਬਹੁਤ ਵੱਡੀ ਜ਼ਰੂਰਤ ਹੈ ਕਿਉਂ ਅਕਾਲੀ ਦਲ ਦਾ ਜਿਹੜਾ ਦਬਦਬਾ ਰਿਹਾ ਹੈ ਜੀਪੀਸੀ ਤੇ ਜਿਹਨੂੰ ਐਮਐਲਏ ਦੀ ਟਿਕਟ ਨਹੀਂ ਦਿੰਦੇ ਉਹਨੂੰ ਸ਼ਰੋਮਨੀ ਕਮੇਟੀ ਦੀ ਟਿਕਟ ਦਿੰਦੇ ਨੇ ਇਹ ਸਾਰਿਆਂ ਨੂੰ ਪਤਾ ਆਪਕਾ ਨੂੰ ਪਿੰਡਾਂ ਵਾਲਿਆਂ ਨੂੰ ਪਤਾ ਉਹ ਇੱਕ ਅਲੱਗ ਇੱਕ ਅਲੱਗ ਪੈਰਨਲ ਗਵਰਨਮੈਂਟ ਜਿਹੜੀ ਚਲਾਈ ਹੈ ਤੇ ਉੱਥੇ ਉਸ ਬਦਲਾ ਚਾਹੀਦਾ ਉੱਥੇ ਵੀ ਬਦਲਾ ਦੀ ਲੋੜ ਹੈ ਹੋ ਸਕੇਗਾ ਇਹ ਲੋਕ ਕਰਨਗੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਅਲਕਾਰ ਸਿੰਘ ਜੀ ਲਾਈਨ ਅਪ ਜੀ ਸਾਡੇ ਏਰੀਆ ਮੈਂ ਫਾਇਲ ਕਾ ਏਰੀਆ ਮੇਰਾ ਆਪਣੇ ਮੈਂ ਕਦੇ ਸੇ ਜਲੀਆ ਤੋਂ ਬੋਲ ਰਿਹਾ ਹਾਂ ਇਹਨਾਂ ਕਦੇ ਨਹੀਂ ਸੁਣਾਇਆ ਮੈਂ ਸਾਡੇ ਬੰਦਾ ਫਾਇਲ ਏਰੀਆ ਮੇਰਾ ਤੇ ਉਹ ਕਾਫੀ ਹੈਗੇ ਦਰਬਾਰ ਸਾਹਿਬ ਮੈਂ ਆ ਅਸੀਂ ਸੇਵਾ ਕਰਨ ਗਏ ਮੈਂ ਮੇਰੀ ਵਾਈਫ ਮੇਰੇ ਪੈਸੇ ਦਾ ਬੇਟਾ ਉਹਦੀ ਵਾਈਫ ਅਸੀਂ ਆਖਿਆ ਚਲੋ ਵੀ ਇੱਥੇ ਕੇ ਸੇਵਾ ਕਰਦੇ ਆਂ ਫਰੀ ਸੀਗੇ ਤੇ ਉੱਥੇ ਅਸੀਂ ਜਾਈ ਅਸੀਂ ਟਾਈਮ ਨਾਲ ਪਹੁੰਚ ਗਏ 7:00 ਵਜੇ ਅਸੀਂ ਕਹਿੰਦੇ ਰੂਮ ਚਾਹੀਦਾ ਦੋ ਤਿੰਨ ਦਿਨ ਰਹਿਣਾ ਕਹਿੰਦੇ 12 ਵਜੇ ਤੋਂ ਬਾਅਦ ਰੂਮ ਮਿਲੂਗਾ ਚਲੋ ਠੀਕ ਹੈ ਜੀ ਅਸੀਂ 12 ਵਜੇ ਸੇਵਾ ਕਰਦੇ ਰਹੇ ਉੱਥੇ ਲੰਗਰ ਸੇਵਾ ਕੀਤੀ ਹੋਰ ਅੱਜ ਤੋਂ ਬਾਅਦ ਵੀ 12:00 ਵਜੇ ਕਹਿੰਦੇ ਸਭਾ ਬਣਾ ਹੋ ਜਾਂਦੀ ਹੁਣ ਤਾਂ ਰੂਮ ਮਿਲਦਾ ਨਹੀਂ ਰੂਮ ਸਾਰੇ ਬੁੱਕ ਹੋ ਗਏ ਬੜੇ ਫਸੇ ਜੀ ਹੁਣ ਤਾਂ ਕਿਲੋਮੀਟਰ ਪਿੰਡ ਹੈ ਮੈਂਬਰ ਦਾ ਫੋਨ ਕਰਾਇਆ ਤੇ ਉਹਨੇ ਨਾਲ ਦੀ ਨਾਲ ਹੀ ਚਾਬੀਆਂ ਦੇ ਕਹਿੰਦਾ ਕੋਈ ਵੇਖੋ ਜੀ ਉੱਥੇ ਠੰਡ ਦਾ ਮਤਲਬ ਜੀ ਹੈਗਾ ਸਾਰੇ ਪ੍ਰੋਬਲਮ ਤਾਂ ਨਹੀਂ ਕੋਈ ਫਿਰ ਨਾਲ ਦੀ ਨਾਲ ਸਾਰੇ ਮਸਲੇ ਹੱਲ ਹੋ ਗਏ ਦੇਖੋ ਮਤਲਬ ਇਸ ਤਰ੍ਹਾਂ ਦੇ ਮਸਲੇ ਹੁਣ ਤਾਂ ਵੀ ਹੈਗੀਆਂ ਇਹ ਕਿਵੇਂ ਹੱਲ ਹੋਣੀ ਹੈ ਇਹ ਆਪਾਂ ਨੂੰ ਦੇਖਣਾ ਪਊਗਾ ਸਾਰਿਆਂ ਨੂੰ ਦੇਖਣਾ ਪਊਗਾ ਉਸ ਤੋਂ ਸਾਰਾ ਸਿਸਟਮ ਚੇਂਜ ਜਿਵੇਂ ਅਕਾਲੀ ਜਲਦੀ ਉਸੇ ਗੱਲ ਕੀਤੀ ਇਹਨਾਂ ਛਾਣਾ ਬਾਣਾ ਸਾਰਾ ਇਹ ਮਚੀਆਂ ਜ ਹੋਊਗਾ ਤਾਂ ਫੇਰ ਹੀ ਇੱਥੇ ਹੋਊਗਾ ਕੰਮ ਫਸੀ ਜਾਏ। ਜਨਜੀ ਸਰ ਕੁਲਦੀਪ ਸਿੰਘ ਲਾਈਨ 4 ਵਾਦ ਜੀ ਮੈਂ ਵੀ ਡਾਕੂਮੈਂਟ ਦੀ ਗੱਲ ਰਿਵਿਊ ਡੇੜੀ ਜੀ ਵੀ ਇੱਕ ਜਿਹੜੀ ਇਹ ਮਰੀਆਲਾ ਚੀਜ਼ ਦਾ ਹੈਡ ਸਾਡਾ ਹੈਡ ਜੀ ਉਹ ਆਪਣੇ ਮਾੜਿਓ ਕਰਕੇ ਉਹ ਅਨ ਦੇ ਕਿਸੇ ਇੱਕ ਕਰਦਾ ਕੰਟਰੋਲ ਜੇ ਤੁਸੀਂ ਮੇਕਾ ਚਾਵੜੇ ਦੀ ਗੱਲ ਕੀਤੀ ਸੀ ਇਹਨਾਂ ਨਾਲ ਸਾਨੂੰ ਦੇ ਕੋਲ ਖੜ-ਖੜ ਕੇ ਹੁੰਦੇ ਸੀ ਉਹਨੂੰ ਸੰਤਾ ਜੀ ਨਾਲ ਪੁੱਦੇ ਹੁੰਦੇ ਸੀ ਹੁਣ ਇਹ ਮੈਂ ਹੁਣ ਮੇਰੇ ਮੂੰਹ ਨਿਕਲ ਲੱਗਾ ਗਬਾਰ ਬਾਦਲ ਦੇ ਨਾ ਤੁਸੀਂ ਮੂੰਹ ਨਾ ਕੱਢਿਓ ਰਹਿਣ ਦਿਓ ਧੰਨਵਾਦ ਸੁਣ ਲਈ ਤੁਹਾਡੀ ਗੱਲ ਗਰਵਾਲ ਜੀ ਲਾਈਨ ਨੰਬਰ 5 ਵਾ ਵਾ ਕੈਨਸਰ ਲਈ ਇੱਕ ਵਜ ਕੇ 9 ਮਿੰਟ ਹੋਇਆ ਜੀ ਤੇ ਇਹ ਜਿਹੜੀਆਂ ਮੁਸ਼ਕਲ ਹੈ ਇਹਦਾ ਸਥਾਈ ਜਿਹੜਾ ਹੱਲ ਹੈ ਉਹ ਇਹੀ ਹੈ ਕਿ ਜਿਨ੍ਹਾਂ ਨੂੰ ਉੱਥੇ ਕੋਈ ਜਾਣਦੇ ਐ ਪਾਰਟੀ ਦੇ ਬੰਦੇ ਇੱਥੇ ਸੁਣਦੇ ਐ ਸੁਨੇਹਾ ਦੋ ਆਪਣੇ ਨੇੜੇ ਦੇਆਂ ਨੂੰ ਕਿ ਉੱਥੇ ਬੋਰਡ ਸਾਰੀਆਂ ਪਛਾਵਾਂ ਦੇ ਵਿੱਚ ਲਿਖ ਕੇ ਲਾ ਦਿੱਤਾ ਜਾਵੇ ਬਾਹਰਲੇ ਬੰਨੇ ਕਿ ਇੱਥੇ ਕੀ ਕੀ ਉਹਦੇ ਦੇਖੇ ਵਾਲੇ ਦਾਲੇ ਜਿਹੜਾ ਸੁੰਦਰੀ ਕਰਨਾ ਹੈ ਉੱਥੇ ਜਿਹੜੇ ਪਾਸਿਓਂ ਵੱੜਦੇ ਆ ਘੰਟਾ ਘਰ ਵਾਲੇ ਪਾਸਿਓਂ ਤੇ ਉੱਥੇ ਲਿਖਿਆ ਜਾਵੇ ਕੁਛ ਜਾ ਕੇ ਕੀ ਕੀ ਤੁਸੀਂ ਕਰ ਸਕਦੇ ਕੀ ਕੀ ਨਹੀਂ ਕਰ ਸਕਦੇ ਤੇ ਬਾਕੀ ਜਿਹੜੇ ਸੇਵਾਦਾਰ ਆ ਉਹਨਾਂ ਉਹ ਦੱਸਣ ਜਿਹਨੂੰ ਕਿਤੇ ਵੇਖ ਲੈਂਦੇ ਆ ਭਾਈ ਫੋਨਾਂ 'ਤੇ ਇਹ ਸੈਲਫੀਆਂ ਜਿਹੜੀਆਂ ਇਹਨਾਂ ਨੂੰ ਤੁਸੀਂ ਖਿੱਚ ਸਕਦੇ ਹੋ ਆਪਸ ਵਿੱਚ ਤੇ ਪਰ ਨਾ ਦਰਵਾਜ਼ਾ ਸਾਹਿਬ ਦੇ ਅੰਦਰ ਜਾਂ ਛੱਤ ਤੇ ਜਾਂ ਉੱਥੇ ਨੀ ਇਹ ਕੰਮ ਕਰ ਸਕਦੇ ਇਹ ਬਹੁਤ ਵੱਡਾ ਪਰਵਰਤਨ ਪਿਛਲੇ 2-3 ਸਾਲਾਂ ਦੇ ਵਿੱਚ ਇਹ ਗੱਲ ਦਾ ਆਇਆ ਇਹ ਠੀਕ ਹੋਣਾ ਚਾਹੀਦਾ ਬਟੋਲੋ ਬ੍ਰਿਜ ਦੁਆਰਾ ਖੁੱਲ ਗਿਆ ਜੀ ਨੇ ਲਾ ਲਿਆ ਚਲੋ ਜਾਨ ਬਚ ਗਈ ਸੌਖਾ ਹੋ ਗਿਆ ਸ਼ੁਕਰ ਹੈ ਪੰਜਾਬ ਬੈਂਕਟ ਹਾਲ ਸ਼ਾਮਾ ਗਿਲ 6559876116045987611 ਵੱਡੀਆਂ ਛੋਟੀਆਂ ਪਾਰਟੀਆਂ ਇੱਥੇ ਜਾਂਦੀਆਂ ਸੂਬਾਜਨੀਤਿਕ ਇਕੱਠ ਕੋਈ ਪਿੰਡੂਆਂ ਦਾ ਇਕੱਠ ਕੋਈ ਵਿਆਹ ਸ਼ਾਦੀਆਂ ਦੀ ਪਾਰਟੀ ਕੋਈ ਕਰਨੀ ਹੈ ਤਾਂ ਸ਼ਾਮਾ ਗਿਲ 6045987611 ਪੂਰੀ ਤਰ੍ਹਾਂ ਰੀਨੋਵੇਸ਼ਨ ਕੀਤਾ ਬੈਂਕਟ ਹਾਲ ਸਾਰਾ ਫਰਨੀਚਰ ਨਮਾ ਸਾਊਂਡ ਸਿਸਟਮ ਤੇ ਉਸ ਤੋਂ ਬਾਅਦ ਸੇਵਾਪੂਰੀ 6045987611 88 ਟ੍ਰੱਕ ਬੋਡੀ ਐਂਡ ਪੇਂਟ 649401080 ICBC ਦੀ ਐਕਸਪ੍ਰੈਸ ਸ਼ਾਪ ਤੇ ਐਕਸਪ੍ਰੈਸ ਗਲਾਸ ਸ਼ਾਪ ਵੱਡੇ ਟਰੱਕ ਤੇ ਟ੍ਰੇਲਰ ਡੰਪ ਟਰੱਕ ਜਿਹੜੇ ਉਹ ਬੋਡੀ ਵਰਕ ਦਾ ਉਹਦਾ ਕੰਮ ਤੇ ਪੇਂਟ ਦਾ ਕੰਮ ਕੀਤਾ ਜਾਂਦਾ ਸੈਂਡ ਬਲਾਸਟਿੰਗ ਦਾ ਖਾਸ ਪ੍ਰਬੰਧ ਦਾ ਪ੍ਰਾਣਾ ਜਿਹੜਾ ਬਾਹਰ ਮਸ਼ੀਨਾਂ ਖੜ੍ਹਦੀਆਂ ਉਹਨਾਂ ਉੱਤੇ ਜੰਗਾਲ ਲੱਗ ਜਾਂਦਾ ਲਾ ਕੇ ਨਵਾਂ ਪੇਂਟ ਚੜ੍ਹਦੇ ਆ ਤੇ 6049401080 ਟੱਟ ਬ੍ਰਦਰਸ ਦੀ ਇਹ ਫੈਸਿਲਿਟੀ ਹੈ ਜੈਰੀ ਬ੍ਰਾਡ 6047628899 ਬੈਸਟੀਲ ਇਨਵੈਸਟਰੇਟਸ ਜੈਰੀ ਬ੍ਰਾਡ ਬੀਸੀ ਸਵਾਮਾ ਦਿੰਦੇ ਆ ਤੁਹਾਨੂੰ कोई भी ਮੌਰਗੇਜ ਤੁਸੀਂ ਲੈਣੀ ਹੈ ਜੈਰੀ ਬਰਾੜ ਦਾ ਨਾਮ ਯਾਦ ਰੱਖਿਓ ਕਿਤੇ ਵੀ ਬੈਠੇ ਹੋ ਪਰਸਨਲ ਜਿਹੜੀ ਮੌਰਗੇਜ ਹੈ ਉਹ ਵੀ ਜਿਹੜੀ ਪ੍ਰਾਈਵੇਟ ਲੈਂਡਿੰਗ ਆ ਉਹ ਕਰਾ ਦਿੰਦੇ ਆ 60476288889 ਪ੍ਰਮੇਂਦਰ ਥੰਦ ਆਰਆਰਐਸਪੀ ਆਰਈਐਸਪੀ ਤੇ ਈਐਫਐਸਸੀ ਇਹਦਾ ਹੁਣ ਸਮਝ ਆ ਰਿਹਾ ਅਲਬਰਟਾ ਦੇ ਵਿੱਚ ਇੱਥੇ ਸੁਆਮਾ ਰਮਨਦੀਪ ਸਿੰਘ ਸੋਦਤਾ ਤੇ ਪ੍ਰਮੇਂਦਰ ਸਿੰਘ ਨਾਲ ਤੁਸੀਂ ਗੱਲਬਾਤ ਤੇ ਦੇ ਵਿੱਚ ਮੈਂ ਵੇਟ ਕਰ ਰਿਹਾ ਸੀ ਜੋ ਹੌਲਾ ਨਾਲ ਯੂਨੀਫੋਰਸ ਤੋਂ ਗੱਲਬਾਤ ਮੈਂ ਕਰਨੀ ਸੀ ਟ੍ਰਕਿੰਗ ਸਟ੍ਰਾਈਕ ਜਿਹੜੀ ਟ੍ਰਕਿੰਗ ਕੰਟੇਨਰ ਟਰੱਕਰਸ ਦੀ ਮੁਸ਼ਕਲ ਹੈ ਉਸ ਨੂੰ ਪ੍ਰੈਸ ਕਾਨਫਰੰਸ 'ਚ ਆ ਨਹੀਂ ਸਕੇ ਯੂਨੀਫੋਰ ਇੱਕ ਯੂਨੀਅਨ ਹੈ ਜਿਹੜੀ ਯੂਟੀਏ ਦੇ ਨਾਲ ਹੁਣ ਲੱਗ ਕੇ ਕੰਮ ਕਰ ਰਹੀ ਹੈ ਹੋ ਸਕਦਾ ਇਸ ਚੀਜ਼ ਦਾ ਕੋਈ ਹੱਲ ਹੋ ਜਵੇ ਹੁਣ ਹੀਟ ਬਹੁਤ ਵਧੀ ਹੋਈ ਐ ਥਰਡ ਲੈਵਲ ਤੇ ਲੋਕਲ ਤੇ ਮੈਪੋਰਟ ਤੇ ਪ੍ਰੋਵਿੰਸ਼ਲ ਤੇ ਤੇ ਫੈਡਰਲ ਵਾਲੇ ਵੀ ਹੁਣ ਸਿਪਾਸ ਲਾਰ ਭੱਜੇ ਫਿਰਦੇ ਆ ਕਿਉਂਕਿ ਨੌ ਆਉਣ ਲੱਗੇ ਬਾਹਰ ਕੁਝ ਗੱਲ ਬਣੂਗੀ ਪਹਿਲਾਂ ਹੀ ਦੇਣੇ ਸੀ ਸਮਾਂ ਲਾਤਾ ਤੁਸੀਂ ਜਿਹੜਾ ਕੋਈ ਕਰਦਾ ਨਹੀਂ ਕੰਮ ਉਹਦੇ ਉਹਨੂੰ ਲੁਕੋ ਕੇ ਵੀ ਕੀ ਕਰਨਾ ਇਹਨਾਂ ਦੀਆਂ ਚਿੱਠੀਆਂ ਚੁੱਕੀਆਂ ਨਾਲ ਵੀ ਜੇ ਮਿਲਦੇ ਐਵੇਂ ਨਾ ਇਹਨਾਂ ਦੇ ਫਿਰਿਆ ਕਰੋ ਹੱਥ ਜੋੜਦੇ ਉਈਓ ਐਪਲੀਕੇਸ਼ਨ ਵਧੀਆ ਕਰ ਲਿਆ ਕਰੋ ਚਾਰ ਪੈਸੇ ਬੈਂਕ ਚ ਹੁਣ ਵੀਜ਼ਾ ਦੇ ਦਿੰਦੇ ਨੇ ਉਹ ਇਹਨਾਂ ਦੇ ਵੀ ਚਿੱਠੀ ਨੂੰ ਇੱਕ ਮਿੰਟ ਕਰਦੇ ਆ ਸ਼ਰੇਡਰ ਤੇ ਜਦ ਤੱਕ ਜੋਹਰੂਣੀ ਫੋਨ ਕਰਦੇ ਇੱਕ ਗੀਤ ਭੁੱਲਰ ਦਾ ਫਿਰ ਵੈਲੈਂਟਾਈਨ ਡੇ ਪਿਆਰ ਕਰਨ ਵਾਲੇ ਇੱਕ ਦਿਨੇ ਪਿਆਰ ਕਰਦੇ 364 ਦਿਨਾਂ ਦਾ ਕੀ ਹਸਾਕਤਾ ਵਾ ਅੱਜ ਦੀ ਦੁਨੀਆ ਦੇ ਵਿੱਚ ਇਹ ਸ਼ਬਦ ਦੀ ਕਿੰਨੀ ਕਿ ਹੈ ਮੈਨੂੰ ਤਾਂ ਲੱਗਦਾ ਹੈ ਪ੍ਰਾਈਸ ਟੈਗ ਹੈ ਤੇ ਇਹਦੀ ਐਕਸਪਾਇਰੀ ਹੁੰਦੀ ਹੈ ਪੱਕਾ ਕੱਖ ਨਹੀਂ ਹੈ ਇੱਥੇ। ਔਰ ਉਹ ਪਿਆਰ ਜਿਸ ਨੂੰ ਸਮਾਜ ਹੈ ਜਿਹੜਾ ਉਹ ਮਾਨਤਾ ਨਹੀਂ ਦਿੰਦਾ ਉਹ ਪਿਆਰਾਂ ਦੇ ਗੀਤ ਉਹ ਪਿਆਰਾਂ ਦੀਆਂ ਗੱਲਾਂ ਬੜਾ ਕੁਝ ਚੱਲਦਾ ਹੈ। ਬਹੁਤ ਘੱਟ ਇਹ ਸਿਸਟਮ ਹੈ ਜਿਸ ਦੇ ਵਿੱਚ ਲੋਕ ਕਹਿ ਸਕਣ ਬਈ ਪਿਆਰ ਵੀ ਕੀਤਾ ਸਾਡੀ ਜ਼ਿੰਦਗੀ ਵੀ ਖੁਸ਼ ਹੈ ਔਰ ਹਰ ਰੋਜ਼ ਇਹ ਨਵਾਂ ਦਿਨ ਹਰ ਰੋਜ਼ ਇਸਦੀ ਇੰਪੁੱਟ ਹੈ। ਇਸ ਨੂੰ ਨਿਬਿਆਉਣਾ ਪੈਂਦਾ ਆਪਾਂ ਕਰਦੇ ਆਂ ਅਸਲ ਕੀ ਹੈ ਗੱਲਾਂ ਬਹੁਤ ਕਰ ਸਕਦੇ ਆ ਤੁਸੀਂ ਸੱਲ ਸੱਦ ਲੋ ਕਿਸ ਨੂੰ ਅਸੀਂ ਜੀ ਫਿਰ ਆਇਆ ਕਰਤਾ ਫਿਰ ਮੈਂ ਚਿੱਠੀ ਪਾਤੀ ਫਿਰ ਅਸੀਂ ਕਾਫੀ ਪੀਣ ਚਲੇ ਲੱਗ ਗਏ ਨੇ ਮੈਨੂੰ ਫੁੱਲ ਦੇਤਾ ਮੈਂ ਫੁੱਲ ਫਿਰ ਸੋਂਕੇ ਇਹਨਾਂ ਨੂੰ ਵਾਪਸ ਦੇਤਾ ਪਰ ਅਸੀਂ ਦੋਨੇ ਅਨਾਰ ਕਵੀ ਬਾਜ਼ਾਰ ਚਲੇ ਗਏ ਇਹਨੇ ਮੈਨੂੰ ਝੁਮਕੇ ਲੈ ਤੇ ਮੈਂ ਦਾੜੀ ਵਾਲੀ ਫਿਕਸੋ ਲੈਤੀ ਤੇ ਫੇਰ ਸਾਡਾ ਤਿਉ ਹੋ ਗਿਆ ਐਵੇਂ ਗੱਲਾਂ ਦਾ ਜੀਤ ਇੱਕ ਅਜਿਹਾ ਸ਼ਬਦ ਹੈ ਜਿਸ ਸਾਰੇ ਚਾਹੁੰਦੇ ਆ ਪਿਆਰ ਜਿਸ ਨੂੰ ਕਿਹਾ ਜਾਂਦਾ ਇਹ ਸ਼ਬਦ ਇੱਕੋ ਹੈ ਪਰ ਅਲੱਗ-ਅਲੱਗ ਰਿਸ਼ਤਿਆਂ ਦੇ ਵਿੱਚ ਇਹ ਜਜ਼ਬ ਹੋ ਜਾਂਦਾ ਹੈ ਇਸ ਨਾਮ ਤੋਂ ਬਿਨਾ ਇਸ ਸ਼ਬਦ ਤੋਂ ਬਿਨਾ ਕੁਝ ਵੀ ਨਹੀਂ ਹੈ ਪਿਆਰ ਤੋਂ ਬਿਨਾ ਜਿਹੜਾ ਸਰਵ ਸ਼ਕਤੀਮਾਨ ਹੈ ਦੁਨੀਆ ਨੂੰ ਬਣਾਉਣ ਵਾਲਾ ਉਹ ਵੀ ਪਿਆਰ ਤੋਂ ਬਿਨਾ ਨਹੀਂ ਮਿਲਦਾ ਫਿਰ ਇਸ ਸੰਸਾਰ ਦੇ ਵਿੱਚ ਈਵਨ ਤੁਹਾਡਾ ਕੋਈ ਪੈਟ ਵੀ ਰੱਖਿਆ ਹੈ ਕੋਈ ਪਾਲਤੂ ਜਾਨਵਰ ਵੀ ਰੱਖਿਆ ਹੈ ਉਬੀ ਬਿਨਾ ਪਿਆਰ ਤੋਂ ਤੁਹਾਡਾ ਤਿਉ ਨਹੀਂ ਕਰਦਾ ਰਿਸ਼ਿਆਂ ਦੇ ਵਿੱਚ ਧੀ ਪੁੱਤਾਂ ਦੇ ਨਾਲ ਭੈਣ ਭਾਈਆਂ ਨਾਲ ਮਾਪਿਆਂ ਦੇ ਨਾਲ ਪਿਆਰ ਤੋਂ ਬਿਨਾ ਕੁਝ ਨਹੀਂ ਪਿਆਰ ਦੇ ਆਲੇ ਦਾ ਸਾਰਾ ਕੁਝ ਪ੍ਰਯਾਸ ਕਰਦਾ ਹੈ ਅਲੱਗ ਅਲੱਗ ਅਲੱਗ ਲਾ ਕੋਈ ਤਿਉਹ ਕਹਿੰਦਾ ਉਹ ਕਹਿੰਦਾ ਬਾਹਲਾ ਤਿਉਹ ਆ ਤੇਰੇ ਨਾਲ ਮਾਲ ਵਿੱਚ ਕਹਿੰਦੇ ਬਹੁਤ ਪਿਆਰ ਆਉਂਦਾ ਤੇਰਾ ਅਲੱਗ ਅਲੱਗ ਬੋਲੀ ਹੈ ਅੱਜ ਦੇ ਦਿਨ ਇਸ ਸੰਤ ਦੇ ਵੈਲੰਟਾਈਨ ਦੇ ਦੇ ਪਿੱਛੇ ਕੋਈ ਵੀ ਕਹਾਣੀ ਹੋਵੇ ਬਹੁਤ ਗੱਲਾਂ ਹੁੰਦੀਆਂ ਅੱਜ ਦੇ ਦਿਨ ਬੜੇ ਜਿਹੜੀਆਂ ਕਹਾਣੀਆਂ ਰੇਡੀਓ ਤੇ ਪਾਈਆਂ ਜਾਂਦੀਆਂ ਪਿਆਰ ਦੀ ਕਥਾ ਸੁਣਾਓ ਜੀ ਜੋੜੇ ਸਪੈਸ਼ਲ ਤਿਆਰ ਹੋ ਕੇ ਜਾਂਦੇ ਐ ਤੇ ਜਵਾਨੀ ਮੁਰਕ ਕੇ ਚੜਾ ਲੈਂਦੇ ਐ ਪੂਰਾ ਫਿੱਟ ਕਰ ਲੈਂਦੇ ਐ ਤੇ ਦੱਸ ਦਿੰਦੇ ਜਨਤਕ ਦੱਸ ਦਿੰਦੇ ਆ ਵੀ ਅਸੀਂ ਫਲਾਣੀ ਜਗ੍ਹਾ ਮਿਲੇ ਵਾ ਮਿਲੇ ਉਸ ਤਰ੍ਹਾਂ ਮਿਲੇ ਪਰ ਉਸੇ ਸੇਮ ਟੋਕਨ ਤੇ ਅਸਲ ਜ਼ਿੰਦਗੀ ਤੋਂ ਕੋਹਾਂ ਦੂਰ ਹੋ ਕੇ ਅਸੀਂ ਜਨਤਕ ਤੌਰ ਤੇ ਜਾਂ ਆਮ ਲੋਕਾਂ ਦੇ ਵਿੱਚ ਵਧੀਆ ਗੱਲਾਂ ਕਰਦੇ ਹਾਂ। ਕਸੈਲਾਪਣ ਜਿਹੜਾ ਹੈ ਉਹ ਅੱਜ ਦੇ ਦਿਨ ਤੇ ਗੱਲ ਦੇ ਦਿਲੋਂ ਕੱਢ ਹੋਰ ਚੀਜ਼ਾਂ ਵਿਸਾਰ ਕੇ ਚੰਗਾ ਹੀ ਚੰਗਾ ਚੰਗਾ ਹੀ ਚੰਗਾ ਚੰਗਾ ਚੰਗਾ ਚੰਗਾ ਹੀ ਚੰਗਾ ਕਹੀ ਜਾਂਦਾ ਮਾੜਾ ਕੋਈ ਨਹੀਂ ਕਹਿੰਦਾ ਪਰ ਮਾੜਾ ਪੈਰਲਲ ਚੱਲ ਰਿਹਾ ਹਰ ਰੋਜ਼ ਕਿਤੇ ਚੀਨੀ ਖਾਧੀ ਜਾਂਦੀ ਹੈ ਗੁੜ ਹਰ ਰੋਜ਼ ਕਿਤੇ ਖਾਧਾ ਜਾਂਦਾ ਕੌੜਾ ਵੀ ਖਾਣਾ ਪੈਂਦਾ ਪਿਆਰ ਦੇ ਨਾਲ ਖਿੱਚ ਤਾਣ ਵੀ ਚਲਦੀ ਹੈ ਉਹਦੀ ਵੀ ਗੱਲ ਨਾਲ ਅੱਜ ਦੇ ਯੁੱਗ ਦੇ ਸਾਡੀਆਂ ਜਿਹੜੀਆਂ ਲੋਕ ਕਥਾਵਾਂ ਨੇ ਉਹਨਾਂ ਕੋਈ ਹੋਵੇ ਉਹਨਾਂ ਨੇ ਕੋਈ ਹੋਵੇ ਬਹੁਤ ਹੀਰ ਲਿਖੀ ਸੋਹਣੀ ਮਹਿਵਾਲ ਦੀ ਗੱਲ ਚਲਦੀ ਹੈ ਤੇ ਉਸ ਤੋਂ ਬਾਅਦ ਸ਼੍ਰੀ ਫਰਹਾਦ ਦੀ ਮਰਜ਼ੇ ਦੀ ਗੱਲ ਚਲਦੀ ਹੈ ਬੇਗੋਨਾਰ ਦੀ ਗੱਲ ਚਲਦੀ ਹੈ ਬੜਾ ਕੁਸ਼ ਹੈ ਮਾਨਕ ਨੇ ਬਹੁਤ ਗਾਇਆ ਪਿਆਰ ਤੇ ਕੁਰਬਾਨੀ ਦੋ ਚੀਜ਼ਾਂ ਬਰਾਬਰ ਚੱਲਦੀਆਂ ਨੇ ਪਰ ਅੱਜ ਦੇ ਜਿਹੜਾ ਸਮਾਜ ਹੈ ਜਿਹੜਾ ਕੋਈ ਇਲਾਹੀ ਚੀਜ਼ਾਂ ਨਹੀਂ ਇਲਾਹੀ ਨੋਰਮਸ ਦੇ ਉੱਪਰੋਂ ਕੋਈ ਜਿਹੜੇ ਸੈਕਰਡ ਨੋਰਮਸ ਨਹੀਂ ਆਏ ਹਰ ਇੱਕ ਕਬੀਲੇ ਨੇ ਹਰ ਇੱਕ ਧਰਮ ਨੇ ਹਰ ਇੱਕ ਸਭਿਆਚਾਰ ਨੇ ਆਪਣੇ ਆਪ ਜਿਹੜੇ ਨੇ ਉਹ ਕਾਇਦੇ ਕਾਨੂੰਨ ਜਿਹਦਾ ਨਵਾਂ ਸਮਾਜ ਹੈ ਬੰਦਿਆਂ ਨੇ ਬਣਾਇਆ ਲੋਕਾਈ ਨੇ ਬਣਾਇਆ ਉਹ ਸਮਾਜ ਦੇ ਵਿੱਚ ਫਿਰ ਉਹਨਾਂ ਦੀਆਂ ਬੰਨਗੀਆਂ ਕਰ ਦਿੱਤੀ ਕਿ ਆਹ ਚੀਜ਼ ਤੇ ਮਾੜੀ ਆ ਆਹ ਚੀਜ਼ ਚੰਗੀ ਆ ਪਰ ਉਹ ਮਾੜੀ ਤੇ ਚੰਗੀ ਜਦ ਹੀ ਆ ਜਦ ਤੱਕ ਉਹ ਜਨਤਕ ਨਹੀਂ ਹੁੰਦੀ ਜਾਂ ਜਨਤਕ ਹੋ ਜਾਂਦੀ ਹੈ ਚੋਰੀਆਂ ਯਾਰੀਆਂ ਠੱਗੀਆਂ ਲੋਕ ਸਦੀਆਂ ਤੋਂੜਦੇ ਆਏ ਪਰ ਨਹੀਂ ਪਤਾ ਲੱਗਦੀ ਤਾਂ ਉਹ ਲੁਕ ਜਾਂਦੀਆਂ ਜਿਹਦੇ ਪਤਾ ਲੱਗ ਗਿਆ ਉਹਨੂੰ ਪਹਿਹੇ ਚ ਖੜਾ ਲੈਂਦੇ ਨੇ ਫਿਰ ਸਾਰੇ ਮੇਰਾ ਭਾਈ ਇਹ ਕੰਮ ਤੇਰਾ ਮਾੜਾ ਐ ਇਹ ਇਹ ਨਹੀਂ ਗੱਲ ਠੀਕ ਤੁਸੀਂ ਇਹ ਹੈ ਤੁਸੀਂ ਉਹ ਹੈ ਇਹ ਸਾਰੀਆਂ ਗੱਲਾਂ ਚੱਲਦੀਆਂ ਪੰਚਾਇਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਠਾਣਿਆਂ ਦੇ ਵਿੱਚ ਤੇ ਖਾਸ ਤੌਰ ਤੇ ਜਿਆਦੀਆਂ ਮੂਵੀਆਂ ਸ਼ੂਗੀਆਂ ਬਣ ਲੱਗੀਆਂ ਪੰਜਾਬ ਤੋਂ ਤੇ ਦਿਖਾਈ ਜਾਂਦੀ ਐ ਅੱਜ ਉਹਨੂੰ ਕੁਛ ਪਛਲਾ ਵੈਲੈਂਟਾਈਨ ਨੂੰ ਬਹੁਤ ਸਿਰੇ ਆ ਪ੍ਰੇਮ ਵਾਲੇ ਬਾਬੇ ਦਾ ਦਿਨ ਐ ਅੱਜ ਪਰ ਜਿਹੜੀ ਚੀਜ਼ ਨੂੰ ਤੁਸੀਂ ਐਕਸੈਪਟ ਨਹੀਂ ਕਰਾ ਸਕਦੇ ਜਾਂ ਤਾਂ ਹੈ ਨਾ ਵੀ ਪਿਆਰ ਸੰਪੂਰਨ ਹੋ ਜਵੇ ਤੁਸੀਂ ਇਕ ਜ਼ਰਗੀ ਦੇ ਵਿੱਚ ਇਕੱਠੇ ਰਹੋ ਇਹ ਫੇਰ ਤਾਂ ਉਹਦੀ ਗੱਲ ਹੈ ਇਹ ਹਿੱੱਫਾ ਹੈ ਪਰ ਇਸ ਕਹਾਣੀ ਦਾ ਅੱਜ ਦੇ ਦਿਨ ਇੱਕ ਦਿਨ ਇਸ ਨੂੰ ਵਧੀਆ ਬਣਾ ਕੇ ਬਾਕੀ 364 ਦਿਨ ਦੀ ਇਨਪੁਟ ਦੀ ਜ਼ਰੂਰਤ ਹੈ ਜਾਂ ਨਹੀਂ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਦਾ ਵੈਲੈਂਟਾਈਨਸ ਡੇ ਹੈ ਇਹਦੇ ਵਿੱਚ ਉਹ ਜੀ ਫਲਾਵ ਦਾ ਫਲ ਦਵਾਂ ਮੈਂ ਚਾਕਲੇਟ ਦਵਾਂ ਮੈਂ ਆਹ ਦਵਾਂ ਮੈਂ ਲਵ ਯੂ ਕਹਾਂ ਫੇ ਮੇਰੀ ਜਿਹੜੇ ਪਿਆਰ ਕਰਨ ਵਾਲੀ ਆ ਕਰਨ ਵਾਲਾ ਉਹ ਮੈਨੂੰ ਖੜਕਣ ਲੱਗੇ ਘੰਟਾ ਨਹੀਂ ਦਾ ਦੂਜਾ ਨੋ ਕੰਟਰੋਲ ਹੈਗਾ ਇੱਥੇ ਲਤ ਫੱਲੇ ਦੀ ਨੰਗ ਗਿਆ ਉਹ ਨਾਲ ਪਿਆਰ ਆ ਲਤ ਦੇ ਉੱਪਰ ਦੀ ਝਾਗ ਗਿਆ ਨਾਲ ਕੋਈ ਪਿਆਰ ਨਹੀਂ ਰਾਈਫ ਸਟੈਗ ਡੇਟ ਐ ਇਸ ਦੀਆਂ ਗੱਲਾਂ ਜਿਹੜੀਆਂ ਉਹ ਤਾਂ ਇੱਕ ਸਬਜੈਕਟ ਹੈ ਜਿਹਨੂੰ ਸਿੱਧਿਆ ਕਰਨਾ ਬਹੁਤ ਔਖਾ ਹੈ। ਇਹਦੇ ਬਾਰੇ ਬੋਲਣਾ ਬਹੁਤ ਔਖਾ ਹੈ। ਇਸ ਨੂੰ ਸਮਝਣਾ ਬਹੁਤ ਔਖਾ ਹੈ। ਪਰ ਸੱਚ ਬੋਲਿਆਂ ਗੱਲ ਸੱਚ ਤਾਂ ਇਹੀ ਹੈ ਅੱਜ ਦੇ ਇਸ ਸੰਸਾਰ ਦੇ ਵਿੱਚ ਅਹੁਦਿਆਂ ਦਾ ਪਿਆਰ ਆ, ਰੁਤਬਿਆਂ ਦਾ ਪਿਆਰ ਆ, ਰੰਗਾਂ ਦਾ ਪਿਆਰ ਆ, ਕਮਿਊਨਿਟੀ ਦੇ ਵਿੱਚ ਜਗ੍ਹਾ ਕਿੱਥੇ ਆ ਕਿਸੇ ਇਨਸਾਨ ਦੀ ਉਹਦਾ ਪਿਆਰ ਹੈ। ਦੋ ਚੀਜ਼ਾਂ ਹੈ ਦੋ ਚੀਜਾਂ ਅੱਖਾਂ ਨੂੰ ਜਿਹੜੀ ਸੋਹਣੀ ਲੱਗਦੀ ਉਹ ਹੈ ਨਾਲ ਇਹ ਵੀ ਵੇਖਣਾ ਚਾਹੀਦਾ ਪੈਣਾ ਇਹਦਾ ਲੈਵਲ ਕੀ ਹੈ ਪੈਸਾ ਢੇਲਾ ਕਿੰਨਾ ਹੈ ਅੱਖ ਪੜਕਣਾ ਰੰਗ ਦੇਖਣਾ ਪੈਣਾ ਬਨਗੀ ਦੇਖਣੀ ਪਣੀ ਸਰੀਰ ਵੇਖਣਾ ਪੈਣਾ ਅਨਦਰ ਵੇ ਇਹ ਗੱਲਾਂ ਰੂਹਾਂ ਦੇ ਪਿਆਰ ਦੀਆਂ ਇਹ ਨਹੀਂ ਗਲਤ ਇਹ ਹੈ ਵੀ ਇਸ ਬਾਡੀ ਦੀ ਨੀਡ ਹੈ ਉਹਨੂੰ ਪਿਆਰ ਕਹਿ ਲੋ ਰਿਸ਼ਤੇ ਕਹਿ ਲੋ ਸੰਬੰਧ ਕਹਿ ਲੋ ਇਹ ਲਵਰਜ਼ ਆ ਜਿਹੜਾ ਸਭ ਗੱਲਾਂ ਕਰਨ ਵਾਲੀਆਂ ਨੇ ਬਸ ਇੱਜ਼ਤਾ ਤੁਸੀਂ ਉੱਥੇ ਇਨਪੁੱਟ ਕਰ ਸਕਦੇ ਹੋ ਜਿੱਥੇ ਤੁਸੀਂ ਇਕੱਠੇ ਰਹਿੰਦੇ ਹੋ ਤੇ ਜਿੱਥੇ ਤੁਸੀਂ ਵਧੀਆ ਚੀਜ਼ਾਂ ਕੁਝ ਕਰ ਸਕਦੇ ਹੋ ਜਿੱਥੇ ਸਮਝਾ ਸਕਦੇ ਉਹ ਸਬੰਧ ਦੇ ਵਿੱਚ ਜਿੱਥੇ ਤੁਹਾਡੇ ਕੋਲ ਸਮਾਂ ਹੈ ਨਹੀਂ ਇੱਕ ਦੂਜੇ ਨੂੰ ਸਮਝਾਉਣ ਦਾ ਸਮਝਣ ਦਾ ਉਹਦੀ ਸਾਰਥਕਤਾ ਕਿੰਨੀ ਲੰਬੀ ਚੱਲੇ ਜਾਏਗੀ ਕਿਉਂਕਿ ਮੁਸ਼ਕਲ ਇਹ ਹੁੰਦੀ ਹੈ ਅਸਥਾਈ ਸਬੰਧਾਂ ਦੇ ਵਿੱਚ ਜਿੱਥੇ ਤੁਸੀਂ ਆਪਣੀ ਜ਼ਿੰਦਗੀ ਦਾ ਚਿੱਠਾ ਖੋਲਤਾ ਕਿਸੇ ਕੋਲ ਜ਼ਿੰਦਗੀ ਦੀਆਂ ਗੱਲਾਂ ਦੱਸਦੇ ਆ ਓਬਵੀਅਸਲੀ ਜਿਹਦੇ ਨਾਲ ਤੁਹਾਡਾ ਪਿਆਰ ਹੈ ਉਹਦੇ ਕੋਲ ਤੁਸੀਂ ਜ਼ਿੰਦਗੀ ਦੀਆਂ ਗੱਲਾਂ ਕਰੋਗੇ ਪਰ ਤਜਰਬੇ ਲੋਕਾਂ ਦੇ ਇਹ ਕਹਿੰਦੇ ਨੇ ਵੀ ਜਿੰਨੇ ਜਿਹੜੇ ਤੁਹਾਡੀ ਛਾਤੀ ਵਿੰਨ ਕੇ ਆਣਗੇ ਤੁਸੀਂ ਦੱਸਦੇ ਹੋ ਇੱਕ ਵਾਰ ਨਹੀਂ ਜਿਨ੍ਹਾਂ ਨਾਲ ਜਿੰਨਿਆਂ ਨੇ ਹੋਈ ਆ ਪਰ ਅਕਸਰ ਹੁਣ ਗੱਲ ਇਹ ਹੈ ਵੀ ਜ਼ਿੰਦਗੀ ਦੇ ਵਿੱਚ ਉਸ ਲੈਵਲ ਨੂੰ ਵਧਾਉਣ ਦੇ ਲਈ ਤੁਹਾਨੂੰ ਜ਼ਿੰਦਗੀ ਦੀ ਸਾਰਜ ਤਾਂ ਤੁਹਾਨੂੰ ਪੌਣੀਓ ਪੈਣੀ ਹੈ ਦੱਸਣਾ ਤਾਂ ਪੈਣਾ ਹੀ ਆ ਮੈਂ ਆ ਕਰਦਾ ਸੀ ਮੈਂ ਆ ਕਰਦਾ ਸੀ ਮੈਂ ਆ ਮੇਰੇ ਨਾਲ ਆ ਹੋਇਆ ਮੇਰੇ ਨਾਲ ਆ ਹੋਇਆ ਹੁਣ ਮੇਰੇ ਨਾਲ ਠੀਕ ਹੋ ਜੂ ਉਹ ਤਵਕਕੂ ਕਰਦਾ ਜਾਂ ਕਰਦੀ ਹੈ ਪਰ ਨਿਕਲਿਆ ਜਾਂ ਉਹ ਨਿਕਲਿਆ ਬੰਦਾ ਨਿਕਲ ਨਹੀਂ ਸਕਦਾ ਬਹੁਤ ਘਟ ਹੋਣਗੇ ਜਿਹੜਾ ਕਹੇ ਵੀ ਚੰਗਾ ਜੇ ਹੁਣ ਤੈਨੂੰ ਹੁਣ ਤੱਕ ਤਾਕਤ ਹੋ ਗਈ ਹੁਣ ਤਪਸ਼ ਨਹੀਂ ਹੋ ਸਕਦਾ ਹੱਥ ਜਿਹੜੇ ਨਹੀਂ ਜਦ ਤੱਕ ਕਿਸੇ ਨੂੰ ਸਾਬਦੇ ਨਹੀਂ ਕਿਸੇ ਨੂੰ ਸਤਕਾਰ ਨਹੀਂ ਦਿੰਦੇ ਜੇ ਆਪਣੀਆਂ ਲੋੜਾਂ ਤੋਂ ਉੱਪਰ ਉੱਠ ਕੇ ਆਪਣੇ ਲੈਵਲ ਤੋਂ ਉੱਪਰ ਉੱਠ ਕੇ ਸਿਰ ਤੇ ਸਿਰ ਪਿਆਰ ਆ ਵੀ ਉਹਦੇ ਵਿੱਚ ਕੁਝ ਨਹੀਂ ਦੇਖਿਆ ਜਾਂਦਾ ਵੀ ਤੇਰੇ ਕੋਲ ਪੈਸਾ ਤੇਰਾ ਸਰੀਰ ਕਹਿ ਜਾ ਤੇਰੇ ਕੋਲ ਕੱਪੜਾ ਲੱਤਾਂ ਕਹਿ ਜਾਂ ਤੂੰ ਕਰਦੀਆਂ ਫੇਰ ਤਾਂ ਹੈ ਗੱਲ ਪਰ ਇੱਥੇ ਬਦ ਦੂਜ਼ਨ ਡਾਂਸ ਦੇ ਤਾਂ ਜੇ ਤੁਸੀਂ ਬਣਾਉਣਾ ਹੋਵੇ ਖਾਕਾ ਖਿੱਚਦੇ ਅੱਛਾ ਆ ਬੰਦਾ ਜਾਂ ਇਸਤਰੀ ਆ ਲੈਵਲ ਆ ਗੁੱਡ ਲੁਕਿੰਗ ਨਹੀਂ ਗੁਣ ਕਿੰਨੇ ਐ ਸਫਾਈ ਕਿੰਨੀ ਕਾ ਗੱਲ ਕਹਿ ਜੀ ਐ ਨਖਰਾ ਕਿੰਨਾ ਕਾ ਬੰਦੇ ਚ ਮੜਖ ਕਿੰਨੀ ਕਾ ਸਾਰੀਆਂ ਚੀਜ਼ਾਂ ਹੁਣ ਇਹਨੂੰ ਲੁਕੋ ਕੇ ਕਹਿ ਦੋ ਜੀ ਇਹ ਸਬੰਧ ਨੇ ਜੀ ਇਹ ਪਿਆਰ ਐ ਔਰ ਗੱਲ ਆ ਕੇ ਸਰੀਰ ਤੇ ਰੁਕ ਜਾਂਦੀ ਆ ਮੰਨੋ ਨਾ ਮੰਨੋ ਜਦ ਪਿਆਰ ਸਰੀਰਕ ਜ਼ਰੂਰਤ ਪੂਰਾ ਹੁੰਦਾ ਸਰੀਰ ਦੀ ਜ਼ਰੂਰਤ ਨਹੀਂ ਪੂਰੀ ਹੁੰਦੀ ਲੋਕ ਹੋ ਗਏ ਹੋ ਗਏ ਹੋ ਗਏ ਮੈਂ ਵੀ ਨਹੀਂ ਲੰਗਦਾ ਫੇ ਇਹਦੇ ਨਾਲੋਂ ਇਹ ਡੰਬਰ ਰਚਣ ਨਾਲੋਂ ਇਹ ਪਿਆਰ ਦੇ ਚੱਕਰ ਪਾਉਣ ਨਾਲ ਫੁੱਲਾਂ ਤੇ ਚਾਕਲੇਟ ਤੋਂ ਬਿਨਾਂ ਗੱਲ ਹੀ ਉੱਥੇ ਖੜਾਈ ਜਾਵੇ ਵੀ ਦੇਖੋ ਵੀ ਇਹ ਆਪਣੀ ਜ਼ਿੰਦਗੀ ਦੀ ਜ਼ਰੂਰਤ ਹੈ ਇਹ ਜ਼ਿੰਦਗੀ ਦੀ ਜ਼ਰੂਰਤ ਜਿਵੇਂ ਰੋਟੀ ਖਾਣਿਆ ਉਸ ਤਰ੍ਹਾਂ ਹੀ ਇੱਕ ਜ਼ਿੰਦਗੀ ਦੀ ਜ਼ਰੂਰਤ ਹੈ ਇਹਨੂੰ ਜ਼ਿੰਦਗੀ ਦੀ ਜ਼ਰੂਰਤ ਤੱਕ ਰੱਖਿਆ ਜਾ ਸਥਾਈ ਤੌਰ ਤੇ ਪੱਕਾ ਇੱਕ ਛੱਤ ਥੱਲੇ ਤੁਸੀਂ ਜ਼ਿੰਦਗੀ ਜਿਉਂ ਸਕਦੇ ਹੋ ਫਿਰ ਤਾਂ ਹੈ ਸਵਾਦ ਉਹ ਗੱਲ ਦਾ ਫੇਰ ਪਿਆਰ ਕੀਤਾ ਤੇ ਉਹ ਪ੍ਰਵਾਨ ਚੜਾ ਜਿਹੜਾ ਪਿਆਰ ਤੁਸੀਂ ਲੁਕ ਕੇ ਕਰਨਾ ਹੈ ਜਿਹੜਾ ਜਨਤਕ ਨਹੀਂ ਹੋ ਸਕਦਾ ਜਿਹਨੂੰ ਸਮਾਜ ਐਕਸੈਪਟ ਨਹੀਂ ਕਰਦਾ ਉਹ ਪਿਆਰ ਨੂੰ ਤੁਸੀਂ ਪ੍ਰਵਾਨ ਨਹੀਂ ਕਹਿ ਸਕਦੇ ਪਿਆਰ ਜਨਤਕ ਹੋਵੇ ਕੇ ਪਿਆਰ ਦੀ ਖਾਤਰ ਹੁਣ ਅਗਰ ਆ ਤੂੰ ਬਸ ਇੱਕ ਕਮਾਲ ਹੋ ਗਿਆ ਤੂੰ ਤਾਂ ਬਸ ਦੇ ਪਿੱਛੇ ਭੱਜ ਜਾਣਾ ਬਸ ਟੈਂਟੇ ਖਾੜੇ ਦੂਜੀ ਚੜ ਜਾ ਗੱਲਾਂ ਇੱਕ ਫੋਨ ਕਟਿਆ ਦੂਜਾ ਦੂਜੇ ਨਾਲ ਕਟਿਆ ਤੀਜਾ ਇੱਜੇ ਨਾਲ ਕੱਟ ਚੌਥਾ ਦੁਨੀਆ ਵਪਾਰੀ ਇੱਥੇ ਵਪਾਰੀ ਤੁਰੇ ਫਿਰਦੇ ਆ ਗੱਲਾਂ ਤੁਸੀਂ ਸੁਣ ਲਿਓ ਜਿੰਨੀਆਂ ਮਰਜ਼ੀ ਗੱਜ-ਗੱਜ ਲੰਮੇ ਲੱਖ ਲੱਖਰ ਆ ਕਰਦੇ ਹੋ ਉਹ ਕਰਦੇ ਹੋ ਜੇ ਕਰਦੇ ਹੋ ਉਹ ਕਰਦੇ ਹੋ ਸੱਚ ਆ ਜਿਹੜੀ ਗੱਲ ਉਹ ਸੱਚ ਹੈ ਨਹੀਂ ਝੂਠ ਦੀ ਬਿਨਾ ਤੇ ਕੀਤਾ ਪਿਆਰ ਕਿੱਦਾਂ ਨੂੰ ਚੜ ਜੂਗਾ ਤੁਸੀਂ ਕਿਉਂ ਝੂਠ ਇੱਕ ਦੂਜੇ ਤੇ ਆਪਾਂ ਬੋਲ ਰਹੇ ਔਰ ਦੁਨੀਆ ਦੇ ਵਿੱਚ ਤਜਰਬੇ ਲੋਕਾਂ ਦੇ ਕਹਿੰਦੇ ਆ ਬੁੱਕਲ ਖੋਲੇ ਬਿਨਾ ਪਿਆਰ ਨਹੀਂ ਬੁੱਕਲ ਖੁੱਲੀ ਤੇ ਪਿਆਰ ਭੱਜਿਆ ਨਹੀਂ ਉਹ ਕਹਿੰਦਾ ਬੱਸ ਆ ਤਾਂ ਲੀਰਾਂ ਦੀ ਖਦੋ ਸੀ ਮੈਂ ਕਾਨੂੰ ਖੋਲ ਲਈ ਇਹ ਤਾਂ ਗੱਲਾਂ ਤੁਹਾਡੇ ਤੇ ਹੀ ਉਹ ਦੁਆਰਾ ਹੌਲੀ ਹੌਲੀ ਹੌਲੀ ਹੌਲੀ ਹੌਲੀ 2 ਮਹੀਨੇ 3 ਮਹੀਨੇ 4 ਮਹੀਨੇ 5 ਮਹੀਨੇ 7 ਮਹੀਨੇ 8 ਮਹੀਨੇ ਜਦੋਂ ਸਮਾਂ ਆ ਜਾਣਾ ਤੁਹਾਡੇ ਬਾਣ ਜਿਹੜੇ ਕੇ ਸ਼ੁਰੂ ਚ ਗੱਲਾਂ ਨਹੀਂ ਜੀ ਤੇ ਉਹ ਹੀ ਆ ਬਸ ਆਪਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਆਪਾਂ ਆ ਨਹੀਂ ਕਰਨਾ ਆਪਾਂ ਉਹ ਨਹੀਂ ਕਰਨਾ ਪਾਉ ਉਹ ਨਹੀਂ ਕਰਨਾ ਸਭ ਤੋਂ ਵੱਡੀ ਗੱਲ ਜ਼ਿੰਦਗੀ ਦੇ ਵਿੱਚ ਸਬੰਧ ਨੇ ਜਿਹੜੇ ਅੱਜ ਚਾਹੇ ਉਹ ਮੀਆਂ ਬੀਵੀ ਦੇ ਨੇ ਚਾਹੇ ਕਿਸੇ ਦੇ ਪਿਆਰ ਤੇ ਪਿਆਰ ਕਰਨ ਵਾਲੀ ਦੇ ਨੇ ਚਾਹੇ ਉਹ ਵਿਆਹ ਦੇ ਬੰਧਨ ਚ ਬੜੇ ਹੋਏ ਨੇ ਬਜੇ ਨੇ ਜਾਂ ਨਹੀਂ ਵਜੇ ਹੋਏ ਜਾਂ ਬਜਣ ਜਾ ਰਹੇ ਨੇ ਉੱਥੇ ਜਿੱਥੇ ਬਰਾਬਰਤਾ ਤੁਹਾਡੀ ਹੈ ਨਹੀਂ ਜਿੱਥੇ ਤੁਹਾਨੂੰ ਇਹ ਆਵੇ ਨਾ ਹੋਰ ਚੀਜ਼ਾਂ ਸਾਰੀਆਂ ਪਿੱਛੇ ਨੇ ਮੈਨੂੰ ਨੇ ਚਾਹੇ ਔਸਤਰੀ ਆ ਚਾਹੇ ਮਰਦ ਤਾਂ ਤਾਂ ਹੈ ਉਹਦੇ ਚ ਪਾਕੀਜ਼ਗੀ ਤਾਂ ਤਾਂ ਚੱਲੂ ਜੇ ਉਹ ਕਿਸੇ ਚੀਜ਼ ਨਾਲ ਬੰਨੀ ਹੋਈ ਆ ਤੂੰ ਮੈਨੂੰ ਆਰਕ ਕਰੇਗਾ ਤਾਂ ਮੈਨੂੰ ਆ ਹਾਂ ਸਮਝੌਤੇ ਹੋ ਸਕਦੇ ਆ ਬੇਜੋੜ ਵਿਆਹਾਂ ਦੇ ਵਿੱਚੋਂ ਬੇਜੋੜ ਰਿਸ਼ਤਿਆਂ ਦੇ ਵਿੱਚੋਂ ਕਿਤੇ ਸਮਝੌਤਿਆਂ ਦੇ ਰੂਪ ਵਿੱਚ ਜ਼ਿੰਦਗੀ ਬਤੀਤ ਹੋ ਸਕਦੀ ਆ ਪਰ ਮੈਨੂੰ ਨੀ ਪਤਾ ਹੁਣੇ ਪਿਆਰ ਦਾ ਜਿਹੜਾ ਸ਼ਬਦ ਹੈ ਇਹ ਕਿੱਥੇ ਜਾਊ ਇਹ ਕਿੱਧਰ ਨੂੰ ਜਾਊ ਇਹਦੇ ਪਿੱਛੇ ਕਹਾਣੀ ਕੀ ਬਹੁਤ ਔਖ ਗੁੰਗੇ ਦੇ ਗੁਰਖਾਨ ਵਾਲੀ ਗੱਲ ਆ ਦੱਸੂ ਕੀ ਜਦ ਮੂੰਹ ਚ ਖਾ ਲਿਆ ਸਵਾਦ ਕਿਹੋ ਲੋਕ ਢੋਲ ਪਾਲਣ ਦੇ ਨੇ ਗੱਲ ਚ ਢੋਲ ਹੁਣ ਤਾਂ ਸ਼ੌਕ ਬਹੁਤ ਹੈ ਕਨਵਰਸੇਸ਼ਨ ਦੀ ਫੋਟੋ ਖਿੱਚੀ ਤੇ ਲੋਕਾਂ ਨੂੰ ਭੇਜ ਤਾ ਵੇਖ ਐਂਓ ਗੱਲਾਂ ਚੱਲਦੀਆਂ ਸਵੇਰ ਦੀ ਕੀਤੀ ਆਥਣੇ ਲੋਕ ਪਰੇ ਚ ਖੜ ਕੇ ਗੱਲਾਂ ਕਰਦੇ ਇਹ ਤੇ ਬਹੁਤ ਆ ਸਾਡਾ ਇਹ ਗੱਲਾਂ ਜਿਹੜੀਆਂ ਕਰਨ ਨੂੰ ਸੋਹਣੀਆਂ ਲੱਗਦੀ ਔਰ ਸਾਰੇ ਸਾਊ ਨੇ ਪਹਿਲੇ ਮਹੀਨੇ ਸਾਰੇ ਸਾਊ ਹੁੰਦੇ ਜਦ ਮਿਲਦੇ ਆ ਨਾ ਨਾ ਨਾ ਨਾ ਇਹ ਤੇ ਕਿਸੇ ਦਾਰੂ ਮੇਰਾ ਮੂੰਹ ਨਹੀਂ ਲਾਉਂਦਾ ਹੋਰ ਕੁਛ ਨਾ ਨਾ ਨਾ ਨਾ ਮੈਨੂੰ ਕੋਈ ਡਰ ਹੈ ਨਹੀਂ ਮੈਨੂੰ ਭੈ ਹੈ ਨਹੀਂ ਮੈਨੂੰ ਆ ਹੈ ਨਹੀਂ ਮੈਨੂੰ ਉਹ ਹੈ ਨਹੀਂ ਹੌਲੀ ਹੌਲੀ ਹੌਲੀ ਹੌਲੀ ਕਮਾਨ ਅਰਗਾ ਬੰਦਾ ਬਣ ਜਾਂਦਾ ਤੇ ਇੱਕ ਦੂਜੇ ਨੂੰ ਕੰਟਰੋਲ ਹੈਗਾ ਟਾਈਮ ਬੰਨੇ ਹੋਏ ਨੇ ਆਇਨਾ ਆਏ ਨਹੀਂ ਕੀਤਾ ਉਹਨੇ ਆ ਨਹੀਂ ਕੀਤਾ ਤੂੰ ਮੇਰਾ ਫੋਨ ਨਹੀਂ ਚੱਕਿਆ ਮੈਂ ਤੈਨੂੰ ਫੋਨ ਕੀਤਾ ਲੜਾਈਆਂ ਝਗੜੇ ਪਰਿਵਾਰਾਂ ਦੇ ਕਲੇਸ਼ ਨਿਵਦੀ ਤਾਂ ਇੱਕ ਜਗ੍ਹਾ ਨਹੀਂ ਹੈ ਜਿੱਥੇ ਇੱਕ ਛੱਤ ਥੱਲੇ ਹੋ ਤੁਸੀਂ ਜਿਹੜਾ ਖੰਡਾਹਰ ਪੂਰੀਆਂ ਹੋ ਸਕਦੀਆਂ ਉਹ ਜ਼ਿੰਦਗੀ ਦਾ ਇੱਕ ਅਲੱਗ ਰੂਪ ਦੇ ਵਿੱਚ ਲੋਕ ਇੱਕ ਦੂਜੇ ਦੇ ਪੂਰਕ ਹੋ ਸਕਦੇ ਜ਼ਿੰਦਗੀ ਦੇ ਬੇਜੋੜ ਰਿਸ਼ਤਿਆਂ ਦੇ ਵਿੱਚੋਂ ਕੁਝ ਕ ਚੀਜ਼ ਨਿਕਲ ਸਕਦੀ ਹੈ ਤੇ ਤੰਡ ਨੂੰ ਮਿਲਦੇ ਹੋਵੇ ਵਕਤ ਹੀ ਤੌਰ ਤੇ ਪਰ ਵਕਤ ਹੀ ਤੌਰ ਦੀ ਠੰਡ ਵੀ ਕਿੰਨਾ ਕੁ ਉਹਨੂੰ ਠੰਡਾ ਕਰ ਦੂ ਜਾਂ ਮੁੜ ਕੇ ਆ ਕੇ ਕਾਲ ਕੋਠੜੀ ਚ ਫੇਰ ਗਿਰਨਾ ਜਿੱਥੇ ਤੁਹਾਡੇ ਤੁਸੀਂ ਖੁਸ਼ ਨਹੀਂ ਸੰਪੂਰਨਤਾ ਜਿਹੜੀ ਇੱਕ ਪਿਆਰ ਦੀ ਹੈ ਉਹ ਇੱਕ ਥੱਲੇ ਹੋ ਸਕਦੀ ਹੈ ਜਿੱਥੇ ਤੁਸੀਂ ਇੱਕ ਦੂਜੇ ਦੇ ਪੂਰਕ ਆ ਜਿੱਥੇ ਇੱਕ ਦੂਜੇ ਦੇ ਆਲੇ ਦਾਲੇ ਫਿਰਦੇ ਆ ਪਰ ਇਹ ਗੱਲਾਂ ਹੀ ਨੇ ਇਹ ਇਨਸਾਨ ਜਿਹੜਾ ਇਸ ਦੁਨੀਆ ਤੇ ਮਰਦਾਂ ਨੂੰ ਕਿਹਾ ਜਾਂਦਾ ਮਰਦ ਵੀ ਪਿਆਰ ਇਸਤਰੀਆਂ ਨਾਲ ਕਰਦੇ ਆ ਮਰਦ ਕੰਧਾਂ ਦੇ ਨਾਲ ਕਿਤੇ درختਾਂ ਨਾਲ ਪਿਆਰ ਨਹੀਂ ਕਰਦੇ ਜੇ 70 80ਆਂ ਦੇ ਬਾਹਰ ਸਬੰਧ ਨੇ ਕਿਸੇ ਨੇ ਘੋੜਿਆਂ ਤੇ ਖਚਰਾ ਨਾਲ ਨਹੀਂ ਮਰਦ ਪਿਆਰ ਕਰਦੇ ਉਪਰ ਅਕਸਰ ਜਦ ਦੁਨੀਆ ਇਹ ਗੱਲਾਂ ਬੰਦਿਆਂ ਦੇ ਤੇ ਬੰਦੇ ਮਾੜੇ ਨੇ ਬੰਦੇ ਮਾੜੇ ਨੇ ਅਕਸਰ ਇਹ ਗੱਲਾਂ ਚੱਲਦੀਆਂ ਪਰ ਮੈਨੂੰ ਲੱਗਦਾ ਹੈ ਦੇ ਵਿੱਚੋਂ ਸਮਾਜ ਨੇ ਬੰਨਣਗਰੀ ਇੰਨੀ ਕਰ ਦਿੱਤੀ ਉਹ ਬੰਨਣਗਰੀ ਮਿਸਮੈਚ ਜਾਂ ਲੜਾਈ ਝਗੜੇ ਦੇ ਵਿੱਚੋਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬਾਹਰ ਪੈਦਾ ਹੁੰਦੀਆਂ ਜਿਹੜੀਆਂ ਤੁਹਾਡੀਆਂ ਪੂਰਕ ਨੇ ਉਹ ਪੂਰਕਾਂ ਨੂੰ ਤੁਸੀਂ ਪਿਆਰ ਕਹਿ ਲਓ ਉਹਨੂੰ ਵੈਲੈਂਟਾਈਨ ਦੇ ਕਹਿ ਦੋ ਹਾਂ ਜ਼ਿੰਦਗੀ ਦੇ ਨਾਲ ਲੰਮੀ ਜ਼ਿੰਦਗੀ ਦਾ ਪੰਧ ਕਈ ਵਾਰ ਹੱਥ ਨਾਲ ਹੱਥ ਮਿਲਾ ਕੇ ਲੰਘ ਜਾਂਦਾ ਉਹ ਚੀਜ਼ ਨੂੰ ਤੁਸੀਂ ਕਹਿ ਸਕਦੇ ਆ ਵੀ ਹਾਂ ਨਹੀਂ ਤਾਂ ਰਿਸ਼ਤੇ ਮਾਪਿਆਂ ਨੇ ਮਿਲ ਕੇ ਇੱਕ ਦੂਜੇ ਨੂੰ ਕਰ ਦਿੱਤੇ ਉਹ ਇੱਕ ਵਿਆਹ ਦੇ ਬੰਧਨ ਚ ਵਧੇ ਹੋਏ ਮੀਆਂ ਬੀਬੀ ਪਿਆਰ ਦੇ ਰੂਪ ਚ ਉਹਨੂੰ ਕਹਿ ਲੈਣਾ ਉਹ ਇਕੱਠਾ ਰਹਿਣਾ ਕਹਿ ਲੈਣਾ ਉਹਨਾਂ ਨੂੰ ਕਹਿ ਦੇਣ ਕਿ ਇਹ ਪਰਿਵਾਰਕ ਰਿਸ਼ਤਾ ਹੈ ਉਹਦਾ ਲੱਗ ਸਕਦਾ ਪਰ ਕੱਲਾ ਹੀ ਪਿਆਰ ਉਹਦਾ ਨਾਂਉ ਨਹੀਂ ਹੈ ਔਰ ਇੱਕ ਦਿਨ ਤੋਹਫਿਆਂ ਦਿੱਤਿਆਂ ਨਾਲ 364 ਦਿਨ ਨਹੀਂ ਸਰਨਾ ਹਰ ਰੋਜ਼ ਦੀ ਇਨਪੁਟ ਹੈ ਤਾਂ ਇਹ ਰਿਸ਼ਤੇ ਜਿਹੜੇ ਨੇ ਉਹ ਸੰਜੀਵਨੀ ਦੇ ਤੌਰ ਤੇ ਰਹਿੰਦੇ ਆ ਤਾਂ ਜਿਉਂਦੇ ਰਹਿੰਦੇ ਬਹੁਤ ਤੇਜ਼ ਤਰਾਹ ਦੇ ਜ਼ਿੰਦਗੀ ਦੇ ਵਿੱਚ ਇਹ ਚੀਜ਼ ਹੈ ਜਿਹੜਾ ਇਹ ਨੌ ਜਿਹੜਾ ਘਟਦਾ ਜਾ ਰਿਹਾ ਜ਼ਰੂਰਤਾਂ ਵੱਧਦੀਆਂ ਜਾ ਰਹੀਆਂ ਨੇ ਟੁੱਟ ਭੱਜ ਬਹੁਤ ਜ਼ਿਆਦਾ ਹੋ ਰਹੀ ਆ ਹਾਂ ਬਾਕੀ ਮਖਮਲੀ ਗੱਲਾਂ ਜਿੰਨੀ ਮਰਜ਼ੀ ਇਹ ਪਿਆਰ ਬਹੁਤ ਚੰਗੀ ਚੀਜ਼ ਆ ਜੀ ਇਹ ਹੈ ਇਹ ਆ ਕੰਟਿਆਂ ਵੱਢੀ ਕਰ ਲੋ ਪਰ ਸੱਚ ਜਿਹੜਾ ਮੇਰੇ ਹਿਸਾਬ ਨਾਲ ਮੈਨੂੰ ਐਵੇਂ ਹੀ ਲੱਗਦਾ ਬਾਕੀ ਤੁਸੀਂ ਦੱਸੋ ਸ਼ਰਧੌਰ ਸਿੰਘ ਦੀ ਲਾਈਨ ਨੰਬਰ 2 ਹੈ ਬੋਸ ਜੀ ਜੀ ਸਤਿ ਸ਼੍ਰੀ ਅਕਾਲ ਜੀ ਵਾ ਇਹ ਕਈ ਵਾਰ ਮੇਰੇ ਅਗੇ ਆਪ ਦਾ ਡਿਫੋਰਸ ਹੋਇਆ ਤੇ ਬਹਿ ਕੇ ਲੱਗ ਜਾਂਦਾ ਕਾਰਨ ਜਦੋਂ ਮੈਂ ਟ੍ਰੈਂਡ ਸਹੀ ਹੈ ਅਸੀਂ ਅੱਜ ਦੇ ਜਿਹੜਾ ਨੇ ਝੂਠ ਸੁਫਾਨ ਬੋਲੀ ਜਾਂਦੇ ਆ ਮੈਨੂੰ ਬਾਈ ਜੀ ਇੱਕ ਦਿਮਾਗ ਚ ਮੇਰੇ ਆਈ ਪਿਆਰ ਦਾ ਸ਼ਹੀਦ ਸਤਵੰਤ ਸਿੰਘ ਦੀ ਵਾਈਫ ਨੇ ਕੀਤਾ ਵਾ ਉਹਨਾਂ ਇੱਕੋ ਇੱਕ ਮੈਨੂੰ ਬੰਦੇ ਦਿਸਿਆ ਵੀ ਹੋ ਸਕਦਾ ਦੇ ਦੇ ਉੱਤੇ ਟਾਇਆਂ ਆ ਇਹ ਤਾਂ ਬਾਈ ਜੀ ਫੁਕਰ ਪੁਣਾਈਆਂ ਥੈਂਕ ਯੂ ਬਾਈ ਜੀ ਹਾਂਜੀ ਸਤਿ ਜਨਾਬ ਸਤਿ ਸ੍ਰੀ ਜੀ ਜਨਾਬ ਤੁਸੀਂ ਗੱਲਾਂ ਕਰਦੇ ਆ ਨਾ ਬਿਲਕੁਲ ਐ ਜਿੱਦਾਂ ਸੂਤ ਲਿਆ ਦਦੇ ਕੰਮ ਤੇ ਕਈ ਵਾਰੀ ਤੇ ਮੈਨੂੰ ਗੱਲਾਂ ਤੁਹਾਡੀਆਂ ਵਧੀਆ ਲੱਗਦੀਆਂ ਮੈਂ ਅੱਧਾ ਘੰਟਾ ਤੱਕ ਹੱਸਦਾ देखो जडी ਤੁਸੀਂ ਇਨਾਰ ਕਰੀ ਗੱਲ ਆਖੀ ਨਾ ਬੜੀ ਵਜੂਦਾਰ ਅਗਈ ਆ ਤੇ ਬਾਕੀ ਦੇਖੋ ਜੀ ਪਿਆਰ ਜਿਹੜਾ ਨਾ ਇਹਦੇ ਤੇ ਦੋ ਤਿੰਨ ਪੁਆਇੰਟ ਮੇਰੇ ਕੋਲ ਹੈ ਗਿਆ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਇਹ ਦਿਨ ਦਿਹਾੜਾਂ ਆ ਇਹ ਬਣਾਉਂਦਾ ਕੌਣ ਹੈ ਕੀ ਇਹ ਜੀਵਨ ਨੇ ਬਣਾਉਂਦੀ ਆ ਜਿਹੜੀ ਇੰਟਰਨੈਸ਼ਨਲ ਡੇ ਜਿਹੜੇ ਮਨਾਏ ਜਾਂਦੇ ਆ ਫਾਦਰ ਡੇ ਮਦਰ ਡੇ ਫੈਮਿਲੀ ਡੇ ਇਹ ਕੌਣ ਬਣਾਉਂਦਾ ਇਹ ਕੌਣ ਆਰਗੇਨਾਈਜ਼ ਕਰਦਾ ਹੈ ਦਿਨਾਂ ਨੂੰ ਵੀ ਇਹ ਦਿਨ ਐਸ ਦਿਨ ਹੋਣਾ ਚਾਹੀਦਾ ਉਹ ਸਮਾਜ ਜਾਂ ਸੋਸਾਇਟੀ ਦੇ ਜਿਹੜੇ ਠੇਕੇਦਾਰ ਨੇ ਉਹ ਦੇਖਦੇ ਪਏ ਆ ਕਿ ਬਈ ਕਈ ਕਿਹੜੀ ਚੀਜ਼ ਦੀ ਸਮਾਜ ਦੇ ਅੰਦਰ ਕਮੀ ਮਹਿਸੂਸ ਹੋ ਰਹੀ ਆ ਉਹ ਜਿਹੜੀ ਚੀਜ਼ ਦੀ ਕਮੀ ਮਹਿਸੂਸ ਹੋ ਰਹੀ ਆ ਜਦੋਂ ਦੇਖਿਆ ਬਈ ਮਾਂ ਪਿਓ ਦੀ ਇੱਜ਼ਤ ਜਿਹੜੀ ਆ ਸਮਾਜ ਦੇ ਅੰਦਰ ਹੈਣੀਗੀ ਅੱਜ ਦੇਖਦਾ ਕਿ ਮਾਂ ਪਿਓ ਨੂੰ ਕੁੱਟਦੇ ਪੈਣੇ ਮੁੰਡੇ ਬੱਚੇ ਉਹਨਾਂ ਦੇ ਆਪਣੇ ਸੋ ਇਸ ਕਰਕੇ ਉਹਨਾਂ ਨੇ ਬਣਾਤਾ ਫਾਦਰ ਡੇ ਮਦਰ ਡੇ ਫੈਮਲੀਆਂ ਇਥੇ ਟੁੱਟਦੀਆਂ ਪਈਆਂ ਨੇ ਇਸ ਕਰਕੇ ਬਣਾਇਆ ਫੈਮਲੀ ਡੇ ਵੀ ਤੁਸੀਂ ਇੱਕ ਦਿਨ ਤਾਂ ਇਕੱਠੇ ਹੋਵੋ ਤੀਜੀ ਆ ਜਿਹੜੀ ਅੱਜ ਆਉਂਦੀ ਹੈ ਵੈਲੈਂਟਾਈਨ ਡੇ ਵੀ ਆ ਕਿ ਜਮਾਤ ਦੇ ਅੰਦਰ ਜਿਹੜੀ ਜਿਹੜੇ ਲੋਕ ਕਹਾਣੀਆਂ ਕਿਸੇ ਉਹਨਾਂ ਦੇ ਹੈ ਸਗਿਆ ਜਿਹੜੇ ਪਿਆਰ ਦੇ ਅੰਦਰ ਨਿੱਪੁੰਨ ਨਹੀਂ ਹੋਏ ਜਿਹੜੇ ਸਿਰੇ ਨਹੀਂ ਲੱਗੇ ਉਹਨਾਂ ਦੇ ਕਿਸੇ ਕਹਾਣੀਆਂ ਹੈਗੇ ਆ ਕਿਸੇ ਉਸ ਬੰਦੇ ਦਾ ਕਹਾਣੀ ਕਿਸਦਾ ਹੈਗਾ ਜਿਹੜਾ ਪਿਆਰ ਦੇ ਸਿਰੇ ਚੜ ਗਿਆ ਹੋਵੇ ਜਿਹੜਾ ਵੀ ਦੇਖ ਲੋ ਲੈਲਾ ਮਜਨੂ ਜਿਉਂ ਹੁਣ ਦੂਜੀ ਗੱਲ ਜਿਹੜੀ ਆ ਕਿ ਭਈ ਇਹ ਪਰਫੈਕਟ ਜਿਹੜਾ ਕੋਈ ਤਰੀਕਾ ਜਿਹੜਾ ਪਿਆਰ ਦਾ ਉਹ ਸਾਡੇ ਕੋਲ ਹਾਲੇ ਤੱਕ ਮੇਕੋ ਕੋਲ ਆਇਆ ਹੀ ਨਹੀਂਗਾ ਅਸੀਂ ਕਨਸੈਪਟ ਲਿੱਤਾ ਵਿਆਹ ਦਾ ਵਿਆਹ ਦੇ ਵਿੱਚ ਵੀ ਦੇਖਦਾ ਵਾਂ ਕਿ ਭਈ ਇੱਕ ਛੱਤ ਥੱਲੇ ਮੀਆਂ ਬੀਬੀ ਰਹਿੰਦੇ ਆ ਸਾਰੀ ਸਾਰੀ ਉਮਰ ਗੁਜ਼ਾਰ ਦਿੰਦੇ ਆ ਪਰ ਪਿਆਰ ਉਹਨਾਂ ਦੇ ਵਿੱਚ ਕੋਈ ਨਹੀਂ ਹੁੰਦਾ ਕੋਈ ਹੋਣਗੇ 1-2% ਜਾਂ 10-20% ਜਿਹੜੇ ਫੈਮਿਲੀ ਹੋਣਗੇ ਜਿਹੜੇ ਉਹਨਾਂ ਦੇ ਜਿਹੇ ਨੇ ਜਿਹੜੇ ਕਿ ਬਿਨਾਂ ਪਿਆਰ ਤੋਂ ਇੱਕ ਛੱਤ ਇੱਕ ਰਹੀ ਜਾਂਦੇ ਆ ਨਾ ਉਹ ਤਲਾਕ ਲੈਂਦੇ ਆ ਤੇ ਨਾ ਹੀ ਉਹ ਪਿਆਰ ਮੁਹੱਬਤ ਕਰਦੇ ਆ ਬਸ ਉਹ ਜ਼ਿੰਦਗੀ ਐਵੇਂ ਗੁਜ਼ਾਰੀ ਜਾਂਦੇ ਆਈ ਦਲਾਈ ਕਰਦੇ ਪਏ ਬਸ ਉਹ ਸੋ ਇਹ ਜਿਹੜਾ ਕਨਸੈਪਟ ਹੈ ਵਿਆਹ ਦਾ ਇਹ ਵੀ ਕੋਈ ਪਰਫੈਕਟ ਜਿਹੜਾ ਕਨਸੈਪਟ ਨਹੀਂ ਹੈ ਦੂਜੇ ਪਾਸੇ ਨਾਲ ਦੇਖਣਾ ਇੱਥੇ ਇੱਥੇ ਕੁੜੀਆਂ ਮੁੰਡੇ ਜਿਹੜੇ ਆਪਣੇ ਨੂੰ ਆਪ ਨੂੰ ਮਤਲਬ ਫੰਨੇ ਮੁੰਡਾ ਲੱਭ ਕੇ ਵਿਆਹ ਕਰਨਾ ਉਹ ਵੀ ਕਨਸੈਪਟ ਮੈਂ ਦੇਖਦਾ ਹਾਂ ਰੋਜ਼ ਹਰ ਮੀਕਣ ਦੇ ਉੱਤੇ ਫ੍ਰਾਈਡੇ ਸਾਂਚਰੇ ਨੂੰ ਜਾਂਦੇ ਨੇ ਅੱਖਾਂ ਚਾਰ ਕਰਦੇ ਨੇ ਮੁੜ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਸਵੇਰ ਨੂੰ ਸੋ ਉਹ ਵੀ ਉਹ ਵੀ ਜਿਹੜੀ ਚੀਜ਼ ਹੈ ਮੈਂ ਕਹਿੰਦਾ ਉਹ ਉਹ ਵੀ ਪਰਫੈਕਟ ਨਹੀਂ ਹੈਗੇ ਉਹ ਵੀ ਜਿਹੜਾ ਉਹ ਸਮਾਜਤੀ ਦੀਆਂ ਕੁੜੀਆਂ ਨੇ ਜਿਹੜੀਆਂ ਟੈਕਸੀ ਚ ਬੈੜੀਆਂ ਮੈਰਨ ਕੁੜੀ ਨਹੀਂ ਚੱਜ ਦੀ ਲੱਭੀ ਸੋ ਇਹ ਜਿਹੜਾ ਪਰਫੈਕਟ ਪਰਫੈਕਟ ਜਿਹੜਾ ਤਰੀਕਾ ਹਾਲੇ ਤੱਕ ਵੀ ਮਨੁੱਖ ਕੋਲ ਨਹੀਂ ਆਇਆ ਜਿਹਦੇ ਨਾਲ ਉਹ ਮਾਪਦੋਲ ਕਰਕੇ ਸਾਰਾ ਜਿਹੜਾ ਇਸ ਪਿਆਰ ਦੀ ਕਸਵਟੀ ਦੇ ਉੱਤੇ ਪੂਰਾ ਚੜਾ ਸਕੇ ਤੀਸਰਾ ਮੇਰਾ ਪੁਆਇੰਟ ਹੋਇਆ ਹੈ ਕਿ ਜਿਹੜਾ ਇੱਕ ਸਿੰਘ ਆ ਸਿੰਘ ਜਿਹੜਾ ਵੇ ਉਹ پیغمبر ਦਾ ਬਣ ਸਕਦਾ ਪਰ ਉਹ ਲੈਲਾ ਜਾਂ ਸੋਰੀ ਮਜਨੂ ਜਾਂ ਰਾਂਜਾ ਜਿਹੜਾ ਉਹ ਨਹੀਂ ਬਣ ਸਕਦਾ ਉਹਦੀ ਵਜ੍ਹਾ ਕੀ ਹੈ ਕਿ ਜਦੋਂ ਆਪਾਂ ਪੰਜ ਪਿਆਰੇ ਸਾਨੂੰ ਸਿਖਾਉਂਦੇ ਆ ਵੀ ਜਿੰਨੀਆਂ ਜਦੋਂ ਅਨਮੈਰਿਡਾ ਬੰਦਾ ਉਹਨੀ ਦੇਰ ਤੱਕ ਜਿੰਨੀਆਂ ਵੀ ਲੇਡੀਜ਼ ਨੇ ਉਹ ਤੁਹਾਡੀਆਂ ਪਹਿਣਾ ਨੇ ਤੁਹਾਡੀਆਂ ਮਾਵਾਂ ਨੇ ਹੁਣ ਉਹ ਪਿਆਰ ਕਿਹਦੇ ਨਾਲ ਕਰੂਗਾ ਨੰਬਰ 1 ਨੰਬਰ 2 ਜਦੋਂ ਉਹ ਮੈਰਿਡ ਹੁੰਦਾ ਮੈਰਿਜ ਦੇ ਜੇ ਉਹਦੀ ਮੈਰਿਜ ਜਿੰਨਾ ਜੀ ਹੁਣ ਅੱਗੇ ਵੀ ਗੱਲ ਕਰ ਲਈਏ ਜੀ ਹਾਂਜੀ ਪਲਵੰਤ ਸਿੰਘ ਜੀ ਅੱਗੇ ਗੱਲ ਜੀ ਹੋਰ ਵੀ ਢੀਕਦੇ ਆ ਹਾਂਜੀ ਮੈਂ ਲਾਸਟ ਜੇ ਇੱਕ ਹੀ ਹੋ ਗਿਆ ਹਾਂਜੀ ਅੱਧਾ ਸੈਕਿੰਡ ਚਲੋ ਜੀ ਹੋ ਗਿਆ ਥੈਂਕ ਯੂ ਗਰਚਨ ਕੁਲਾਰ ਜੀ ਲਾਈਨ ਨੰਬਰ 4 ਸਤਿ ਸ਼੍ਰੀ ਅਕਾਲ ਸਾਹਿਬ ਸਤਿ ਸ਼੍ਰੀ ਅਕਾਲ ਕੁਲਾਰ ਜੀ ਹੈਪੀ ਵੈਲੈਂਟਾਈਨ ਡੇ ਪਹਿਲਾਂ ਦਾ ਤੁਹਾਨੂੰ ਕਿਉਂਕਿ ਅਸੀਂ ਤੁਹਾਨੂੰ ਵੀ ਮੁਹੱਬਤ ਕਰਦੇ ਹਾਂ ਕਿਉਂਕਿ ਤੁਹਾਡੀ ਬਿਲਕੁਲ ਸਾਡੇ ਨੂੰ ਬਹੁਤ ਮੈਂ ਵੀ ਕਰਨਾ ਵਾ ਯਸ ਹਾਂਜੀ ਔਰ ਸਾਰੇ ਸ਼ੌਂ ਵਾਲੇ ਸਾਰੇ ਸਲੋਤਿਆਂ ਆ ਔਰ ਮੈਂ ਤੇ ਮੇਰਾ ਆਪਣਾ ਨਿੱਜੀ ਤਜਰਬਾ ਮੇਰੇ ਹੋਵੇ ਕੋਈ ਸਹਿਮਤ ਨਾ ਹੋਵੇ ਉਹ ਆਪਣੀ ਸਰਦਾਰਨੀ ਨੂੰ ਕਰੋ ਰੱਜ ਕੇ ਪਿਆਰ ਆਵੜੀ ਧਰਮ ਪਿਆਰ ਕਰੋ ਔਰ ਉਹਨੂੰ ਖੁਸ਼ ਰੱਖੋ ਔਰ ਉਹਨੂੰ ਹਰ ਕੰਮ ਦੇ ਵਿੱਚ ਕਰੋ ਔਰ ਫਿਰ ਦੇਖੋ ਜੈਲੀ ਬਣਦੀ ਨਹੀਂਾਰੇ ਦੀ ਲੰਬ ਮੈਰਿਜ ਠੀਕ ਆ ਮੈਂ ਠੀਕ ਆ ਲੋਕੀ ਕਰਾਉਂਦੇ ਆ ਪਰ ਉਹ ਜਿੱਦਾਂ ਕਹਿੰਦੇ ਦਵਾਈ ਤੋਂ ਪਹਿਲਾਂ ਪਟਾਕੇ ਚੱਲ ਜਾਂਦੇ ਉਹ ਮੁੜ ਕੇ ਉਹ ਕੰਮ ਨਹੀਂ ਬਣਦਾ ਕਿਉਂਕਿ ਉਹ ਘਰ ਵਾਲੀ ਕੋ ਸਾਰਾ ਰਿਮੋਟ ਹੁੰਦਾ ਵੀ ਸੋ ਹਸਬੰਦ ਕੋ ਵੀ ਉਹਦਾ ਸਾਰਾ ਕੁਝ ਹੁੰਦਾ ਜਾਂ ਪਹਿਲਾ ਤੋਂ ਇਦਾਂ ਨਹੀਂ ਹੁੰਦਾ ਇਦਾਂ ਗੱਲ ਬਣਦੀ ਨਹੀਂ ਸੋ ਅਸੀਂ ਵੀ ਅੱਜ ਬਹੁਤ ਮੈਂ ਤੇ ਬਰੇ ਸੋਨੇ ਗੋਭੀ ਦੇ ਪਕੌੜੇ ਬਣਾ ਕੇ ਖਾਦੇ ਅਸੀਂ ਵੈਰੀ ਗੁੱਡ ਠੀਕ ਹੈ ਗੱਲ ਇਨੀ ਕੋਲ ਤੇ ਲਾ ਮਾਰਾ ਜਾ ਤੜਕਾ ਆ ਜੀ ਅੰਗਲਾਂ ਜੀ ਨਾਲ ਜਾਨੂ ਮੈਂ ਜੇ ਕਰ ਦੂ ਜਾਨੂ ਮੈਂ ਉਹ ਕਰ ਦੂ ਉਹ ਮੈਨੂੰ ਉਹ ਆ ਮੈਂ ਜਾਨੂ ਜੁੰਨੂ ਵਾਲਾ ਆ ਮੈਂ ਆ ਓਕੇ ਗੱਲ ਕਰ ਰਹੀ ਵਪਾਰਕ ਸੰਦੇਸ਼ ਜੌਲ ਉਹਨਾਂ ਨਾਲ ਮੈਂ ਗੱਲਬਾਤ ਕਰਨਾ ਲੋਕਲ ਕੰਟੇਨਰ ਟਰੱਕਰ ਦਾ ਇਸ਼ੂ ਹੈ ਯੂਨੀਫੋਰਮ ਕੰਪਨੀ ਤੋਂ ਯੂਨੀਫੋਰਮ ਯੂਨੀਅਨ ਤੋਂ ਪਾਲ ਜੌਲ ਉਹਨੇ ਯੂਟੀਏ ਤੇ ਯੂਨੀਫੋਰਮ ਨਾਲ ਰਲ ਕੇ ਇਹ ਫੋਰਟ ਮੈਟਰੋ ਵੈਂਕੂਵਰ ਦੀ ਜਿਹੜੀਆਂ ਮੁਸ਼ਕਲਾਂ ਟਰੱਕਰਸ ਦੀਆਂ ਉਸ ਦੀ ਗੱਲਬਾਤ ਕਰਨ ਲਈ ਇੱਕ ਦੋ ਮਿੰਟ ਮੇਂ ਨਾਪਾਲ ਜੌਲ ਨੇ ਪਾਲ ਜੌਲ ਜੀ ਤੁਹਾਡਾ ਸਤਿ ਅਕਾਲ ਸੱਸੀ ਗਾਲ ਜੀ ਥੈਂਕ ਯੂ ਫॉर हेल्पਿੰਗ ਥੈਂਕ ਯੂ ਅੱਛਾ ਜੀ ਹੁਣ ਲੇਟੈਸਟ ਕੀ ਹੈ ਉਸ ਦਿਨ ਤੁਹਾਡੀ ਵੇਟ ਕਰਦੇ ਰਹੇ ਪ੍ਰੈਸ ਕਾਨਫਰੰਸ ਦੇ ਤੁਸੀਂ ਸਟਕ ਹੋਗੇ ਕਿਤੇ ਹੁਣ ਤੁਹਾਡੀ ਆਪਣੇ ਯੂਨੀਅਨ ਬਨੋਂ ਯੂਟੀਏ ਨਾਲ ਰਲ ਕੇ ਇਹ ਮੰਗਾਂ ਦੇ ਬਾਰੇ ਅੱਗੇ ਮਸਲਾ ਹੱਲ ਨਹੀਂ ਕੀਤਾ ਉਹਦਾ ਸਾਡਾ ਜੋਰ ਲੱਗਾ ਤੇ ਸਾਲ ਹੋ ਗਏ ਜੋਰ ਲਾਉਂਦੇ ਨੂੰ ਇਹ ਹੱਲ ਕਰਨ ਨੂੰ ਜਿਹੜੇ ਕੀ ਪ੍ਰੋਬਲਮ ਆ ਰਹੀ ਹੈ ਦੇ ਆ ਇਧਰੋਂ ਯੂਟੀਏ ਵੀ ਸਾਡੇ ਨਾਲ ਹੀ ਆ ਇਕੱਠੇ ਰੜ ਕੇ ਸਾਰਾ ਸਾਰਾ ਪ੍ਰੋਗਰਾਮ ਬਣਾ ਰਹੇ ਆ ਇਹਨਾਂ ਦਿੱਤੇ ਆ ਕਿ ਆ ਕੰਪਨੀ ਡਰਾਈਵਰਾਂ ਦੇ ਟਾਈਮ ਦਾ ਸੀਗਾ ਵੇਟਿੰਗ ਟਾਈਮ ਦਾ ਸਾਨੂੰ 45 ਲਿਖਿਆ ਸੀਗਾ ਆਪਣੇ ਵੋਟ ਬਾਸ ਸਾਨੂੰ ਵੇਟਿੰਗ ਟਾਈਮ ਮਿਲੂਗਾ ਹੁਣ ਪਤਾ ਕੀ ਹੁੰਦਾ ਹੁਣ ਵੇਟਿੰਗ ਟਾਈਮ ਉਹ ਸਾਨੂੰ ਦਿੰਦੇ ਆ ਆ ਇਦਾਂ ਹੀ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਅਜੇ ਪੂਰੀਆਂ ਨਹੀਂ ਇਹਨਾਂ ਨੇ ਬਾਕੀ ਮੁਰਕੇ 6 ਮੁਰਕੇ ਆ ਗਏ ਜਿਸ ਫੇਰ ਹੁਣ ਜੇ ਵੋਟਾਂ ਨੇੜੇ ਨੇ 3 ਮਹੀਨੇ ਨੂੰ ਜੇ ਹੁਣ ਕਿਸੇ ਪਾਸੇ ਗੱਲ ਨਹੀਂ ਬਣਦੀ ਫਿਰ ਅਗਲਾ ਜਿਹੜਾ ਘੋਲ ਆ ਉਹ ਕਿੱਦਾਂ ਨੂੰ ਵਿੱਢਿਆ ਜਾਊ ਹੁਣ ਮਨ ਦੇ ਵਿੱਚ ਹੈ ਕੁਝ ਵੀ ਜੇ ਕਰ ਮੋਸਲੀ ਕੰਪਨੀ ਵਾਲੇ ਨੂੰ ਪ੍ਰੋਬਲਮ ਹੈਗਾ ਰਿਵੈਸੇਸ਼ਨ ਦਾ ਤਾਂ ਵੇਟਿੰਗ ਟਾਈਮ ਦਾ ਸਾਡੇ ਵੀ ਸੇਮ ਇਸ਼ੂ ਨੇ ਹੁਣ ਆਹ ਵਿਥਨ ਵੀਕ ਉਹ ਠੂ ਵੀਕ ਦੇ ਵਿਚਕਾਰ ਅਸੀਂ ਮੀਟਿੰਗ ਕਰਾਂਗੇ ਉਹਨੂੰ ਆਪਾਂ ਸਾਰੇ ਡਰਾਈਵਰਾਂ ਨਾਲ ਗੱਲ ਕਰਕੇ ਆਪਣੇ ਸਾਰੇ ਮੈਂਬਰਾਂ ਨਾਲ ਗੱਲ ਕਰਕੇ ਫਿਰ ਉੱਥੋਂ ਫਿਰ ਆਪਾਂ ਡਿਸੀਜਨ ਬਣਾਵਾਂਗੇ ਕਿ ਕਿੱਥੇ ਸੋ ਹੁਣ ਤੁਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਪਹਿਲਾਂ ਵੀ ਇਕੱਠੇ ਹੋ ਹੁਣ ਫਿਰ ਕੋਸ਼ਿਸ਼ ਕਰਿਓ ਤੇ ਇਸ ਕੋਈ ਵਧੀਆ ਹੱਲ ਜਿਹੜਾ ਵਧੀਆ ਸਿੱਟੇ ਨਿਕਲੇ ਆਉਣੇ ਨੇ ਸਟੇ ਟੁਗੇਦਰ ਇੱਕਠੇ ਯੂਨਿਟੀ ਦੇ ਤੌਰ ਤੇ ਇਕੱਠੇ ਹੋ ਕੇ ਹਾਂ ਹਾਂਜੀ ਸਾਨੂੰ ਇਹ ਹੀ ਸਾਰਿਆਂ ਨੂੰ ਭਰਾਵਾਂ ਨੂੰ ਇਹ ਹੀ ਤਕੀਦਾ ਵੀ ਸਾਰੇ ਇਕੱਠੇ ਹੋ ਗਏ ਸੀ ਸਾਨੂੰ ਸਾਰੇ ਕੋ ਮਿਲ ਸਕਦਾ ਇਟ ਮੈਂ ਇਦਾਂ ਨਹੀਂ ਕਹਿੰਦਾ ਬੰਦਿਆਂ ਨੂੰ ਯੂਨੀਅਨ ਜੁਆਇਨ ਕਰਨੀ ਪਣੀ ਆ ਸਾਨੂੰ ਤਾਂ ਮਸਲਾ ਸਾਡਾ ਸਾਰਿਆਂ ਦਾ ਸੇਮ ਯੂਨੀਅਨ ਨਾਂਜੀ ਨਹੀਂ ਕੋਈ ਵੀ ਹੋਵੇ ਪਰ ਚੱਲਾਂਗੇ ਸਾਨੂੰ ਸਾਰੇ ਕੋ ਮਿਲ ਜੂ ਆਦਰਵਾਇਸ ਵੀ ਬੈਕ ਅੱਗੇ ਵੀ ਦੇਖ ਹੀ ਲਿਆ ਵੀ ਰਲ ਕੇ ਫੇਜ ਜੁੜੇ ਹੋ ਜਾਂਦੇ ਆ ਤੇ ਸਾਡੇ ਵਿੱਚੋਂ ਕਈ ਸਾਡੀਆਂ ਵੀ ਗਲਤੀਆਂ ਹੁਣ ਹੋ ਜਨੀਆਂ ਅਸੀਂ ਵੀ ਗਲਤੀਆਂ ਕੀਤੀਆਂ ਹੁਣ ਹੋਰ ਹੀ ਬੰਦਾ ਫਖਰਾ ਸਾਡੀ ਤਕੀਰ ਇਹੀ ਆ ਵੀ ਅਸੀਂ ਇਕੱਠੇ ਜਾਣੀਏ ਤੇ ਆਪਾਂ ਉਹ ਜੋ ਆਪਾਂ ਕਿਹਾ ਨੇ ਧੰਨਵਾਦ ਜੀ ਪਾਲ ਜੋਲ ਜੀ ਬਿਸ਼ੂ ਆਲ ਦਾ ਬੈਸਟ ਥੈਂਕ ਯੂ ਥੈਂਕ ਯੂ ਸਰ ਓਕੇ ਇੱਕ ਹੈਪੀ ਦਾ ਗੀਤ ਜਾਨ ਤੋਂ ਪਿਆਰਾ